ਏਆਰਪੀ 1250 ਏਐਮ ਤੇ ਤੁਹਾਡਾ ਆ 16 ਫੱਗਣ ਨਾਨਕਸ਼ਹਿ ਸਮਧ 548 ਨਿਗਾ ਹਾਰਦਿਕ ਸਵਾਗਤ ਹੈ ਜੀ ਤੁਹਾਡੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਰਖ ਦੇ ਮਸਲਿਆਂ ਤੇ ਗੱਲਬਾਤ ਹੋਣੀ ਹੈ 11:30 ਵਜੇ ਉਹ ਕੇ ਵਕੀਲ ਅਮਰੀਕ ਨਾਰੰਗੋਣੀ ਗੱਲ ਕਰਨਗੇ ਆਈਸੀਬੀਸੀ ਚੋਂ ਸਬਾ ਅਰਬ ਦੇ ਡਾਲਰ ਦੇ ਕਰੀਬ ਸਰਕਾਰ ਖਿੱਚ ਕੇ ਲੈ ਗਈ ਤੇ ਹੁਣ ਘਾਟਾ ਦਿਖਾ ਰਹੀ ਹੈ 5% ਦੇ ਕਰੀਬ ਤੇ ਆਉਣ ਵਾਲੇ 5-7 ਸਾਲਾਂ ਚ 35 ਤੱਕ ਵਧਣ ਦੀ ਪੇਸ਼ਾਨਗੋਈ ਕੀਤੀ ਗਈ ਕਹਾਣੀ ਕੀ ਹੈ ਤੇ ਨਾਲ 12 ਤੋਂ 1 ਵਜੇ ਤੱਕ ਰਾਜਸੀ ਜੀਵਨ ਰਾਜਸੀ ਚਤਰਾਇਆਂ ਜਿਹੜੀਆਂ ਸਰੀਚ ਖੇਡੀਆਂ ਜਾ ਰਹੀਆਂ ਉਸ ਗੱਲ ਹੋਵੇਗੀ ਕਿਵੇਂ ਤਿਆਰੀ ਕਰਵਾਈ ਜਾਂਦੀ ਹੈ ਲਫਟਾਈਨਾਂ ਦੀ ਫਿਰ ਫਟੈਣਾ ਨੂੰ ਕਿਹਾ ਜਾਂਦਾ ਹੁਣ ਰਹਿ ਜਾਓ ਜਦ ਸਿੰਧ ਦੀ ਘੋੜੀ ਦੀ ਜਗ੍ਹਾ ਪੈਸੇ ਲਾਈ ਫਿਰਦੇ ਹੋ ਇਹਹੀ ਕਹਾਣੀ ਹੋਣੀ ਹੈ ਬੰਦਾ ਨਹੀਂ ਵੇਖਿਆ ਜਾਂਦਾ ਜਿਹਦੇ ਪਿੱਛੇ ਗੱਲਬਾਤ ਹੋਏਗੀ ਦਿੱਲੀ ਚੋਣਾ ਦੀ ਗੱਲਬਾਤ ਹੋਏਗੀ ਸਰ ਕੱਗਾ ਇੱਕ ਪ੍ਰਚਾਰਕ ਨੇ ਉਹਨਾਂ ਤੇ ਮਲੇਸ਼ੀਆ ਦੇ ਵਿੱਚ ਹਮਲਾ ਹੋਇਆ ਵਿਚਾਰਾਂ ਦਾ ਆਦਾਨ ਪ੍ਰਦਾਨ ਕਿਵੇਂ ਵੀ ਹੋਵੇ ਪਰ ਹਮਲੇ ਵਾਲੀ ਕਹਾਣੀ ਮਾੜੀ ਹੈ ਇਸ ਦੀ ਕਹਾਣੀ ਉਸ ਤੋਂ ਬਾਅਦ ਕੇ 1:20 ਤੇ ਬੁੱਧਵਾਰ ਦਾ ਦਿਨ ਹੈ ਕਹਾਣੀ ਤੁਹਾਡੇ ਲੋਕ ਲਿਖ ਲੇਖਕ ਦੀ ਸਵਾਦਰਵਿੰਦਰ ਸਿੰਘ ਮਲਹਾਂਸ ਕਲਗਰੀ ਰਹਿੰਦੇ ਆ ਉਹਨਾਂ ਦੀ ਇੱਕ ਕਹਾਣੀ ਤੁਹਾਡੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਕੇਆਰਪੀਆਰੇਡੀਓ.com ਤੇ ਸਿੱਧਾ ਪ੍ਰਸਾਰਣ ਜੇ ਗੱਲ ਰਹਿ ਜੇ ਕੋਈ ਸੁਣਨੋਂ ਤਾਂ ਖਬਰ ਨਾਵੇਂ ਤੇ ਲੋਕ ਸਾਥ ਨੂੰ ਪਾਇਆ ਹੁੰਦਾ ਹੈ ਹੋਰ ਵੀ ਰੇਡੀਓ ਪ੍ਰੋਗਰਾਮ ਮੁੰਡੇ ਪਾਉਂਦੇ ਐਟਲੀ ਤੋਂ ਧੰਨਵਾਦ ਹੈ ਉਹਨਾਂ ਦਾ ਮਿਹਨਤ ਕਰਕੇ ਕੋਸ਼ਿਸ਼ ਕਰਦੇ ਆਂ ਤੇ ਤੁਹਾਨੂੰ ਸਾਰੇ ਦੁਨੀਆ ਦੇ ਜਿਹੜੇ ਬਾਹਰ ਨੇ ਪ੍ਰੋਗਰਾਮ ਨੇ ਉਹਨਾਂ ਦੇ ਤੇ ਤੇ ਤੁਸੀਂ ਸੁਣ ਸਕਦੇ ਹੋ ਉਸ ਤੋਂ ਐਪ ਜਿਹੜਾ ਡਾਊਨਲੋਡ ਕਰ ਲਿਆ ਉਹ ਵੀ ਕਰ ਲਵੇ ਸੁਣਨਾ ਸੌਖਾ ਹੋ ਜਾਂਦਾ ਤੇ ਹੋਰ ਵੀ ਬੜੇ ਐਪ ਨਵੇਂ ਆ ਰਹੇ ਨੇ ਕੱਲੇ ਕੱਲੇ ਪੰਜਾਬੀ ਰੇਡੀਓ ਦੇ ਆ ਰਹੇ ਨੇ ਬਹੁਤ ਕੁਝ ਹੈ ਪੁਰਾਣਾ ਜਿਹੜਾ ਸ਼ੁਰੂ ਦੇ ਵਿੱਚ ਟਿਊਨਿੰਗ ਵਗੈਰਾ ਐਪ ਸੀ ਹੁਣ ਤਾਂ ਸਿਰਫ ਸਿਰ ਪੰਜਾਬੀ ਰੇਡੀਓ ਦੇ ਜਿਹੜੇ ਐਪ ਨੇ ਉਹ ਵੀ ਜਦ ਤੁਸੀਂ ਸ਼ਾਪ ਰੌਂਡ ਕਰੋਗੇ ਤੁਹਾਨੂੰ ਲੱਭ ਜਾਣਗੇ ਨੀਵੀ ਡੌਲਾ ਜੀ ਦਾ ਨੰਬਰ 604 440 6462 info@krpradio.com के ਦਾ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਪੇਜ ਇੱਕ ਅਕਾਊਂਟ ਹੈ ਪੇਜ ਤੇ ਵੀ ਤੁਸੀਂ भी ਨਾਲ ਹੋ ਤੇ ਅਕਾਊਂਟ ਤੇ ਵੀ ਨਾਲ ਨਾਲ ਹੋ 5000 ਤੋਂ ਵੱਧ ਅਕਾਊਂਟ ਚ ਮੈਂ ਤੁਹਾਨੂੰ ਐਡ ਨਹੀਂ ਕਰ ਸਕਦਾ ਜਿਨਿਆਂ ਨੇ ਵੀ ਰਿਕਵੈਸਟ ਭੇਜੀ ਆ ਪਲੀਜ਼ ਤੇ ਫਿਰ ਈਮੇਲ ਦਾ ਪਤਾ ਜਿਹੜਾ ਹੈ ਉਹ ਹੈ ਕਿ hcrjitharjeet.g@krpiaradio.com ਇੱਥੇ ਤੁਸੀਂ ਈਮੇਲ ਵੀ ਕਰ ਸਕਦੇ ਹੋ ਪੋਸਤ ਦੇ ਫੁੱਲਾਂ ਤੋਂ ਤੇਰਿਆਂ ਬੁੱਲਾਂ ਤੋਂ ਤਿਤਲੀ ਜੇ ਉੱਡ ਗਈ ਹੈ ਉਹ ਮੇਰਿਆ ਖੁਦਾ ਵੇ ਫਿਰਦੀ ਨਸ਼ਿਆਈ ਹੈ ਪੋਸਤ ਦੇ ਫੁੱਲਾਂ ਤੋਂ ਤੇਰਿਆਂ ਬੁੱਲਾਂ ਤੋਂ ਤਿਤਲੀ ਜੋ ਉੱਡ ਆਈ ਹੈ ਉਹ ਮੇਰਿਆ ਖੁਦਾ ਫਿਰਦੀ ਨਸ਼ਿਆਈ ਹੈ ਏ ਜੋ ਚਟਕੀਲਾ ਰੰਗ ਹੈ ਤੇਰਾ ਹੀ ਬਖਸ਼ਿਆ ਦੰਬ ਹੈ ਕਿ ਤੇਰੇ ਪੈਰ ਤੋਂ ਪਿੰਦੀ ਬਾਗ ਦਾਸੀ ਹੈ ਹੁਣ ਵੀ ਸੁਪਨ ਲੋਕ ਦੀ ਬਾਸੀ ਹੈ ਇਹ ਧਿਆਵੇ ਤੇਰਾ ਨਉ ਕੇ ਅੰਦਰ ਜਾਂਦਾ ਹੈ ਇਹ ਧਿਆਵੇ ਤੇਰਾ ਨਉ ਕੇ ਅੰਦਰ ਸਿੱਖ ਜਾਂਦਾ ਹੈ ਇਸਨ ਭੋਲ ਨੂੰ ਕੀ ਪਤਾ ਹੁਣ ਖੁਦਾ ਵੀ ਵਿਕ ਜਾਂਦਾ ਹੈ ਇਸ ਦੇ ਹੁਣ ਸ਼ਰਾਪ ਫੁੱਲਾਂ ਤੇ ਨਾ ਬਹਿਣ ਦਾ ਮਾਰ ਕੋਈ ਮੰਤਰ ਸਦਾ ਝਟਕਦੇ ਰਹਿਣ ਦਾ ਮੁੜ ਕਹੇ ਮੁੜ ਕਰੇ ਨਾ ਇਹ ਹਕਮ ਹਮਾਕਤ ਕਿਸੇ ਨੂੰ ਚੋਣ ਦੀ ਸਜਾਤਾ ਮਿਲਣੀ ਚਾਹੀਦੀ ਹੈ ਸੁਪਨੇ ਸਜਾਉਣ ਦੀ ਸਜਾਤਾ ਮਿਲਣੀ ਚਾਹੀਦੀ ਹੈ ਸੁਪਨੇ ਸਜਾਉਣ ਦੀ ਜੈਦੀਪ ਸਿੰਘ ਨਮਾ ਇੱਕ ਉੱਬਰਦਾ ਲੇਖਕ ਹੈ 11 ਵਜੇ ਕੇ 16 ਮਿੰਟ ਹੋਏ ਜੀ ਸਵੇਰ ਦੇ ਤੁਸੀਂ ਸੋਸ਼ਲ ਮੀਡੀਆ ਤੇ ਇੰਦਸਿੰਕ ਦਾ ਗਾਇਕ ਪ੍ਰਚਾਰਕ ਨੇ ਮਿਸ਼ਨਰੀ ਨੇ ਉਹਨਾਂ ਤੇ ਹਮਲੇ ਦੀ ਜਿਹੜੀ ਗੱਲ ਹੈ ਫਰੋਂ ਵੇਖ ਰਹੇ ਹੋਂ ਕੋਲਾਲੰਪੁਰ ਦੇ ਵਿੱਚ ਸ਼ਾਇਦ ਮਲੇਸ਼ੀਆ ਚ ਹੋਇਆ ਦੀ ਉਤਾਰ ਬੰਨ ਰਹੇ ਨੇ ਵੀਡੀਓ ਕੋਈ ਬਣਾ ਰਿਹਾ ਅਸੀਂ ਇਸ ਗੱਲ ਤੇ ਆ ਕੇ ਖੜ ਜਾਂਦੇ ਆ ਜਦ ਸਾਡੇ ਵਿਚਾਰਾਂ ਦੇ ਆਦਾਨ ਪ੍ਰਦਾਨ ਦੇ ਵਿਚਾਰਾਂ ਨਾਲ ਕਿਸ ਦਾ ਸਹਿਮਤ ਨਾ ਕੋਈ ਹੋਵੇ ਫਿਰ ਅਸੀਂ ਗੱਲ ਨੂੰ ਪੈਨੇ ਆ ਉਹਦੇ ਇੱਕ ਫੋਟੋ ਆ ਨੀ ਗੁਰਦੁਆਰਾ ਫਾਈਟ ਪਾ ਦਿਓ ਲਾਈਨ یوں ਲੱਗੀ ਆਉਂਦੀ ਆ Google ਵਾਲੇ ਹੱਥ ਨਹੀਂ ਰੱਖਣ ਦਿੰਦੇ یوں ਜਿਵੇਂ ਖਾਲੀ ਖਾਲੀ ਟਿੰਡਾਂ ਖੂਹ ਚੋਂ ਥੱਲੇ ਨੂੰ ਜਾਂਦੀਆਂ ਮਾਸ ਇੱਥੇ ਇੱਥੇ ਇੱਥੇ ਕੋਈ ਕੋਈ ਵੀ ਦੇਸ਼ ਨਹੀਂ ਬਸਿਆ ਜਿੱਥੇ ਡਾਂਗ ਨਾ ਖੜਕੀ ਹੋਵੇ ਇਹ ਅੱਜ ਨਹੀਂ ਪਤਾ ਨਹੀਂ ਪਹਿਲਾਂ ਦਿਨੋਂ ਹੀ ਕੀ ਹੋਇਆ ਇਸ ਸਿੱਖ ਆਪ ਕਦੇ ਵੀ ਰਲ ਕੇ ਨਾ ਬੈਠੇ। ਕਈ ਵਾਰ ਇਹ ਵੀ ਗੱਲ ਨਾਲ ਹੈ ਇਹ ਵੀ ਸਕੂਲ ਆਫ ਥੌਟ ਹੈ ਕਿ ਅਸੀਂ ਆਪਣਾ ਨਾਮ ਪ੍ਰਚਾਰਨ ਕਰ ਲਈ ਕਈ ਵਾਰ ਗਲਤ ਧਾਰਨਾਵਾਂ ਲੋਕਾਂ ਦੇ ਸਾਹਮਣੇ ਕਰਦੇ ਆ ਕਿ ਲੋਕ ਕੰਟਰੋਵਰਸੀ ਦੇ ਵਿੱਚ ਆ ਕੇ ਸਾਡੇ ਵੱਲ ਝਾਕਣ। ਇੰਦਰ ਸਿੰਘ ਘੱਗਾ ਜਾਂ ਹੋਰ ਜਿੰਨੇ ਵੀ ਮਿਸ਼ਨਰੀ ਨੇ ਉਹ ਅਲੱਗ ਚਾਲ ਤੋਂ ਅੱਗੇ ਤੁਰ ਰਹੇ ਨੇ ਤੇ ਕੁਝ ਇੱਕ ਬਾਣੀਆਂ ਤੇ ਜਦਕਿਨ ਤੋਂ ਪ੍ਰੰਤੂ ਹੁੰਦਾ ਤਾਂ ਕੁਝ ਬਾਣੀਆਂ ਨੂੰ ਮੰਨਣ ਵਾਲੇ ਲੋਕ ਸਾਹਮਣੇ ਆ ਖੜਦੇ ਆ ਕਈਆਂ ਦੀ ਆਦਤ ਵੀ ਹੈ ਬਈ ਬੁੱਧੀਜੀਵੀ ਬੈਠੇ ਨੇ ਕੋਈ ਬਲੈਟ ਚ ਬੈਠਿਆ ਉਹਨਾਂ ਦੀ ਆਦਤ ਵੀ ਹੋਵੇ ਕੁਝ ਸਿੱਟੀ ਚੱਲੋ ਤੇ ਸਾਡਾ ਕੰਮ ਚੱਲਦਾ ਰਹੇ ਹੋ ਸਕਦਾ ਕਿਸੇ ਦੀਆਂ ਤਾਰਾਂ ਜਿਹੜੀਆਂ 나ਗਪੁਰ ਵੀ ਜਾਂਦੀਆਂ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਕੋਈ ਗਰੁੱਪ ਚ ਵੀ ਹੋ ਸਕਦਾ ਘੰਟਿਆਂ ਵੱਧੀ ਬੰਦਾ ਸਿੰਘਾ ਬੰਤਾ ਸਿੰਘ ਅੱਗੇ ਬੈਠੇ ਬੰਗਲਾ ਸਾਹਿਬ 'ਚ ਇੱਕੋ ਹੀ ਗੱਲ ਤੇ ਬਾਣੀ ਮੂਹਰੇ ਰੱਖੀ ਐ ਪੋਤੀ ਮੂਹਰੇ ਰੱਖੀ ਉਹਦੇ ਦੋਸ਼ ਸ਼ਬਦ ਉਹ ਸਾਰਾ ਜ਼ੋਰ ਇਸ ਗੱਲ ਤੇ ਲਾਈ ਫਿਰਦਾ ਐ ਕਿ ਇਹ ਲੋਕ ਪੜ੍ਹੇ ਲਿਖੇ ਹੈ ਨਹੀਂ ਮੈਂ ਹੀ ਪੜ੍ਹਿਆ ਲਿਖਿਆ ਤੇ ਇਹਨਾਂ ਦੇ ਜੱ ੱੱੱੱੱੱੱੱੱੱੱੱੱੱੱੱੱ ਸਭ ਮਿਸ਼ਨਰੀਆਂ ਨੇ ਬੰਗਲਾ ਸਾਹਿਬ ਦੇ ਵਿੱਚ ਡੇਰੇ ਲਾ ਰੱਖੇ ਇੱਕ ਜਾਵੇ ਦੂਜਾ ਆ ਦੂਜਾ ਆ ਗਿਆ ਤੀਜਾ ਹੁਣ ਸਰਨੇ ਹੁਣੀ ਪੜਾ ਹੋ ਗਏ ਜੀ ਕੇ ਹੁਣੀ ਉਹਨਾਂ ਨੇ ਦੂਜੇ ਤਕਸਾਲੀ ਬਾੜ ਲਿਆ ਕੇ ਇਹ ਰੌਲਾ ਜਿਹੜਾ ਪਰ ਇਸ ਰੌਲੇ ਦੇ ਵਿੱਚ ਕੌਮ ਰੋਲ ਰਹੀ ਹੈ ਇਹੋ ਜੀਆਂ ਤਕੜੀਆਂ ਸੰਸਥਾਵਾਂ ਜਿਨ੍ਹਾਂ ਤੋਂ थर-थर ਕੇ ਦੁਸ਼ਮਣ थर-थर ਕੰਬਦਾ ਸੀ ਜਦ ਉਹਨਾਂ ਸੰਸਥਾਵਾਂ ਦੇ ਜਥੇਦਾਰ ਬੋਝੇ ਚ ਉਹਨਾਂ ਨੇ ਪਾਏ ਹੋਣ ਜਿਨ੍ਹਾਂ ਦੀ ਟ੍ਰੇਨਿੰਗ ਨਾਗਪੁਰੋਂ ਹੁੰਦੀ ਹੋਵੇ ਇਹ じゃ ਕੁਛੇ ਹੋਣ ਚਾਹੇ ਉਹ ਸੱਚ ਬੋਲਣ ਵਾਲਾ ਢੱਡਰੀਆਂ ਵਾਲਾ ਹੋਵੇ ਉਹਦੇ ਤੇ ਹਮਲਾ 3-3 ਕਿਲੋਮੀਟਰ ਪਿੱਛੇ ਗੋਲੀਆਂ ਚੱਲਦੀਆਂ ਹੋਣ ਸਰਕਾਰ ਵੀ ਅੰਨੀ ਹੋ ਜਾਵੇ ਪੁਲਿਸ ਵੀ ਕੁਛ ਵੀ ਗੱਲ ਹੋ ਸਕਦੀ ਐ ਆਪਸ ਵਿੱਚ ਵਿਚਾਰਾਂ ਦੇ ਆਦਾਨ ਪ੍ਰਦਾਨ ਚ ਪਰ ਦਸਤਾਰ ਨੂੰ ਕਿਸੇ ਦੀ ਨੂੰ ਹੱਥ ਪਾਉਣਾ ਇਹ ਬਹੁਤ ਵੱਡੀ ਭੁੱਲ ਐ ਮੂਰੋਂ ਜੇ ਕੋ ਟਿਕ ਗਿਆ ਟਿਕ ਗਿਆ ਨਹੀਂ ਗੁੱਟ ਦੇ ਕੋਲੋਂ ਟਕੂਆ ਚਾਹੀਦਾ ਫਿਰ ਗੱਲ ਇੱਥੇ ਜਾ ਕੇ ਖੜਵੀ ਐ ਕਈ ਨਹੀਂ ਟਿਕਦੇ ਪਰ ਜੇ ਜਿਹੜਾ ਹੱਥ ਪਾਉਂਦਾ ਜੇ ਉਹਦੇ ਸਿਰ ਤੇ ਬੰਨਿਆ ਉਹਨੂੰ ਪਤਾ ਹੀ ਨਹੀਂ ਕਿ ਉਹਦੇ ਸਿਰ ਤੇ ਕੀ ਬੰਨਿਆ ਉਹ ਲੀਰ ਸਮਝਦਾ ਉਹਨੂੰ ਤਾਂ ਹੀ ਦੂਜੇ ਜਿਹਦੇ ਆਪਣੇ ਹੈ ਨਹੀਂ ਸਿਰ ਤੇ ਉਹਨੇ ਦੂਜੇ ਨੂੰ ਲੰਡਰ ਜਮਾਤ ਜਿਹੜੀ ਤੁਰੇ ਫਿਰਦੀ ਆ ਜਿਹੜੀ ਸਿੰਘਾਂ ਦੇ ਨਾਂ ਤੇ ਬੜੇ-ਬੜੇ ਗੱਲਾਂ ਕਰਦੀ ਆ ਤੇ ਅਸੀਂ ਉੱਥੇ ਆ ਕੀਤਾ ਅਸੀਂ ਉਹ ਨੂੰ ਇਹ ਨਹੀਂ ਪਤਾ ਕਿ ਜਿਹੜੀ ਸਿਰ ਤੇ ਬੰਨੀ ਦਾ ਮਾਣ ਕੀ ਆ ਕਿਉਂਕਿ ਉਹਨਾਂ ਦੇ ਸਿਰ ਤੇ ਹੈ ਨਹੀਂ ਉਹਨਾਂ ਤਾਂ ਕੱਚ ਚ ਪਹਿਲਾਂ ਹੀ ਦੇ ਕੇ ਰੱਖੀ ਹੈ। ਤੋਂ ਇਹ ਹੁਣ ਦੁਨੀਆ ਦੇ ਵਿੱਚ ਉਹ ਵੀਡੀਓ ਫਿਰ ਰਹੀ ਹੈ ਇੰਦਰ ਸਿੰਘ ਦਾ ਉਹਨਾਂ ਨੇ ਕਿਹਾ ਮੈਂ ਨਾ ਉਹਨਾਂ ਨੂੰ ਪੰਤੇ ਸੁਣਿਆ ਮੇਰੇ ਨਾਲ ਮਤਲਬ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਦਸਤਾਰ ਕਿਸੇ ਦੀ ਨੀ ਲੈਣੀ ਚਾਹੀਦੀ ਸਿੱਖ ਦੀ ਸਿੱਖ ਦੀ ਦਸਤਾਰ ਕਿਸੇ ਦੀ ਨਹੀਂ ਲੈਣੀ ਚਾਹੀਦੀ ਚਾਹੇ ਦੁਸ਼ਮਣ ਹੋਵੇ ਚਾਹੇ ਕੋਸ਼ ਹੋਵੇ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਸਾਡੇ ਝੋਲ ਅਸੀਂ ਭਾਲਦੇ ਹਾਂ ਰਾਜ ਜੀ ਸਾਡੇ ਵੱਧ ਅਧਿਕਾਰ ਜੀ 10 ਜਣਿਆਂ ਨੂੰ ਇੱਕ ਕਮਰੇ ਚ ਬੰਦ ਕਰ ਲਿਓ ਜੇ 2 ਘੰਟੇ ਬਾਅਦ ਉਹ ਚੋਂ 4 ਨਾਂ 4 ਹੀ ਨਿਕਲਣਗੇ 6 ਧਰਤੀ ਤੇ ਪਏ ਹੋਣਗੇ ਅੱਧਾ ਘੰਟਾ ਵਾ ਅਸੀਂ ਕੁਝ ਨਾ ਬਹਿ ਨਹੀਂ ਸਕਦੇ ਤੇ ਦੁਸ਼ਮਣ ਵਾਲ ਕਰਦੇ ਅਸੀਂ ਉਂਗਲਾ ਸਾਨੂੰ ਆ ਕਰਤਾ ਸਾਨੂੰ ਆ ਕਰਤਾ ਕਿਉਂਕਿ ਹਾਜ਼ਮਾ ਹੈ ਹੀ ਨਹੀਂ ਮੇਰੀ ਸੁਣ ਬਸ ਦੂਜੇ ਦੀ ਨਹੀਂ ਸੁਣਨੀ ਵਪਾਰ ਖੰਦੇਸ਼ ਹੁਣ ਉੱਗੇ ਵਕੀਲ ਅਮਰੀਕ ਨਾਰੰਗ ਮੇਰੇ ਨਾਲ ਨੇ ਧਾਮੀ ਨਾਰੰਗ ਐਂਡ ਕੰਪਨੀ ਵਕੀਲਾਂ ਦੀ ਵੱਡੀ ਕੰਪਨੀ ਐ ਥੋੜੇ ਸਮੇਂ ਚ ਵੱਡੀਆਂ ਪਲਾਂਘਾਂ ਦੋ ਦਸਤਰ ਅੱਠ ਵਕੀਲ ਅਮਲਾ ਫੈਲਾ ਨਾਲ ਬਹੁਤ ਐ ਵਕੀਲ ਵੀ ਗਹਿ ਗੱਡ ਮਿਆਂ ਪੂਰੇ ਜਿਨ੍ਹਾਂ ਨੂੰ ਕੰਮ ਆਉਂਦਾ ਅਮਰੀਕ ਨਾਰੰਗ ਦੇ ਨਾਲ ਗੱਲਬਾਤ ਕਰਾਂਗੇ ਵੀ ICBC ਵਾਲੇ ਕਿਹੜੀਆਂ ਕਤਿੱਤਾਂ ਕਰੀ ਜਾਂਦੇ ਨਾਲੇ ਸਰਕਾਰ ਕਰੀ ਜਾਂਦੀ ਹੈ ਨਾਰੰਗ ਸਾਹਿਬ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਭਾਈ ਤੇ ਮੈਂ ਲੇਖ ਪੜ ਰਿਹਾ ਸੀ ਜੀ ਮਾਈਕ ਸਮਿਥ ਦਾ ਉਹਨੇ ਦੱਸਿਆ ਕਿ ਵੀ ਕਿਸ ਤਰ੍ਹਾਂ 1.2 ਬਿਲੀਅਨ ਡਾਲਰ ਸਰਕਾਰ ਕੱਢ ਕੇ ਲੈ ਗਈ ICBC ਤੋਂ ICBC ਘਾਟੇ 'ਚ ਤੁਰੀ ਫਿਰਦੀ ਹੈ ਤੇ 4.9% ਵਧਾਉਣ ਨੂੰ ਫਿਰ ਵੀ ਆ ਪ੍ਰੀਮੀਅਮ ਤੇ ਆਉਣ ਵਾਲੇ ਸਾਲਾਂ ਚ ਹੋ ਸਕਦਾ 25 30% ਤੱਕ ਵਧ ਜਵੇ ਸਰਕਾਰ ਦੂਜੇ ਬੰਨੇ ਕਹਿ ਰਹੀ ਹੈ ਕਿ ਕੋਈ ਟੈਕਸ ਨਹੀਂ ਤੁਹਾਡਾ ਰਹੇ ਨੇ ਤੁਹਾਡਾ ਟੈਕਸ ਨਹੀਂ ਵਧਾਉਣਾ ਤੇ ICICI ਦਾ ਪ੍ਰੀਮੀਅਮ ਵਧਾ ਰਿਹਾ ਡਿਵੀਡਾ ਜੋੜੀ ਬੈਠੇ ਆ ICICI ਦੇ ਇਸ ਘਾਟੇ ਬਾਰੇ ਦੱਸੋ ਜੀ ਭਾਈ ਜੀ ਗੱਲ ਇਹ ਆ ਵੀ ਸਨ 2010 ਦੇ ਵਿੱਚ نو ہیر 10 ਤਕ قانون اے کہہ رہا سی وی کیڑا جیڑا وی کوئی سرکاری محکمہ چاہے ہو اپنا ائی سی بی سی دا ہووے چاہے او ہائیڈرو ہووے چاہے کوئی گیس والے ہون جڑے وی کوئی انہاں دے محکمہ ہیں وی او جڑی پرافٹ ہے اس محکمہ دی وی او اس محکمہ چ ہی رہنے ڈپارٹمنٹ چ ہی پرافٹ رہنا چاہیے تے سرکار نے کی سوچیا وی ائی سی بی سی کولے اینے پرافٹ ہے اینے پیسے بنا رہے ہیں ਕਿ ਉਹਨਾਂ ਫੇਰ ਆਪਾਂ ਲੈ ਚੱਕ ਗਏ ਤੇ ਹੋਰ ਮਹਿਕਮਿਆਂ ਨੂੰ ਇਹਨਾਂ ਦੇ ਜਿਹੜੇ ਪ੍ਰਾਫਿਟ ਹੈ ਉਹ ਵੰਡੇ ਜਾਣ। ਸੋ ਅੱਧੀ ਰਾਤੋਂ ਪਬਲਿਕ ਤੋਂ ਬਿਗੈਰ ਕਨਸਲਟੇਸ਼ਨ ਤੋਂ ਲਿਬਰਲ ਸਰਕਾਰ ਨੇ ਸਨ 2010 ਦੇ ਵਿੱਚ ਰਾਤੋਂ ਰਾਤ ਹੀ ਕਾਨੂੰਨ ਬਦਲਤਾ ਜਿਹਦੇ ਨਾਲ ਆਪਣਾ ਸਰਕਾਰ ਆਈਸੀਬੀਸੀ ਦੇ ਜਿਹੜੇ ਪ੍ਰਾਫਿਟ ਹੈ ਉਹ ਡਿਵਿਡੈਂਡ ਰਾਹੀਂ ਚੱਕ ਕੇ ਤੇ ਹੋਰ ਮਹਿਕਮਿਆਂ ਨੂੰ ਦੇਣ ਲੱਗੀ। ਸੋ 2010 ਤੋਂ ਲੈ ਕੇ ਅੱਜ ਤਾਈਂ ਇਹ ਕਿਹਾ ਗਿਆ ਹੈ ਵੀ ਓਵਰ ਜਿਵੇਂ ਤੁਸੀਂ ਕਹਿ ਚੁੱਕੇ ਹੋ ਓਵਰ 1.2 ਬਿਲੀਅਨ ਡਾਲਰ ਗਿਆ ਹੈ ਹੋਰ ਮਹਿਕਮਿਆਂ 'ਚ 1.2 ਬਿਲੀਅਨ ਤੇ ਪਿਛਲੇ 5 ਸਾਲਾਂ 'ਚ ਤਕਰੀਬਨ 550 ਮਿਲੀਅਨ ਵੰਡਿਆ ਸਿਰਫ ਪਿਛਲੇ 5 ਸਾਲਾਂ ਹਮ ਦਾ ਸਾਲ ਕਰਕੇ ਤੇ ਸਰਕਾਰ ਨੂੰ ਚਾਹੀਦੀਆਂ ਵੋਟਾਂ ਤੇ ਪਿਛਲੇ ਸਾਲ ਉਹਨਾਂ ਨੇ ਡਿਕਲੇਅਰ ਕਰਤਾ ਵੀ ਆ ਜਿਹੜੀ 2016 ਦਾ ਪ੍ਰੋਫਿਟ ਹੈ ਉਹ ਅਸੀਂ ਵੰਡਣਾ ਨਹੀਂਗਾ ਉਹ ICBC ਹੀ ਰਹੂਗਾ ਹੂੰ ਸੋ ਇੱਕ ਤਾਂ ਇਹ ਫੈਕਟਰ ਹੋ ਗਿਆ ਦੂਸਰਾ ਫੈਕਟਰ ਹੋ ਗਿਆ ਵੀ ICBC ਜਿਹੜੇ ਪੈਸੇ ਆਪਾਂ ਤੋਂ ਲੈ ਕੇ ਤੇ ਆਪਾਂ ਨੂੰ ਹੀ ਦਿੰਦੀ ਹੈ ਉਹ ਕੱਲੇ ਪ੍ਰੀਮੀਅਮ ਪ੍ਰੀਮੀਅਮ ਦੇ ਕਰਕੇ ਨਹੀਂ ਉਹ ਆਪਾਂ ਨੂੰ ਅਫੋਰਡ ਕਰਦੀ ਕ੍ਰੈਸ਼ ਬਹੁਤ ਹੁੰਦੇ ਆ ਪੇਅ ਆਊਟ ਬਹੁਤ ਹੁੰਦੇ ਆ ਚਾਹੇ ਉਹ ਕਾਰਾਂ ਦੇ ਪੇਅ ਆਊਟ ਹੋਣ ਚਾਹੇ ਬਾਡੀ ਇੰਜਰੀ ਦੇ ਪੇਅ ਆਊਟ ਹੋਣ ਉਹ ਆਪਣੇ ਪੈਸੇ ਜਿਹੜੇ ਲੈਂਦੀ ਹੈ ਪ੍ਰੀਮੀਅਮ ਰਾਹੀਂ ਕੰਪਨੀ ਹੈ ਉਹ ਐਸੇ ਕ੍ਰਾਊਨ ਕਾਰਪੋਰੇਸ਼ਨ ਐਸੇ ਬੋਰਡ ਆਫ ਡਾਇਰੈਕਟਰ ਕੰਪਨੀ ਚੱਲਦੀ ਹੈ ਉਹ ਇਨਵੈਸਟ ਕਰਦੀ ਪੈਸਿਆਂ ਨੂੰ ਤੇ ਜਿੱਥੇ ਜਿੱਥੇ ਵੀ ਇਨਵੈਸਟ ਕਰਦੀ ਆਪਾਂ ਨੂੰ ਪਤਾ ਹੈ ਵੀ ਉਹਦੇ ਜਿਹੜੇ ਵਿਆਜ ਹੈ ਇੰਟਰਸਟ ਰੇਟ ਉਹ ਵੀ ਕੱਟ ਗਿਆ ਫੇਰ ਉਹ ਰੀਅਲ ਏਸਟੇਟ ਵੀ ਇਨਵੈਸਟ ਕਰਦੀ ਕਾਫੀ ਆਪਣੇ ਪੈਸੇ ਤੇ ਲਾ ਕੇ ਇਨਵੈਸਟਮੈਂਟ ਇਨਕਮ ਲਈ ਲੈਂਦੀ ਹੈ ICBC ਉਹ ਗਾਂ ਫਿਰ ਇਨਵੈਸਟਮੈਂਟ ਇਨਕਮ ਤੇ ਡਿਪੈਂਡ ਹੋ ਕੇ ਆਪਾਂ ਨੂੰ ਆਪਣਾ ਪੈਸੇ ਆਪਾਂ ਨੂੰ ਵੰਡਦੀ ਹੈ ਜਦੋਂ ਆਪਣੇ ਕੋਈ ਕਲੇਮ ਉਹਨਾਂ ਦੇ ਖਿਲਾਫ ਹੁੰਦੇ ਸੋ ਅੱਛਾ ਹਾਂਜੀ ਅੰਦਰ ਸਿੰਘ ਸਾਹਿਬ 1200 ਮਿਲੀਅਨ ਸਵਾ ਅਰਬ ਡਾਲਰ ਜੇ ਨਾ ਸਰਕਾਰ ਲੈਂ ਜਾਂਦੀ ICBC ਚੋਂ ਤੋ ਹੁਣ ਉਹ ਇਹ ਤਾਂ ਹੈ ਤਾਂ ਇਹ ਟੇਡਾ ਸਵਾਲ ਹੈ ਕਿਉਂਕਿ ਇਹ ਸਰਪਲਸ ਪਿਆ ਹੋਵੇ ਪੈਸਾ ਤੇ ਉਹਦੇ ਨਾਲ ਫਿਰ ਆਮ ਲੋਕਾਂ ਨੂੰ ਉਹਨਾਂ ਨੇ ਵਾਪਸ ਕੀਮਤਾਂ ਘਟਾ ਦੇਣੀਆਂ ਸੀ ਕੀ ਉਹਦਾ ਫਾਇਦਾ ਹੋਣਾ ਸੀ ਸਰਕਾਰ ਵੱਲ ਨਾ ਜਾਂਦਾ ਉਹ ਪੈਸਾ ਇਹ ਇਹ ਤੁਹਾਡਾ ਐਮ ਸਵਾਲ ਹੈ ਦੇਖੋ ਜੀ ਜਦੋਂ ਹੁਣ ਆਪਾਂ ਕਹਿ ਰਹੇ ਹਾਂ ਇੱਕ ਪੱਖੋਂ ਤਾਂ ਆਪਾਂ ਕਹਿ ਰਹੇ ਹਾਂ ਵੀ ICICI ਇੱਕ ਕੰਪਨੀ ਹੈ ओके okay, ठीक है वो एज ए कंपनी चलनी चाहिए थी ओदे बोर्ड ऑफ डायरेक्टरानो उस कंपनी बारे सोचना चाहिए다シगा ते जे आपा उस ਦੇ दे विच इन्वेस्ट कर रहे जे है जेड़ा भी कोई ਘੱਟ ਤੋਂ ਘੱਟ بیسਿਕ इंश्योरेंस खरीदना पेंदा ਜੇ ਉਸ ਕੰਪਨੀ ਦੇ ਵਿੱਚ ਫਾਇਦਾ ਹੋ ਤੇ ਪ੍ਰਾਫਿਟ ਪ੍ਰਾਫਿਟੇਬਿਲਟੀ ਹੋ ਗਈ ਉਹਦੇ ਬੈਂਕ ਅਕਾਊਂਟ 'ਚ ਇੰਨੇ ਮਿਲੀਅਨ ਡਾਲਰ ਪਏ ਆ ਤੇ ਉਹ ਸ਼ੇਅਰ ਹੋਲਡਰਾਂ ਨੂੰ ਕਿਉਂ ਨਹੀਂ ਵੰਡਦੇ ਉਹ ਜਿਹੜੇ ਆਪਾਂ ਸ਼ੇਅਰ ਹੋਲਡਰ ਆ ਕੰਪਨੀ ਦੇ ਕਿਉਂਕਿ ਆਪਾਂ ਹੀ ਉਹ ਕੰਪਨੀ ਨੂੰ ਫੀਡ ਕਰ ਰਹੇ ਹਾਂ ਹਾਂਜੀ ਸੋ ਮੈਨੂੰ ਇਉਂ ਤਾਂ ਨਹੀਂ ਪਤਾ ਵੀ ਆ ਆਪਾਂ ਨੂੰ ਇੰਸ਼ੋਰੈਂਸ ਆਪਣੇ ਰੇਟ ਸੀ ਕਿਉਂਕਿ ਮੈਂ ਇਕਨੋਮਿਸਟ ਆ ਹੈ ਨਹੀਂ ਪਰ ਉਹ ਮੇਰਾ ਜਾਨੀ ਪਰਸਨਲ ਥਿਊ ਪੁਆਇੰਟ ਜੇ ਡਿਬੇਟ ਕਾਫੀ ਚਰਚਾ ਚੱਲ ਰਹੀ ਹੈ ਇਲੈਕਸ਼ਨ ਇਸ਼ੂ ਬਣ ਚੁੱਕਾ ਵੈਸੇ ਤੇ ਹੁਣ ਤੁਹਾਨੂੰ ਵੀ ਪਤਾ ਰੋਜ਼ ਪੇਪਰ ਪੜ੍ਹਦੇ ਆ ਬਾਈ ਜੀ ਹੁਣ ਰੋਜ਼ ਹੀ ਇਹ ਆਈਸੀਬੀਸੀ ਦੀਆਂ ਗੱਲਾਂ ਹੋ ਰਹੀਆਂ ਜੀ ਹੁਣ ਤਾਂ ਹੋ ਰਹੀਆਂ ਕਿਉਂਕਿ ਹੁਣ ਪਤਾ ਲੱਗ ਗਿਆ ਆਈਸੀਬੀਸੀ ਨੂੰ ਬਾਕੀ ਸਰਕਾਰ ਨੂੰ ਕਿ ਆਈਸੀਬੀਸੀ ਇਸ ਸ਼ੁੱਡ ਨਾਟ ਬੀ ਟ੍ਰੀਟਿਡ ਐਜ਼ ਅ ਕੈਸ਼ ਕਾਊ ਹਾਂਜੀ ਤੇ ਹੁਣ ਇੱਕ ਗੱਲ ਇਹ ਹੋ ਗਈ ਦੂਸਰੀ ਗੱਲ ਹੁਣ ਉਹਨਾਂ ਨੇ ਅਨਾਉਂਸਮੈਂਟ ਕਰਤੀ ਆਈਸੀਬੀਸੀ ਨੇ ਵੀ 2016 ਤੋਂ ਲੈ ਕੇ 2020 ਤੱਕ ਸੋ ਪੰਜਾਂ ਸਾਲਾਂ ਦੇ ਵਿੱਚ 42% ਹੋ ਸਕਦਾ 40 ਤੋਂ ਉੱਪਰ ਪਰਸੈਂਟ ਆਪਣੇ ਇੰਸ਼ੋਰੈਂਸ ਰੇਟ ਸਾਰਿਆਂ ਦੇ ਵੱਧ ਸਕਦੇ ਆ ਇਹਦੀ ਮੈਥ ਵੀ ਕੱਢੀ ਗਈ ਹੈ ਮੈਥ ਇਹ ਆਉਂ ਡਾਲਰ ਦਿੰਨੇ ਆ ਗੱਡੀ ਦਾ 1 ਸਾਲ ਦੀ ਇਨਸ਼ੋਰੈਂਸ ਦਾ ਤੇ 50 ਸਾਲਾਂ ਤੱਕ 2500 ਡਾਲਰ ਹੋ ਸਕਦਾ ਉਸੇ ਗੱਡੀ ਦਾ ਸੋ ਇੱਕ ਪਾਸੇ ਕਲਾਰਕ ਕਹਿ ਰਹੀ ਹੈ ਵੀ ਮੈਂ ਆਪਣਾ ਟੈਕਸ ਨਹੀਂ ਵਧਾਇਆ ਐਮਐਸਪੀ ਘਟਾਤੀ ਤੁਹਾਨੂੰ ਫਾਇਦਾ ਲਿਬਰਲ ਸਰਕਾਰ ਨੇ ਸਰਕਾਰ ਨੇ ਇਨਾ ਫਾਇਦਾ ਦਿੱਤਾ ਪਰ ਔਨ ਦੀ ਅਦਰ ਹੈਂਡ ਇਹ ਇਨਡਾਇਰੈਕਟਲੀ ਆਪਾਂ ਤੋਂ ਪੈਸੇ ਕੱਢ ਰਹੇ ਵੀ ਟੈਕਸੇਸ਼ਨ ਵਾਂਗ ਹੋ ਗਈ ਗੱਲ ਕਿਉਂਕਿ ਸਾਰਿਆਂ ਨੂੰ ਇੰਸ਼ੋਰੈਂਸ ਤਾਂ ਉਹਨਾਂ ਤੋਂ ਹੀ ਕਰਾਉਣਾ ਪੈਂਦਾ ਫਿਰ ਉਹ ਟੈਕਸ ਹੀ ਹੋ ਗਿਆ ਬੀਸੀ ਹਾਈਡਰੋ ਦੇ ਵੀ ਰੇਟ ਵਧ ਗਏ ਬੀਸੀ ਯੂਟਿਲਿਟੀਜ਼ ਕਮਿਸ਼ਨ ਤੋਂ ਅਪਰੂਵਲ ਲੈਣੀ ਪੈਂਦੀ ਉਹ ਵੀ ਅਪਰੂਵਲ ਮੰਗੀ ਸੀ ਮਿਲ ਗਈ ਸੋ ਇਸ ਸਾਲ ਹੀ ਆਪਾਂ ਨੂੰ 4.9% ਵਧ ਦੇਣਾ ਪਿਆ ਸੋ ਇਟਸ ਬਿਕਮ ਅ ਬਿਗ ਤੇ ਆਪਾਂ ਨੂੰ ਸਾਰਿਆਂ ਨੂੰ ਨੌਲੇਜ ਇਸ ਇਸ਼ੂ ਦੀ ਵੀ ਇਹ ਹੋਈ ਐ ਆਈਸੀਬੀਸੀ ਕੌਸ਼ਿਸ਼ ਕਾਸਟ ਵਧ ਗਏ ਵਕੀਲਾਂ ਨੇ ਸਾਡਾ ਖਰਚਾ ਵਧਾਤਾ ਲੋਕੀ ਵਕੀਲ ਜ਼ਿਆਦਾ ਕਰਨ ਲੱਗੇ ਤੇ ਐਸੇ ਜ਼ਿਆਦਾ ਮੰਗਣ ਲੱਗੇ ਆਪਣੇ ਵਕੀਲਾਂ ਦਾ ਕਸੂਰ ਨਹੀਂ ਤੁਸੀਂ ਕੱਢ ਸਕਦੇ ਇਹ ਸਾਰਾ ਸਟਰਕਚਰ ਆਪਾਂ ਨੂੰ ਦੇਖਣਾ ਚਾਹੀਦਾ ਹਾਂਜੀ ਅੱਛਾ ਜੀ ਇੱਕ ਗੱਲ ਇਹ ਤਾਂ ਚਲੋ ਆਉਣ ਵਾਲੇ 40 42 ਤਾਂ ਵਧ ਗਏ ਹੁਣ ਜਿਹੜੇ 5% ਵਧਣਾ 2000 ਜੀ ਦਾ ਇੰਸ਼ੋਰੈਂਸ ਦਾ ਮਿਸਾਲ ਦਾ ਉਹਦਾ 100 ਵਧ ਗਿਆ 100 ਤੋਂ ਜਿਆਦੀ ਪ੍ਰੀਮੀਅਮ ਬਣੀ ਹੈ ਇੱਕਦਾਰਕ 32% ਵਧ ਗਿਆ ਜਾਂ ਤੋਂ ਪਤਾ ਹੀ ਨਹੀਂ ਲੱਗਿਆ ਅੱਜ ਅੱਜ ਪੜ ਕੇ ਪਤਾ ਲੱਗਿਆ ਵੀ 32% ਸਾਡਾ ਜਿਹੜਾ ਇੰਸ਼ੋਰੈਂਸ ਵਧ ਗਿਆ ਹਾਂ ਜੀ ਹਾਂ ਤਾਂ ਹੀ 라ਵੀ ਵੀਰ ਦਾ ਵਿਦਿਆਰਥੀ ਤਿੰਨ ਰਤੋ ਰਾਤੀ ਬਦਲਿਆ ਗਿਆ ਬਹੁਤ ਘੱਟ ਕਾਉਂਸਲਟੇਸ਼ਨ ਕੀਤੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਕੁਝ ਹੋ ਸਕਦਾ ਵੀ ਲੋਨ ਲੋਨ ਹੈ ਥੋੜਾ ਆਉਣ ਲੱਗੇ ਆ ICICI ਨੂੰ ਵੀ ਮਿਨਿਸਟਰੀ ਆਫ ਫਾਈਨੈਂਸ ਨੇ ਜਾਂ ਕੋਹਰ ਕਿਸੇ ਮਿਨਿਸਟਰੀ ਨੇ ਜਾਂ ਐਜੂਕੇਸ਼ਨ ਮਿਨਿਸਟਰੀ ਨੇ ਬਾਕੀ ICICI ਨੂੰ ਪੈਸੇ ਮੋੜਦੇ ਨੇ ਰਾਈਟ ਚਰਚਾ ਚੱਲ ਰਹੀ ਹੈ ਅੱਛਾ ਜੀ ਇਹਦੇ ਵਿੱਚ ਹੁਣ ਇਹ ਜਿਹੜਾ ਫਰਕ ਪਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਡੇਡਾ ਹੋ ਗਿਆ 2000 ਵਾਲੇ ਦਾ 3 ਹੋ ਜਾਣਾ 1800 ਵਾਲੇ ਦਾ 2500 ਗਾਂਹ ਵਾਲੇ ਦਾ ਵੀ ਵਾਧੇ ਦਾ ਸਾਨੂੰ 5-5% ਵਾਧੇ ਦਾ ਪਤਾ ਹੀ ਲੱਗਣਾ 400 ਮਿਲੀਅਨ ਦਾ ਘਾਟਾ ਦਿਖਾ ਰਹੀ ਹੈ ਅੱਛਾ ਇਹਦੇ ਚ ਹੁਣ ਇੱਕ ਘਾਟੇ ਚੋਂ ਨਿਕਲਣ ਲਈ ਪੈਸਾ ਸੰਭਲਣ ਲਈ 1.2 ਬਿਲੀਅਨ ਦਿੱਤਾ ਜਿਹੜਾ ਉਹਨੂੰ ਪੂਰਿਆ ਕਰਨ ਲਈ ਹੁਣ ਕੁਛ ਆਈਸੀਬੀਸੀ ਫਿਰ ਖਾਸ ਵੀ ਛੜਜੰਤਰ ਟਾਈਪ ਕਰ ਬੀ ਹੈ ਲੋਕਾਂ ਦੇ ਕਲੇਮ ਜਵਾਬ ਦੇਣਾ ਜਾਂ ਕੁਛ ਇਹ ਸਾਂ ਉਸ ਕਰ ਸਕਦੀ ਹੈ ਪਿਛਲਾ ਰੈਕਡ ਕੀ ਕਹਿੰਦਾ ਪਿਛਲਾ ਰੈਕਡ ਇਹ ਕਹਿ ਨੇ ਪੈਸੇ ਬਚਾਉਣ ਦੇ ਮਾਰਿਆਂ ਨੇ ਕਾਫੀ ਬੰਦੇ ਜਾਂ ਬੁੜੀਆਂ ਹਟਾਤੀਆਂ ਆਪਦੇ ਕਾਫੀ ਉਹਨਾਂ ਨੇ LAYOFF ਕਰਤੇ ਤਕਰੀਬਨ 500 EMPLOYEES LAYOFF ਹੋਇਆ ਪਿਛਲੇ 10 ਸਾਲਾਂ 'ਚ ਕਿਉਂ ਹੋਇਆ ਉਹ ICICI ਨੇ ਤਾਂ ਕੀਤਾ ਲੇਆਫ ਬੰਦੇ ਬੁੜੀਆਂ ਵੀ ਅਸੀਂ ਪੈਸੇ ਆਪਦੇ ਜਿਹੜੀ ਐਕਸਪੈਂਡੀਚਰ ਹੈ ਉਹ ਬਚਾਈਗੇ ਪਰ many of those ਸੀਗੇ ਤੇ ਉਹਨਾਂ ਨੇ ਫਰੰਟ ਲਾਈਨ ਤੇ ਸੀ ਸੋ ਇਹ ਵੀ ਸੋਚੋ ਫਰੰਟ ਲਾਈਨ ਵਾਲੇ ਹੁੰਦੇ ਆ ਜਿਹੜੇ ਕਿ ਜਦੋਂ ਆਪਾਂ ਕਾਰ ਐਕਸੀਡੈਂਟ ਆਪਣਾ ਹੋ ਜਾਂਦਾ ਤੇ ਆਪਾਂ ICICI ਨੂੰ ਫੋਨ ਕਰ ਲੀਦਾ ਹੈ ਬਗੈਰ ਵਕੀਲ ਤੇ ਆਪਾਂ ਨੂੰ ICBC ਦਾ ਇੱਕ ਇੰਸ਼ੋਰੈਂਸ ਅਜਸਟਰ ਅਸਾਈਨ ਹੋ ਜਾਂਦਾ ਫਾਈਲ ਤੇ ਤੇ ਉਹਦਾ ਕੰਮ ਕਿਸੇ ਹੋਰ ਨੂੰ ਤੇ ਬਾਕੀਆਂ ਤੇ ਹੈ ਉਹ ਵੱਧ ਜਾਂਦਾ ਹੈ ਵਰਕਲੋਡ ਵਧਣ ਦੇ ਨਾਲ ਉਹਨਾਂ ਦੇ ਤਾਂ ਫਿਰ ਉਹ ਕਲਾਇੰਟ ਸਰਵਿਸ ਕਿਵੇਂ ਦੇਊਗਾ ਸੋ ਹੂੰ ਖਰਚੇ ਘਟਾਉਣ ਦੇ ਮਾਰੇਆਂ ਨੇ ਅਡਜਸਟਡ ਹਟਾਉਣ ਦੇ ਮਾਰੇਆਂ ਨੇ ਸੋ ਉਹਨਾਂ ਨੇ ਕਲੇਮ ਹੈ ਜਿਹੜੇ ਉਹ ਲੈਡੀਗੇਟ ਸਮ ਉਹ ਵਧ ਦੇ ਨਾਲ ਅਨਸੈਟੀਸਫਾਈਡ ਐ ਜਾਂ ਡਿਸਸੈਟੀਸਫਾਈਡ ਹਾਂਜੀ ਜਦੋਂ ਮੈਂ ਆਈਸੀਬੀਸੀ ਕੰਮ ਕਰਦਾ ਸੀਗਾ ਮੈਂ ਕਾਫੀ ਸੋਚਦਾ ਹੁੰਦਾ ਸੀ ਵੀ ਇਹ ਕਲੇਮ ਇਹਨਾਂ ਨੇ ਬੰਦ ਕਿਉਂ ਨਹੀਂ ਕੀਤਾ ਜੀ ਅਗਲਾ ਕਹਿ ਰਿਹਾ ਵੀ ਮੈਨੂੰ 5000 ਡਾਲਰ ਮਨਜ਼ੂਰ ਹੈ ਮੈਨੂੰ ਨਾਲ 5700 ਡਾਲਰ ਦੀ ਟ੍ਰੀਟਮੈਂਟ ਦੇ ਦਿਓ ਤਾਂ ਮੈਂ ਖੁਸ਼ ਆ ਉਹ ਉਸ ਟਾਈਮ ਦਾ ਜਾਂ ਵਕਤ ਦਾ ਫਾਇਦਾ ਨਹੀਂ ਹਟਾਇਆ ਗਿਆ ਉਹਨਾਂ ਤੋਂ ਰਾਈਟ ਲਿਆ ਗਿਆ ਉਹਨਾਂ ਤੋਂ ਤੇ ਗਾਹ ਸਮੋ ਕਸਟਮਰ ਨੂੰ ਵਾਪਸ ਕਰਕੇ ਤੇ ਕਲੇਮ ਨੂੰ ਲੰਬਾ ਚੌੜਾ ਆਪ ਹੀ ਕਰ ਲੈਂਦੇ ਸੋ ਇਹ ਉਹਨਾਂ ਨੂੰ ਹੁਣ ਜਨਵਰੀ ਦੇ ਵਿੱਚ ਵੈਸੇ ਇੱਕ ਸਟੱਡੀ ਹੁਣ ਆਰਡਰ ਕੀਤੀ ਗਈ ਹੈ ਸੋ ਕੰਪਰੀਹੈਂਸਿਵ ਸਟੱਡੀ ਕੀਤੀ ਗਈ ਹੈ ਉਹਦੇ ਵਿੱਚ ਇਹਨਾਂ ਨੇ ਹੁਣ ਆਪਦੇ ਸਾਰੇ ਪ੍ਰੈਕਟਿਸ ਸਾਰੇ ਪ੍ਰੋਸੀਜਰ ਸਾਰੀ ਹਿਸਟਰੀ ਰਿਵਿਊ ਕਰਕੇ ਤੇ ਕਾਫੀ ਰეკਮੈਂਡੇਸ਼ਨਾਂ ਆਉਣੀਆਂ ਆ ਆਪਾਂ ਨੂੰ ਅਮਰੀਕ ਨਾਰਿੰਗ ਤੇ ਰਾਜਧਾਨੀ ਧਾਮੀ ਧਾਮੀ ਨਾਰਿੰਗਨ ਕੰਪਨੀ ਦੇ ਉਹਗੇ ਵਕੀਲ ਅਮਰੀਕ ਨਾਰਿੰਗ ਮੇਰੇ ਨਾਲ ਗੱਲ ਕਰ ਰਹੇ ਸੰਦੇਸ਼ਾਂ ਤੋਂ ਬਾਅਦ ਉੱਥੇ ਹੀ ਦਵਾਫੇਰ ਆਈਬੀਸੀ ਦੇ ਬਾਰੇ ਗੱਲ ਚੱਲੂਗੀ ਤੇ ਇਹਦਾ ਕੀ ਫਰਕ ਪੈਣ ਵਾਲਾ ਆਉਣ ਵਾਲੇ ਸਮੇਂ 'ਚ ਅਚ 40% ਦਾ ਵਾਧਾ ਬਹੁਤ ਵੱਡਾ ਵਾਧਾ ਨਾਰਿੰਗਰ ਦੇ ਨਾਲ ਧਾਮੀ ਨਾਰਿੰਗਨ ਕੰਪਨੀ ਤੋਂ ਗੱਲਬਾਤ ਕਰ ਰਹੇ ਨੇ ICBC ਬਾਰੇ ਅਚਾ ਵਕੀਲ ਸਾਹਿਬ ਇੱਕ ਸਮਝਾਇਓ ਜਿਹੜੇ ICBC ਦੇ ਵਕੀਲ ਨੇ ਉਹ ਇਸ ਹੀ ਨੇ ਜਿਵੇਂ ਕੋਈ ਵੀ ਤੁਹਾਨੂੰ ਹਾਇਰ ਕਰਦਾ ਜਾਂ ਉਹ ਉਹ ICBC ਦੇ EMPLOYE ਨੇ ਆ ਆਈਸੀਬੀਸੀ ਦੇ ਹੁਣ ਤਾਂ ਬਾਈ ਜੀ ਇਨ ਹਾਊਸ ਕਾਫੀ ਵਕੀਲ ਹੋ ਗਏ ਪ੍ਰਾਈਵੇਟ ਲਾ ਫਰਮ ਨੂੰ ਕੰਮ ਦੇ ਰਹੇ ਆ ਪਰ ਅੱਗੇ ਨਾਲੋਂ ਉਹ ਕੰਮ ਸਾਰਾ ਇਨ ਹਾਊਸ ਚ ਫਾਇਦਾ ਸਮਝਦੇ ਆ ਕਿਉਂਕਿ ਉਹਨਾਂ ਦੀ ਪੇ ਘੱਟ ਹੁੰਦੀ ਹੈ ਉਹਨਾਂ ਦੇ ਰੇਟ ਘੱਟ ਹੁੰਦੇ ਆ ਤੇ ਖਰਚੇ ਬਚਾਉਣ ਦੇ ਮਾਰੇ ICBC ਆਪਦੇ ਆਪ ਵਕੀਲ ਐਜ਼ ਏਮਪਲੋਈ ਰੱਖਣ ਵਕੀਲ ਦੀ ICBC ਵਾਲੇ ਦੀ ਇਹ ਹੁੰਦੀ ਆ ਵੀ ਘੱਟ ਤੋਂ ਘੱਟ ਸਾਰਿਆ ਜਾਵੇ। ਲੋਕਾਂ ਦੇ ਵਿੱਚ ਇਹ ਰਾਏ ਹੈ ਵੀ ਜੇ ਮੰਨ ਲਓ ਕਿਸੇ ਨੂੰ 4 ਲੱਖ ਡਾਲਰ ਮੁਆਵਜ਼ਾ ਮਿਲਣਾ ਉਹਦੇ ਚੋਂ ICBC ਦਾ ਵਕੀਲ ਕੋਸ਼ਿਸ਼ ਕਰ ਲਵੇ ਤੇ ਇੱਧਰ ਵਕੀਲ ਮਾੜਾ ਹੋਵੇ 2 ਲੱਖ ਚ ਸਾਰ ਦੇਵੇ ਜਿਹੜਾ ਉੱਪਰਲਾ 2 ਲੱਖ ਬਚਿਆ ਉਹਦੇ 'ਚ ਉਹਨਾਂ ਨੂੰ ਇਹ ਗੱਲ ਸੱਚ ਹੈ ਇਹ ਗੱਲ ਮੈਂ ਡਾਇਰੈਕਟਲੀ ਨਹੀਂ ਇਹਦੇ ਬਾਰੇ ਕਹਿ ਸਕਦਾ ਕਿਉਂਕਿ ਮੈਂ ਦੇਖਿਆ ਨਹੀਂ ਕਿ ਕਮਿਸ਼ਨ ਮਿਲਦਾ ਉਹਨਾਂ ਨੂੰ ਪਰ ਮੈਂ ਇੰਨੀ ਗੱਲ ਜ਼ਰੂਰ ਜਾਣਦਾ ਹਾਂ ਕਿ ਐਂਡ ਆਫ ਦ ਈਅਰ ਜਿਹੜੇ ICICI ਦੇ ਐਡਜਸਟਰ ਹੈ ਉਹਨਾਂ ਦੇ ਜਿਹੜੇ ਸਟੈਟਿਸਟਿਕਸ ਹੈ ਉਹ ਕਾਫੀ ਨਿਗਰਾਨੀ ਨਾਲ ਐਨਲਾਈਜ਼ ਹੁੰਦੇ ਆ ਸਟੈਟਿਸਟਿਕ ਕਿਹੜੇ ਇੰਪੋਰਟੈਂਟ ਆ ਉਹ ਹੈਗੇ ਆ ਵੀ ਉਹਨਾਂ ਨੇ ਕਿੰਨੀਆਂ ਫਾਈਲਾਂ ਇੱਕ ਅਜਸਟ ਨੇ ਸੈਟਲ ਕੀਤੀਆਂ ਫਿਰ ਉਹ ਫਾਈਲਾਂ ਕਿੰਨੇ ਚ ਸੈਟਲ ਕੀਤੀਆਂ ਉਹਨਾਂ ਦੇ ਟੋਟਲ ਖਰਚੇ ਕਿੰਨੇ ਕੀਤੇ ਉਹ ਫਾਈਲਾਂ ਕਿਹੋ ਜਿਹੀਆਂ ਸੀਗੀਆਂ ਸਾਫਟ ਟਿਸ਼ੂ ਵਾਲਗਾ ਸੀ ਕਿ ਕੋਈ ਕਿਸੇ ਦੀ ਹੱਡੀ ਟੁੱਟੀ ਸੀ ਕਿ ਕਿਸੇ ਦੇ ਦਿਮਾਗੀ ਸੱਟ ਸੀ ਸੋ ਉਹਨਾਂ ਦੇ ਉੱਤੇ ਨਿਗਰਾਨੀ ਜ਼ਰੂਰ ਕਾਫੀ ਰੱਖਦੇ ਆ ਇੰਨੀ ਗੱਲ ਮੈਂ ਕਹਿ ਸਕਦਾ ਹੌਸਲੇ ਨਾਲ ਪਰ ਜੇ ਉਹਨਾਂ ਨੂੰ ਪੈਸੇ ਦੀ ਸੀਕ੍ਰੀਟ ਹੈ ਪਰ ਰੂਮਰਸ ਬੰਦਾ ਬਿਮਾਰ ਹੁੰਦਾ ਸੱਟ ਲੱਗੀ ਕੰਮ ਛੁੱਟ ਦੇ ਕੰਮ ਨਹੀਂ ਕਰ ਸਕਦਾ ਖੂਂਡੀ ਨਾਲ ਜਾਂ ਹੌੜੀਆਂ ਤੇ ਤੁਰਨ ਲੱਗ ਗਿਆ ਜਾਂ ਲੱਗ ਗਈ ਉਪਰੋਂ ICBC ਵਾਲੇ ਉਹਦੀ ਸਪਾਇੰਗੇ ਕਿੱਥੇ ਜਾਂਦਾ ਕਿੱਥੇ ਗਿਆ ਇਹਦੀ ਫੇਸਬੁੱਕ ਵੇਖੋ ਜੇ ਉਹ ਬੰਦੇ ਨੂੰ ਮੈਂਟਲੀ ਵੀ ਟੌਰਚਰ ਕਰਦੇ ਐ ਸਰੀਰਕ ਸੱਟ ਤੋਂ ਬਾਅਦ ਦਿਮਾਗੀ ਖਲਜਗਣ ਪਾਉਂਦੇ ਆ ਬੰਦੇ ਦੇ ਉਹ ਬਹੁਤ ਔਖਾ ਇਹੋ ਜੀ ਹਾਲਤ ਦੇ ਵਿੱਚ ਤੁਸੀਂ ਆਲਮੋਸਟ ਡਿਸੇਬਲ ਹੋ ਰਹੇ ਹੋ ਅਪਾਹਜ ਹੋ ਰਹੇ ਹੋ ਇਹੋ ਜੇ ਕੇਸਾਂ ਦੇ ਵਿੱਚ ਉਹਨਾਂ ਨੂੰ ਕੋਈ ਸੁਝਾਅ ਦਿਓ ਜੀ ਬੰਦੇ ਬਹੁਤ ਟੁੱਟ ਜਾਂਦੇ ਐ ਇਸ ਸਮੇਂ ਕਈ ਤਾਂ ਫਿਰ ਆਤਮ ਹੱਤਿਆ ਤੱਕ ਜਾਣ ਨੂੰ ਉਹਨਾਂ ਦਾ ਮਨ ਕਰਦਾ ਤੇ ਇਹਦੇ ਬਾਰੇ ਦੱਸੋ ਤੁਹਾਡੇ ਤਜਰਬੇ ਦੇ ਵਿੱਚ ਇਹ ਬਾਈ ਜੀ ਗੱਲ ਇਓਂ ਐ ਵੀ ਵਕੀਲ ਕਰਨ ਚ ਫਾਇਦਾ ਨਾ ICBC ਦੀ ਉਹ ਨਾਲ ਸੰਪਰਕ ਕਰਕੇ ਤੇ ਉਹ ਟਾਈਮ ਦੀ ਜਿਹੜੀ ਡਿਲੇ ਹੈ ਉਹ ਕੱਢ ਦਈਦੀ ਹੈ ਮੈਂ ਐਗਜ਼ਾਮਪਲ ਦਿੰਦਾ فرض ਕਰੋ ਹਸਬੰਡ ਟਰੱਕ ਡਰਾਈਵਰ ਹੈ ਤੇ ਵਾਈਫ ਘਰੇ ਕੰਮ ਕਰਦੀ ਹੈ ਸਾਰਾ ਘਰ ਦਾ ਕੰਮ ਆਪ ਚਲਾਉਂਦੀ ਹੈ ਨਾਲ ਦੋ ਬੱਚੇ ਸਾਹਮਣੇ ਹੈ ਜੇ ਵਾਈਫ ਦੇ ਸੱਟ ਲੱਗ ਜੇ ਫਰਜ ਕਰੋ ਉਹਦੀ ਲੱਤ ਟੁੱਟ ਜੇ ਫੇਰ ਜੇ ਉਹ ਬਗੈਰ ਵਕੀਲ ਤੋਂ ICICI ਨੂੰ ਅਪਰੋਚ ਕਰਦੀ ਹੈ ਵੀ ਮੈਨੂੰ ਘਰ ਦੇ ਕੰਮ ਵਾਸਤੇ ਕਲੀਨ ਅਪ ਕਰ ਕਰਨ ਤੇ ਬਹੁਤ ਟਾਈਮ ਲਾਉਂਦੀ ਹੈ ICICI ਪ੍ਰੋਸੈਸ ਦਾ ਮਤਲਬ ਹੈ ਵੀ ਕਈ ਹਫ਼ਤੇ ਲਾਉਂਦੀ ਹੁਣ ਜਿਹਦੀ ਜਾਨ ਅੱਜ ਟੁੱਟਦੀ ਹੈ ਉਹ ਕਈ ਹਫ਼ਤੇ ਵੇਟ ਕਿਵੇਂ ਕਰ ਸਕਦਾ ਜਾਂ ਕਰ ਸਕਦੀ ਹੈ ਹਾਂਜੀ ਤੋ ਜਦੋਂ ਅਸੀਂ ਵਿੱਚ ਪੈ ਜੰਨੇ ਆ ਸਾਡੀਆਂ ਜਦੋਂ ਈਮੇਲਾਂ ਜਾਣ ਲੱਗ ਜਾਂਦੀਆਂ ਤੇ ਫੋਨਾਂ ਫੋਨ ਤੇ ਟੈਲੀਫੋਨ ਤੇ ਮੈਸੇਜ ਪਰ ਲੱਗ ਜਾਂਦੇ ਆ ਫਿਰ ਉਹ ਅਸੀਂ ਆਈਸੀਬੀਸੀ ਦੇ ਅਡਜਸਟ ਨੂੰ ਦਬਾ ਕੇ ਤੇ ਉਹ ਛੇਤੀ ਕੰਮ ਕਰਾ ਦਿੰਦਾ ਸੋ ਇੱਕ ਤਾਂ ਇਹ ਐਗਜ਼ਾਮਪਲ ਹੈ ਦੂਸਰਾ ਐਗਜ਼ਾਮਪਲ ਇਹ ਹੈ ਵੀ ਕੇਵਰੀ ਕਸਟਮਰ ਜਿਹੜਾ ਸਾਡਾ ਕਲਾਇੰਟ ਹੈ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਜਾ ਕੇ ਪਹਿਲਾਂ ਡਾਕਟਰ ਦਾ ਨੋਟ ਲੈਣਾ ਪੈਣਾ ਵੀ ਮੈਂ ਟ੍ਰੀਟਮੈਂਟ ਕਿਹੜੀ ਕਰਾਉਣੀ ਹੈ ਇਕਿੱਥੇ ਕਰਾਉਣੀ ਹੈ ਤੇ ਫਿਰ ਮੈਂ ਉਹ ਟ੍ਰੀਟਮੈਂਟ ਦੇ ਪੈਸੇ ICICI ਤੋਂ ਲੈ ਸਕਦਾ ਹਾਂ ਸੋ ਸਾਨੂੰ ਕਾਹ ਕਲਾਇੰਟ ਨੂੰ ਐਜੂਕੇਟ ਕਰਨਾ ਪੈਂਦਾ ਵੀ ਤੁਸੀਂ ਕਾਨੂੰਨ ਬਾਰੇ ਸਾਥੋਂ ਪੁੱਛੋ ਕਿਉਂਕਿ ਕੱਢਣੇ ਹੁੰਦੇ ਆ ਹੁਣ ਜਿਹਨੂੰ ਟ੍ਰੀਟਮੈਂਟ ਅੱਜ ਚਾਹੀਦੀ ਹੈ ਡਾਕਟਰ ਦਾ ਨੋਟ ਨਹੀਂ ਡਾਕਟਰ ਅਪਾਇੰਟਮੈਂਟ ਨਹੀਂ ਦੇ ਰਿਹਾ 2 ਹਫ਼ਤੇ ਦੀ ਟ੍ਰੀਟਮੈਂਟ ਉਹਨੂੰ ਅੱਜ ਚਾਹੀਦੀ ਜਾਨ ਅੱਜ ਟੁੱਟਦੀ ਹੈ ਤੇ ICICI ਦੇ ਅਡਜਸਟਰ ਕਹਿੰਦਾ ਵੀ ਮੈਂ ਤਾਂ ਤੇਰੇ ਲਈ ਕੁਝ ਨਹੀਂ ਕਰਨਾ ਜਿੰਨਾ ਫਿਕਰ ਤੁਸੀਂ ਦਾ ਨੋਟ ਨਹੀਂ ਦਿੰਦੇ ਪਹਿਲਾਂ ਤਾਂ ਫੋਨ ਤੇ ਨਹੀਂ ਆਉਂਦੇ ਕਈ-ਕਈ ਦਿਨ ਸੋ ਕੇ ਤੇ ਚੈੱਕਲਿਸਟ ਹੁੰਦੀ ਹੈ ਮੇਰੇ ਕੋਲੇ ਤੇ ਮੈਂ ਪਹਿਲੇ ਹੀ ਉਹਨਾਂ ਨੂੰ ਸਾਰੇ ਕਾਨੂੰਨੀਆਂ ਕਾਨੂੰਨੀ ਰਹਿਵਾਂ ਦੇ ਕੇ ਤੇ ਉਹਨਾਂ ਨੂੰ ਮੈਂ ਐਜੂਕੇਟਿਡ ਕਰ ਦਿੰਦਾ ਸੋ ਬਹੁਤ ਵੱਡਾ ਫਾਇਦਾ ਹੁੰਦਾ ਹੈ ਐਕਸਪੀਰੀਅੰਸ ਵਕੀਲ ਦੇ ਨਾਲ ਜੁੜਨਾ ਤੇ ਕਈ ਆ ਕੇ ਕਹਿਣਦੇ ਦੇ ਅਮਰੀਕ ਜੀ ਅਮਰੀਕ ਜੀ ਤੇਨੂੰ 25% ਦੇਣਾ ਹੈ ਤਾਂ ਅਸੀਂ ਆਪ ਹੀ ਕਰ ਲੈਨੇ ਆ ਪਰ ਬਾਈ ਜੀ ਉਹ ਗੱਲ ਨਹੀਂ ਰਹਿੰਦੀ ਆਪ ਤੋਂ ਜੇ ਆਪ ਕੰਮ ਹੁੰਦਾ ਜੇ ਉਹ ਚੰਗੇ ਬੰਦਿਆਂ ਨੂੰ ਜਾਂ ਬੁਢਿਆਂ ਲੱਗਦੀ ਜਾਂਦੀ ਦੀ ਉਹਨਾਂ ਨੂੰ ਓਨੇ ਪੈਸੇ ਦਿੰਦੇ ਹੁੰਦੇ ਤਾਂ ਸਾਡਾ ਕੰਮ ਬਿਲਕੁਲ ਨਾ ਚੱਲਦਾ ਸੋ ਕਾਫੀ ਤਰੱਕੀ ਕੀਤੀ ਹੈ 8 ਵਕੀਲ ਹੋ ਗਏ ਹੁਣ 2010 ਚ ਮੈਂ ਤੇ ਇਕੱਲੇ ਰਾਜਨ ਧਾਮੀ ਸੀਗੇ 6 ਵਕੀਲ ਹੁਣ ਨਾਲ ਰਲ ਗਏ ਆਪਣੇ ਤੇ ਸਟਾਫ ਦਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਮੈਨੂੰ ਕਦੇ ਆ ਜਾਂਦਾ ਕਦੇ ਜਾ ਜਾਂਦਾ 15 20 ਸਟਾਫ ਹੋਣੇ ਆ ਤੇ ਮੈਨੇਜਰ ਮੈਨੇਜਰ ਰੱਖੀ ਹੈ ਉਹ ਉਹ ਟੂ ਗੈਟ ਯੂ ਅ ਬੈਟਰ ਸੈਟਲਮੈਂਟ A ਰਾਈਟਸ ਇਸ ਤੁਹਾਡੇ ਜਿਹੜੀ ਡਿਲੇ ਹੈ ਤੁਹਾਡੀ ਜਿਹੜੀ ਚਿੰਤਾ ਹੈ ਦਿਮਾਗੀ ਬੋਝ ਹੈ ਉਹ ਅਸੀਂ ਘੱਡ ਦਈਦੇ ਕਿਉਂਕਿ ਤੁਸੀਂ ਸਾਨੂੰ ਫੋਨ ਕਰੀਦਾ ਹੈ ਤੇ ਅਸੀਂ ਆਪਦੀ ਸੈਕਟਰੀ ਨੂੰ ਉਦੋਂ ਕਹਿ ਦੁਬਾਰਾ ਫੋਨ ਕਰਕੇ ਤੇ ਉਹਨਾਂ ਨੂੰ ਸਾਰਾ ਕੁਝ ਸਮਝਾ ਦਿਓ ਹਾਂਜੀ ਤੇ ਇੱਕ ਹੋਰ ਦੱਸਿਓ ਬਈ ਜਿਹੜੀ ਇਹ ਗੱਲ ਹੈ ਕਿ ਤੁਹਾਡੀ ਭਾਸ਼ਾ ਦੇ ਵਿੱਚ ਜਸਟਿਸ ਡਿਲੇਡ ਜਸਟਿਸ ਜੁਨਾਈਟ ਇਹ ਵੀ ਗੱਲ ਜੇ ICBC ਕੇਸ ਸੈਟਲ ਕਰਨ ਨੂੰ ਵਰੇ ਲਾ ਦਿੰਦੀ ਹੈ ਉਹ ਕੇਸ ਤੇ ਕੀ ਫਰਕ ਪੈਂਦਾ ਵੀ 2 ਇੱਕ ਸਾਲ ਦੇ ਵਿੱਚ ਮੁੱਕਣ ਵਾਲੀ ਚੀਜ਼ 4-5 ਸਾਲ ਤੇ ਲੱਗੀ ਤੁਸੀਂ ਟੁੱਟ ਜਾਂਦੇ ਹੋ ਮੈਂਟਲੀ ਤੇ ਤੁਸੀਂ ਛੇਤੀ ਨਵੇੜਨ ਨੂੰ ਫਿਰਦੇ ਹੋ ਇਹ じゃ ਕੁਝ ਹੁੰਦਾ ਇਹ ਲੰਮਾ ਹਾਲ ਸਿਸਟੈਮਿਕ ਪ੍ਰੋਬਲਮ ਦਾ ਮਤਲਬ ਇਹ ਹੈ ਵੀ ਅੱਜ ਮੈਂ ਕੇਸ ਕੋਰਟ ਰਜਿਸਟਰੀ ਨੂੰ ਤੇ ਕਹਦਾ ਵੀ ਮੈਨੂੰ 7 ਦਿਨਾਂ ਦੀ ਮੌਹਲਤ ਜਾਂ 10 ਦਿਨਾਂ ਦੀ ਕੋਰਟ ਦਾ ਟਾਈਮ ਚਾਹੀਦਾ ਕਿਉਂਕਿ ਇਹ ਲੰਬਾ ਚੌੜਾ ਥੋੜਿਆ ਕੇਸ ਹੈ ਤੇ 10 ਦਿਨ ਲੈਣ ਚ ਕੋਰਟ ਦੇ ਟਾਈਮ ਨੂੰ 1.5 ਸਾਲ ਲੱਗਦਾ ਤਰੀਕ ਹੀ ਨਹੀਂ ਮਿਲਦੀ ਫੇਰ ਤੁਹਾਨੂੰ ਸੋ ਇੱਕ ਤਾਂ ਇਹ ਕੋਰਟ ਵੱਲੋਂ ਚਿੰਤਾ ਹੈ ਕਿਉਂਕਿ ਜੱਜ ਜਨਫੈਣੀ ਇਹ ਵੀ ਕਾਫੀ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ ਵੀ ਜੱਜਸ ਹੋਰ ਰੱਖਣੇ ਚਾਹੀਦੇ ਆ ਡਿਲੇ ਬਹੁਤ ਹੋਈ ਜਾਂਦੀ ਕੇਸਾਂ ਦੇ ਵਿੱਚ ਕ੍ਰਿਮੀਨਲ ਟ੍ਰਾਇਲਾਂ ਦੇ ਵਿੱਚ ਤਾਂ ਅੰਟੇਰੀਓ ਦੇ ਵਿੱਚ ਇੰਨੀ ਡਿਲੇ ਹੋਈ ਜਾਂਦੀ ਹੈ ਕਿ ਕੇਸ ਹੀ ਉਹ ਟਾਸ ਆਊਟ ਹੋਈ ਜਾਂਦੇ ਆ ਜਿਹੜੇ ਮੈਂਸਲਰ ਦੇ ਕੇਸ ਦੇ ਕੇਸ ਹੈ ਉਹ ਵੀ ਆਪਣਾ ਡਿਲੇ ਕਰਕੇ ਆਪਣਾ ਜੱਜ ਖਤਮ ਕਰੀ ਜਾਂਦਾ ਕੇਸ ਕਹਿੰਦਾ ਵੀ ਇਹ ਟੂ ਲੌਂਗ ਹੋ ਗਿਆ ਜਿਹੜੀ ਟ੍ਰਾਇਲ ਹੈ ਉਹ ਛੇਤੀ ਹੋਵੇ ਸੋ ਬੀਸੀ ਦੇ ਵਿੱਚ ਵੀ ਇਹੀ ਪ੍ਰੋਬਲਮ ਹੈ ਬੀਸੀ ਦੇ ਵਿੱਚ ਵੀ ਰਿਪੋਰਟ ਇਹੀ ਇਸ਼ੂ ਹੋਈ ਹੈ ਵੀ ਜੱਜਸ ਨੂੰ ਹੋਰਾਂ ਨੂੰ ਹਾਇਰ ਕਰਕੇ ਤੇ ਕੇਸਾਂ ਨੂੰ ਛੇਤੀ ਜਜ ਸਾਹਿਬ ਮੂਰੇ ਪੇਸ਼ ਕਰੋ ਸੋ ਇੱਕ ਤਾਂ ਇਹ ਪ੍ਰੋਬਲਮ ਹੋ ਗਈ ਦੂਸਰੀ ਪ੍ਰੋਬਲਮ ਹੋ ਗਈ ਡਾਕਟਰ ਟਾਈਮ ਨਹੀਂ ਦਿੰਦੇ ਜਿਹੜੇ ਐਕਸਪਰਟ ਰਿਪੋਰਟਾਂ ਪੇਸ਼ ਕਰਕੇ ਕਿਉਂਕਿ ਸਬੂਤਾਂ ਨਾਲ ਚੱਲਣਾ ਪੈਂਦਾ ਹੁਣ ਅੱਜ ਜੇ ਮੈਂ ਫਰਜ਼ ਕਰਉ ਆਪਦੇ ਕਲਾਇੰਟ ਨੂੰ ਕਿਸੇ ਦਿਮਾਗੀ ਡਾਕਟਰ ਦੇ ਘੱਲਣਾ ਹੋਵੇ ਚੰਗੇ ਦੇ ਨਿਊਰੋਲੋਜਿਸ ਦੇ ਹਾਂਜੀ ਉਹਨੇ 18-18 ਮਹੀਨੇ ਡੇਟ ਨਹੀਂ ਦੇਣੀ ਸਾਲ ਤਾਂ ਜਾਨੀ ਪੱਕਾ ਹੀ ਹੈ ਉਹ ਵੀ ਬਾਲੇ ਬੀਜ਼ੀ ਕਰਕੇ ਉਹਨਾਂ ਦੀ ਵੀ ਕੋਰਟ ਦੇ ਟਾਈਮ ਕਾਫੀ ਬੀਜ਼ੀ ਹੈ ਉਹਨਾਂ ਦੇ ਪੇਸ਼ੈਂਟ ਬਹੁਤ ਹੈ ਸੋ ਇਹ ਕਾਰਨ ਹੋ ਗਿਆ ਤੀਸਰਾ ਕਾਰਨ ਹੋ ਗਿਆ ਵੀ ਤੁਹਾਨੂੰ ਤੇ ਗਾਂ ਦੇ ਵਕੀਲ ਦਾ ਕੋਈ ਵੀ ਦੇਣ ਹੋ ਜਾ ਹੈ ਹੁੰਦੀਆਂ ਸੋ ਇਟਸ ਅ ਦੇ ਵਿੱਚ ਕੋ ਤੇ ਦੇ ਜਾਂਦੀ ਕਿ ਬਹੁਤ ਜ਼ਰੂਰੀ ਹੈ ਇਨਫੋਰਮੇਸ਼ਨ ਤੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੀ ਸਪੋਰਟ ਕੀਤੀ ਹੈ ਸਪੋਰਟ ਕੀਤੀ ਹੈ ਤੇ ਜਦੋਂ ਵੀ ਕਿਸੇ ਕੋਲ ਕੋਈ ਵੀ ਸਵਾਲ ਹੋਵੇ ਕੋਈ ਛੋਟਾ ਸਵਾਲ ਹੋਵੇ ਵੱਡਾ ਹੋਵੇ ਫੋਨ ਕਰਨ ਦੇ ਵਿੱਚ ਕੋਈ ਡਿਲੇ ਨਾ ਕਰੋ ਸਾਨੂੰ ਜਰੂਰ ਫੋਨ ਕਰਕੇ ਸਾਡੀ ਰਾਇ ਲੈ ਅਮਰੀਕ ਨਾਰਿੰਗੋਣਾ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਪਹਿਲਾ ਅਸ਼ਵਰਾ ਫਰੀ ਅਮਰੀਕ ਨਾਰਿੰਗ ਤੇ ਰਾਜਨ ਧਾਮੀ ਉਹਨਾਂ ਨੇ ਕੰਪਨੀ ਸ਼ੁਰੂ ਕੀਤੀ ਸੀ 8 ਵਕੀਲ ਨੇ ਤੇ ਹੋਰ ਅੰਬਲਾ ਫੈਲਾ ਨਾਲ 6048646131 ਵਪਾਰਕ ਸੰਦੇਸ਼ ਕੈਨੇਡਾ ਦੀ ਫੈਡਰਲ ਸਰਕਾਰ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲਿਆਂ ਖਿਲਾਫ ਸਖਤੀ ਦਿਖਾ ਰਹੀ ਹੈ। ਫੈਡਰਲ ਟ੍ਰਾਂਸਪੋਰਟ ਮੰਤਰੀ ਮਾਰਕ ਗਰਨਨ ਨੇ ਖਾਸ ਤੌਰ ਤੇ ਗੱਡੀ ਚਲਾਉਂਦੇ ਮੌਕੇ ਸੈਲਫੋਨ ਵਾਲਿਆਂ ਖਿਲਾਫ ਸਖਤ ਕਾਨੂੰਨ ਲਿਆਉਣ ਦੀ ਗੱਲ ਕਹੀ ਹੈ। ਮੰਤਰੀ ਨੇ ਪਿਛਲੇ ਹਫਤੇ ਆਪਣੇ ਸੂਬਾਈ ਭਾਈਵਾਲਾਂ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਸੈਲਫੋਨ ਦੀ ਵਰਤੋਂ ਰੋਕਣ ਸੰਬੰਧੀ ਡਰਾਈਵਰਾਂ ਉੱਪਰ ਭਾਰੀ ਜੁਰਮਾਨੇ ਠੋਕਣ ਦੀ ਗੱਲ ਕਹੀ ਹੈ। ਸੂਬਿਆਂ ਵੱਲੋਂ ਹਾਲੇ ਤੱਕ ਮੰਤਰੀ ਦੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਗਿਆ। ਫੈਡਰਲ ਮੰਤਰੀ ਦਾ ਕਹਿਣਾ ਹੈ ਕਿ ਸੋਬਾਈ ਸਰਕਾਰਾਂ ਨੂੰ ਇਸ ਮੁੱਦੇ ਤੇ ਜਲਦੀ ਤੋਂ ਜਲਦੀ ਅਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲਿਆਂ ਖਿਲਾਫ ਸਖਤ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ। ਯਾਦ ਰੱਖੇ ਪਿਛਲੀਆਂ ਗਰਮੀਆਂ ਦੌਰਾਨ BC ਸਰਕਾਰ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲਿਆਂ ਖਿਲਾਫ ਸਿਕੰਜਾ ਕੱਸਦਿਆਂ ਜੁਰਮਾਨਿਆਂ ਵਿੱਚ ਭਾਰੀ ਵਾਧਾ ਕੀਤਾ ਸੀ। ਹੁਣ ਦੀ ਵਰਤੋਂ ਕਰਨ ਤੇ ਘੱਟੋ ਘੱਟ 543 ਡਾਲਰ ਦਾ ਜੁਰਮਾਨਾ ਠੋਕਣ ਦਾ ਕਾਨੂੰਨ ਬਣਾਇਆ ਇਸ ਤੋਂ ਇਲਾਵਾ ਪੈਨਲਟੀ ਪੁਆਇੰਟਾਂ ਦੀ ਵੀ ਕੀਮਤ ਤਾਰਨੀ ਪੈਂਦੀ ਹੈ। ਫੈਡਰਲ ਸਰਕਾਰ ਸਿਗਰਟ ਨੋਸ਼ੀ ਸੰਬੰਧੀ ਵੀ ਨਿਯਮਾਂ ਵਿੱਚ ਫੇਰ ਦੀ ਹੱਦ 21 ਸਾਲ ਇਸ ਦਿਸ਼ਾ ਵੱਲ ਕੰਮ ਕੀਤਾ ਜਾ ਰਿਹਾ ਹੈਲਥ ਕੈਨੇਡਾ ਵੱਲੋਂ ਪਿਛਲੇ ਹਫ਼ਤੇ ਇਸ ਮੁੱਦੇ ਤੇ ਕਾਫੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਿਗਰਟ ਨੋਸ਼ੀ ਨੌਜਵਾਨਾਂ ਦੀ ਉਮਰ ਦੀ ਹੱਦ 21 ਸਾਲ ਕਰਨ ਦੀ ਮੰਗ ਰੱਖੀ ਗਈ ਹੈ। 235 ਤੱਕ ਕੈਨੇਡਾ ਵਿੱਚ ਸਿਗਰਟ ਨੋਸ਼ੀ ਦੀ ਦਰ 5 ਫੀਸਦੀ ਰੱਖਣ ਦਾ ਟੀਚਾ ਮਿਥਿਆ ਗਿਆ ਹੈ। ਹੈਲਥ ਕੈਨੇਡਾ ਮੁਤਾਬਕ ਸਿਗਰਟ ਨਸ਼ੀ ਲਈ ਉਮਰ ਦੀ ਘੱਟੋ ਘੱਟ ਹੱਦ ਵਧਾ ਕੇ ਨਵੇਂ ਦਮਾਨਾ ਸਿਗਰਟ ਨਸ਼ੀ ਦੀ ਆਦਤ ਨੂੰ ਘਟਾਇਆ ਜਾ ਸਕਦਾ ਹੈ। ਫੈਡਰਲ ਸਿਹਤ ਮੰਤਰੀ ਜੇਨ ਫਿਲਪਟ ਨੇ ਕਿਹਾ ਕਿ ਇਸ ਬਦਲਤੇ ਵਿਚਾਰ ਕੀਤੀ ਜਾ ਰਹੀ ਹੈ। ਦਸੰਯੋਗ ਹੈ ਕਿ ਕੈਨੇਡਾ ਵਿੱਚ ਹਰ ਸਾਲ ਸਿਗਰਟ ਨੋਸ਼ੀ ਦੀ ਵਜ੍ਹਾ ਕਾਰਨ 37000 ਮੌਤਾਂ ਹੁੰਦੀਆਂ ਨੇ ਕੈਨੇਡੀਅਨ ਕੈਂਸਰ ਸੁਸਾਇਟੀ ਨੇ ਵੀ ਸਿਗਰਟ ਨੋਸ਼ੀ ਲਈ ਘੱਟੋ ਘੱਟ ਉਮਰ 21 ਸਾਲ ਕਰਨ ਦੀ ਵਕਾਲਤ ਕੀਤੀ ਹੈ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਸੈਂਟਰਲ ਬੈਂਕ ਨੇ ਵਿਆਜ ਦਰ ਅੱਧਾ ਫੀਸਤੀਤੇ ਹੀ ਬਰਕਰਾਰ ਰੱਖੀ ਹੈ ਬੈਂਕ ਅਧਿਕਾਰੀਆਂ ਮੁਤਾਬਕ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਜੋ ਜਲਦੀ ਖਤਮ ਵੀ ਹੋ ਸਕਦਾ ਹੈ ਤੁਦੀ ਪਾਸੇ ਅਮਰੀਕਾ ਵਿੱਚ ਯਾਜ ਦਰਾਂ ਵਿੱਚ ਫੇਰ ਬਦਲਦੇ ਅਸਾਰ ਬਣੇ ਹੋਏ ਨੇ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਮੁਕਾਬਲੇ ਡੁੱਬਕੀ ਲਗਾ ਗਿਆ ਕੈਨੇਡੀਅਨ ਡਾਲਰ ਦੀ ਕੀਮਤ 75 ਸੈਂਟ ਤੇ ਜਾ ਪਹੁੰਚੀ ਹੈ ਕੌਨਕੋਰਡੀਆ ਯੂਨੀਵਰਸਿਟੀ ਵਿੱਚ ਬੰਬ ਰੱਖਣ ਦੀ ਧਮਕੀ ਮਗਰੋਂ ਬਿਲਡਿੰਗ ਨੂੰ ਖਾਲੀ ਕਰਵਾ ਲਿਆ ਗਿਆ ਮੁਸਲਮ ਵਿਦਿਆਰਥੀਆਂ ਖਿਲਾਫ ਬੰਬ ਦੀ ਧਮਕੀ ਦਿੱਤੀ ਗਈ ਸੀ ਮੀਡੀਆ ਨੂੰ ਜਾਰੀ ਕੀਤੀ ਗਈ ਇੱਕ ਚਿੱਠੀ ਵਿੱਚ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਬਿਲਡਿੰਗ ਦੇ ਕਈ ਹਿੱਸਿਆਂ ਵਿੱਚ ਬੰਬ ਫਿੱਟ ਕੀਤੇ ਗਏ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸੁਰੱਖਿਆ ਅਧਿਕਾਰੀ ਹਰਕਤ ਵਿੱਚ ਆ ਕੇ ਬਿਲਡਿੰਗ ਨੂੰ ਖਾਲੀ ਕਰਵਾ ਲਿਆ ਯੂਨੀਵਰਸਿਟੀ ਵੱਲੋਂ ਐਸਜੀਡਬਲਯੂ ਕੈਂਪਸ ਦੀਆਂ ਇਮਾਰਤਾਂ ਨੂੰ ਖਾਲੀ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਹੈ ਕਲਾਸਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਫਿਲਹਾਲ ਪੁਲਿਸ ਦੇ ਹੱਥ ਕੋਈ ਧਮਾਕਾਖੇ ਸਮਗਰੀ ਨਹੀਂ ਲੱਗੀ ਕੌਂਸਲ ਆਫ ਕੰਜ਼ਰਵੇਟਿਵ ਸਿਟੀਜ਼ਨਸ ਆਫ ਨੀਡਾ ਨਾਂ ਕੇ ਧਮਕੀ ਦਿੱਤੀ ਗਈ ਸੀ ਰੂਸ ਅਤੇ ਚੀਨ ਨੇ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਦੇ ਦੋਸ਼ ਵਿੱਚ ਸੀਰੀਆ 'ਤੇ ਆਲਮੀ ਪਾਬੰਦੀਆਂ ਲਗਾਉਣ ਦੇ ਪੱਛਮੀ ਮੁਲਕਾਂ ਦੇ ਨਵੇਂ ਯਤਨਾਂ ਨੂੰ ਖਾਰਜ ਕਰ ਦਿੱਤਾ ਹੈ ਇਹ 7ਵਾਂ ਮੌਕਾ ਜਦੋਂ ਰੂਸ ਨੇ ਸੀਰੀਆ 'ਤੇ ਪਾਬੰਦੀਆਂ ਲਗਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਰੱਖੇ ਗਏ ਪ੍ਰਸਤਾਵ ਤੇ ਵੀਟੋ ਕੀਤਾ ਹੈ ਦੂਜੇ ਪਾਸੇ ਚੀਨ ਨੇ ਵੀ ਸੀਰੀਆ ਵਿੱਚ 211 ਵਿੱਚ جاری ਗ੍ਰਹਿਜੋਤ ਤੋਂ ਬਾਅਦ 6 ਵਾਰ ਇਸ ਤਰ੍ਹਾਂ ਦੇ ਸੁਰੱਖਿਆ ਪ੍ਰਸ਼ਾਸਨ ਪ੍ਰਸਤਾਵਾਂ ਨੂੰ ਦਰਕਨਾਰ ਕੀਤਾ ਹੈ। ਸੀਰੀਆ ਨੇ 213 ਰੂਸ ਅਤੇ ਅਮਰੀਕਾ ਦਰਮਿਆਨ ਹੋਏ ਸਮਝੌਤੇ ਤਹਿਤ ਆਪਣੇ ਰਸਾਇਣਕ ਹਥਿਆਰਾਂ ਨੂੰ ਨਸ਼ਟ ਕਰਨ ਦੀ ਸਹਿਮਤੀ ਦਿੱਤੀ ਸੀ। ਪੰਜਾਬ ਤੋਂ ਖਬਰਾਂ ਆਈਆਂ ਨੇ ਜਲੰਧਰ ਪੁਲਿਸ ਨੇ ਗੁਰਮੀਰ ਤੇ ਸੁਰੱਖਿਆ ਛਾਤਰੀ ਤਾਣ ਦਿੱਤੀ ਹੈ। ਦਿੱਲੀ ਜੂਨਵਰਸਟੀ ਦੀ ਵਿਦਿਆਰਥਣ ਗੁਰਮੀਰ ਕੌਰ ਨੂੰ ਸੁਰੱਖਿਆ ਪ੍ਰਦਾਨ ਕਰਦਿਆਂ ਦੋ ਔਰਤ ਸਿਪਾਹੀਆਂ ਨੂੰ ਉਸ ਦੇ ਘਰ ਦੇ ਬਾਹਰ ਤਾਇਨਾਤ ਕਰ ਦਿੱਤਾ ਗਿਆ ਦਿੱਲੀ ਪੁਲਿਸ ਨੇ ਗੁਰਮੀਰ ਕੌਰ ਨੂੰ ਸੋਸ਼ਲ ਮੀਡੀਆ ਤੇ ਬਲਾਤਕਾਰ ਅਤੇ ਜਾਨੋਂ ਮਾਰਨ ਦੀ ਧਮਕੀਆਂ ਦੇਣ ਬਾਰੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਆਪਣੇ ਘਰ ਦੇ ਬਾਹਰ ਗੁਰਮੀਰ ਕੌਰ ਨੇ মিডিਆ ਅੱਗੇ ਹੱਥ ਜੋੜਦਿਆਂ ਕਿਹਾ ਕਿ ਕਿਰਪਾ ਕਰਕੇ ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਦਿਓ ਉਹ ਹੁਣ ਆਪਣਾ ਸਾਰਾ ਧਿਆਨ ਪੜ੍ਹਾਈ ਤੇ ਲਗਾਉਣਾ ਚਾਹੁੰਦੀ ਹੈ ਟੀਵੀ ਚੈਨਲਾਂ ਵਾਲੇ ਉਸ ਦੇ ਘਰ ਦੇ ਬਾਹਰ ਡੇਰਾ ਜਮਾਈ ਬੈਠੇ ਨੇ ਗੁਰਮੀਰ ਕੌਰ ਦੇ ਦਾਦਾ ਕਮਲਜੀਤ ਸਿੰਘ ਨੇ ਕਿਹਾ ਕਿ ਉਹ ਜਲਦੀ ਹੀ ਆਪਣੀ ਪੜ੍ਹਾਈ ਪੂਰੀ ਕਰਨੇ ਵਾਪਸ ਦਿੱਲੀ ਚਲੀ ਜਾਏਗੀ ਇਸੇ ਦਰਮਿਆਨ ਗੁਰਮੀਰ ਕੌਰ ਨੂੰ ਧਮਕੀਆਂ ਦੇਣ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਔਕਾਲ ਤਖਤ ਵੱਲੋਂ ਉਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੋਂਗਰ ਅਤੇ ਚੀਫ ਸੈਕਟਰੀ ਹਰਚਰਨ ਸਿੰਘ ਨੇ ਕਿਹਾ ਕਿ ਸਿੱਖ ਸੰਸਥਾ ਪੰਜਾਬ ਦੀ ਧੀ ਦੇ ਨਾਲ ਖੜੀ ਹੈ ਉਨ੍ਹਾਂ ਗੁਰਮੀਰ ਕੌਰ ਨੂੰ ਸੁਰੱਖਿਆ ਲਈ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਹੈ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਗੁਰਮੀਰ ਕੌਰ ਨੂੰ ਮਿਲ ਰਹੀਆਂ ਧਮਕੀਆਂ ਦਾ ਗੰਭੀਰ ਨੋਟਿਸ ਲੈਂਦੇ ਆ ਕਿ ਹਾ ਕਿਸਮੁੱਤੀ ਸਿੱਖ ਕੌਮ ਉਸ ਦੇ ਨਾਲ ਖੜੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੋਇਆ ਸੁਣਦੇ ਰਹੋ ਰੇਡੀਓ ਕੇ ਆਰ ਪੀ ਆਈ 1550 ਏ ਐਨ ਮੈਂ ਹਾਂ ਗੁਰਬਾਜ ਸਿੰਘ ਬਰਾੜ ਮੈਟਰੋ ਵੈਨਕੂਵਰ ਵਿੱਚ ਇਸ ਵੇਲੇ ਬਦਲਵਾਈ ਬਣੀ ਹੋਈ ਹੈ ਤਾਪਮਨ 7 ਡਿਗਰੀ ਸੈਲਸੀਅਸ ਤੇ ਪਹੁੰਚਿਆ ਹੋਇਆ ਬਾਅਦ ਵਰਖਾ ਹੋਣੀ ਸ਼ੁਰੂ ਹੋ ਜਾਏਗੀ ਕੇ 9 ਹੋਏ ਨੇ ਜੀ ਮਦਰ ਇੰਡੀਆ ਤੋਂ ਨਰੇਸ਼ ਸ਼ੁਕਲਾ ਜੀ ਮੇਰੇ ਨਾਲ ਨੇ ਨਰੇਸ਼ ਸ਼ੁਕਲਾ ਜੀ ਉਹਨਾ ਨੂੰ ਤੁਸੀਂ ਜਾਣਦੇ ਹੋ ਬਹੁਤ ਲੰਮਾ ਸਮਾਂ ਹੋ ਗਿਆ 1975 ਦੇ ਇਸ ਬਿਜ਼ਨਸ ਉਹਨਾਂ ਨੇ ਸ਼ੁਰੂ ਕੀਤਾ ਮੇਨ ਸਟਰੀਟ ਤੇ 2017 ਹੋ ਗਿਆ 42 ਸਾਲ ਹੋ ਗਏ ਮਰੇਸ਼ ਸ਼ੁਕਲਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਨਵੇਂ ਪ੍ਰੋਡਕਟਸ ਜਿਹੜੇ ਨੇ ਮਦਰ ਇੰਡੀਆ ਤੇ ਕੁਦਰਤੀ ਜਿਹੜਾ ਸਮਾਨ ਹੈ ਜਿਸ ਚਾਹੇ ਉਹ ਅਗਰਬਤੀਆਂ ਨੇ ਚਾਹੇ ਕੋਈ ਆਯੁਰਵੇਦ ਦੀਆਂ ਦਵਾਈਆਂ ਕੁਝ ਜੜੀਆਂ ਬੂਟੀਆਂ ਥੋੜੀਆਂ ਬਹੁਤੀਆਂ ਹਰ ਕਿਸਮ ਦੀ ਬਣ ਤੁਹਾਨੂੰ ਮਦਰ ਇੰਡੀਆ ਦੇ ਸਟੋਰ ਤੇ ਮੇਨ ਤੇ ਤੇ 50 ਤੇ ਮਿਲਦੀ ਹੈ ਮਰੇਸ਼ ਸ਼ੁਕਲਾ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਹਾਂਜੀ ਗਿਰਸਾਫ ਤੁਹਾਨੂੰ ਤੇ ਹਰਜੀਤ ਸਿੰਘ ਗਿਰਸਾਫ ਨੂੰ ਵਾਲੇ ਸਾਰੇ ਭੈਣ ਪ੍ਰਭ ਨੂੰ ਮੇਰੇ ਵੱਲੋਂ ਸਤਿ ਸ਼ਕਾ ਜੀ ਸਤਿ ਸ਼ਕਾਲ ਜੀ ਤੇ ਅੱਛਾ ਸ਼ੁਰੂ ਕਰੀਏ ਉਸੇ ਇੱਕ ਆਈਟਮ ਤੋਂ ਜਿਸ ਸਾਰੀ ਦੁਨੀਆ ਦੇ ਵਿੱਚ ਮਦਰ ਇੰਡੀਆ ਦਾ ਨਾਮ ਬਣਾ ਦਿੱਤਾ ਉਹ ਹੈ हेयर डाई ਇਹ ਡਾਈ ਦੇ ਬਾਰੇ ਤੇ ਨਵੀਆਂ ਕੋਈ ਲੋਕੇਸ਼ਨਾਂ ਹੋਰ ਤੁਸੀਂ ਖੋਲੀਆਂ ਡਿਸਟ੍ਰਿਬਿਊਸ਼ਨ ਜਿਹੜੀ ਹੋਰ ਜ਼ਿਆਦਾ ਹੋਈ ਹੈ ਕੈਨੇਡਾ ਦੇ ਵਿੱਚ ਇਸ ਦੇ ਲਈ ਤੁਸੀਂ ਕੀ ਚਾਹੁੰਦੇ ਆ ਕਿ ਅਮਰੀਕਾ ਵਾਲੇ ਪਾਸੇ ਜਿੱਥੇ ਨਹੀਂ ਵੀ ਮਦਰ ਇੰਡੀਆ ਦੀ ਲੋਕੇਸ਼ਨ ਉੱਥੇ ਜਿਹੜੀ ਇਹ ਡਾਈ ਕਿਸ ਤਰ੍ਹਾਂ ਪਹੁੰਚ ਸਕਦੀ ਹਾਂਜੀ ਗਿਆਨ ਸਾਹਿਬ ਬਿਲਕੁਲ ਮੈਂ ਇਹਦੀ ਇਨਫਰਮੇਸ਼ਨ ਦੇਣ ਤੋਂ ਪਹਿਲਾਂ ਇਹ ਡਾਈ ਦੀ ਮੈਂ ਜੁਫਾਚੋਣਾ ਲਾਸਟ ਵੀ ਕਾਫੀ ਭਣਪਰਾਵਾਂ ਦੇ ਫੋਨ ਆਏ ਸੀ ਉਹ ਸਾਡੇ ਮਦਰ ਇੰਡੀਆ ਦੇ ਜਿਹੜੇ ਸਾਡੇ ਹਰਬਲ ਪਾਊਡਰ ਆ ਜਾਂ ਕੈਪਸੂਲ ਆ ਉਹਨਾਂ ਬਾਰੇ ਪੁੱਛੀ ਕੇ ਪlant prama nu blood ਸ਼ੂਗਰ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਮਿਲ ਜਾਂਦਾ ਹੈਗਾ ਜਿਹੜਾ ਕਿ ਤੁਹਾਨੂੰ ਅੱਖਾਂ ਦੇ ਵਿੱਚ ਧੁੰਦਲਾ ਦਿਖਦਾ ਹੈਗਾ ਜਾਂ ਤੁਹਾਡੀ ਮੈਮਰੀ ਲਾਸ ਹੁੰਦੀ ਆ ਆਇਰਨ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਇਹ ਸ਼ਾਤਾਬਰੀ ਬਹੁਤ ਵਧੀਆ ਹੈ ਆਸ਼ਪਗੰਧਾ ਹਨੋਜੀ ਵਾਸਤੇ ਹੈਗਾ ਸ਼ੁਦਾ ਗੁਗੂ ਕਿੰਨੀ ਨੂੰ ਵਾਸਤੇ ਵਧੀਆ ਤੇ ਬਲੱਡ ਵੀ ਸਾਫ਼ ਕਰਦਾ ਹੈਗਾ ਇਸ ਨਾਲ ਤ੍ਰਿਫਲਾ ਜਿਹੜਾ ਕਿ ਭੈਣ ਭਰਾ ਆਪਣੇ ਲੰਚ ਟਾਈਮਸ ਤੇ ਜਾਂ ਡিনার ਟਾਈਮਸ ਦੇ ਖਾਂਦੇ ਜਾਂ ਜਦੋਂ ਜੰਗਲ ਕਰਦੇ ਜਲਾਂਚ ਕਰਦੇ ਆ ਜਿਆਦਾ ਖਾਣਾਂ ਦੇ ਚੱਕੀ ਵਿੱਚ ਕੱਟ ਕਰ ਲੈਂਦੇ ਆ ਉਹਨਾਂ ਵਾਸਤੇ ਤ੍ਰਿਫਲਾ ਬਹੁਤ ਵਧੀਆ ਹਾਜਮੇ ਵਾਸਤੇ ਉਹ ਵੀ ਤੁਸੀਂ ਲੈ ਸਕਦੇ ਹੈਗੇ ਆ ਹਲਦੀ ਦਾ ਪਾਊਡਰ ਇਹ ਤੁਸੀਂ ਜਿਹੜੇ ਕਿ ਹਾਫ ਟੂ 40 45 ਤੋਂ ਬਾਅਦ ਆਪਣੇ ਅਟਲੀ ਬਾਡੀ ਦੇ ਬੋਨਸ ਆ ਉਹ ਸ਼੍ਰਿੰਕ ਤੇ ਵੀ ਖੁੰਦੇ ਹੈਗੇ ਆ ਉਹਨਾਂ ਨੂੰ ਤੁਸੀਂ ਮੇਕ ਤੁਸੀਂ ਹਲਦੀ ਦਾ 1/2 tsp ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਨਾਲ ਲਾਓ ਉਹ ਤੁਹਾਨੂੰ ਕਾਫੀ ਤੁਹਾਡੇ ਬones ਸਟਰੋਂਗ ਕਰਦਾ ਹੈਗਾ ਮੈਂ ਇਹ ਵੀ ਦੱਸ ਕਿ ਸਾਡੇ ਸਾਰੇ ਪ੍ਰੋਡਕਟਸ ਆਰਗੈਨਿਕ ਹੈ ਹਰ ਪ੍ਰੋਡਕਟ ਦੇ ਉੱਤੇ ਸਾਡੀ ਗਵਰਨਮੈਂਟ ਆਫ ਕੈਨੇਡਾ ਦੀ ਸਟੈਂਪ ਲੱਗੀ ਹੈਗੀ ਆ ਤੁਸੀਂ ਕਿਤੋਂ ਵੀ ਪ੍ਰੋਡਕਟ ਲਾਓ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਮੇਕ ਤੁਸੀਂ ਉਹ ਚੈੱਕ ਜਰੂਰ ਕਰੋ ਦੇ ਉੱਤੇ ਆਰਗੈਨਿਕ ਔਰ ਗਵਰਨਮੈਂਟ ਆਫ ਕੈਨੇਡਾ ਦੀ ਸਟੈਂਪ ਲੱਗੀ ਹੋਣੀ ਚਾਹੀਦੀ ਹੈਗੀ ਤਾਂ ਕਿ ਉਹ ਤੁਹਾਨੂੰ ਮੇਕ ਹੋ ਜAVE ਤੁਸੀਂ ਆਰਗੈਨਿਕ ਸਟੱਫ ਲੈ ਰਹੇ ਆਂ ਮੈਂ ਲਾਸਟ ਵੀਕ ਡਾਕਟਰ ਅਰਣ ਗਰਗ ਜਿਹੜੇ ਕਿ ਸਾਡੇ ਮੈਡੀਕਲ ਐਸੋਸੀਏਸ਼ਨ ਦੇ ਪ੍ਰੈਜ਼ੈਂਟ ਵੀ ਰਹੇ ਚੁਕੇ ਹੈ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਤੇ ਉਹਨਾਂ ਨੇ ਮੈਂ ਕੁਝ ਕੁਐਸਚਨ ਪੁੱਛੇ ਸੀਗੇ ਤਾਂ ਉਹਨਾਂ ਨੂੰ ਮੈਂ ਪੁੱਛਿਆ ਸੀ ਵੀ ਐਕਚੁਅਲੀ ਸਾਹਿਬ ਢੇਡ ਦਾ ਮੋਟਾਪਾ ਜਿਹੜਾ ਹੈਗਾ ਉਹ ਕਿੱਦਾਂ ਘਟਾਇਆ ਜਾ ਸਕਦਾ ਹੈਗਾ ਤਾਂ ਉਹਨਾਂ ਨੇ ਬੜੇ ਵਧੀਆ ਮੈਨੂੰ ਦੋ ਚੀਜ਼ਾਂ ਦੱਸੀਆਂ ਕਿ ਤੁਸੀਂ ਜਦੋਂ ਵੀ ਲੰਚ ਕਰਦੇ ਆ ਜਾਂ ਡਿਨਰ ਕਰਦੇ ਆ ਤੁਸੀਂ ਕੋਸ਼ਿਸ਼ ਕਰੋ ਕਿ ਪਾਣੀ ਦਾ ਤੁਸੀਂ ਪਾਣੀ ਪਹਿਲਾਂ ਪੀ ਲਓ ਅੱਧਾ ਘੰਟਾ ਜਾਂ 10 ਮਿੰਟ ਪਹਿਲਾਂ ਪੀ ਲਓ ਜਦੋਂ ਤੁਸੀਂ ਲੰਚ ਜਾਂ ਡਿਨਰ ਕਰਦੇ ਆ ਕੋਸ਼ਿਸ਼ ਕਰੋ ਕਿ ਤੁਸੀਂ ਸਿਰਫ ਰੋਟੀ ਤੇ ਸਬਜ਼ੀ ਨਾ ਖਾਓ ਤੁਸੀਂ ਕੋਸ਼ਿਸ਼ ਕਰੋ ਤੁਹਾਡੀ ਹੋਣੀ ਚਾਹੀਦੀ ਹੈ ਕੋਸ਼ਿਸ਼ ਕਿ ਉਹਦੇ ਨਾਲ ਤੁਸੀਂ ਸੈਲਡਿਕ ਦੇ ਜਾਂ ਰਾਈਸ ਤੁਸੀਂ ਮਿਕਸ ਆਈਟਮਾ ਇੱਕ ਪਲੇਟ ਵਿੱਚ ਪਾਓ ਔਰ ਕੋਸ਼ਿਸ਼ ਕਰੋ ਔਰ ਧਿਆਨ ਰੱਖੋ ਕਿ ਤੁਸੀਂ ਪਹਿਲਾਂ ਹੀ ਉਹ ਪਲੇਟ ਦੇ ਵਿੱਚ ਉਹਨਾਂ ਕੀ ਖਾਣਾ ਪਾ ਲਓ ਜਿਹੜਾ ਕਿ ਤੁਹਾਨੂੰ ਪਤਾ ਕਿ ਇੰਨਾ ਕੀ ਮੈਂ ਕਈ ਵਾਰ ਜਦ ਤੁਸੀਂ ਪਲੇਟ ਵਿੱਚ ਪੂਰਾ ਖਾਣਾ ਨਹੀਂ ਖਾਂਦੇ ਤੁਸੀਂ ਜਾਂ ਲੋੜ ਤੋਂ ਘੱਟ ਖਾ ਜਾਂਦੇ ਆ ਤਾਂ ਇਹ ਤੁਹਾਡੇ ਬਹੁਤ ਹੀ ਲਾਭਦਾਇਕ ਹੈ ਤੁਹਾਡਾ ਪੇਟ ਦਾ ਮੋਟਾਪਾ ਨਹੀਂ ਹੋਏਗਾ ਅਗਰ ਤੁਸੀਂ ਬਿਲਕੁਲ ਮਿਕਸ ਕਰਕੇ ਖਾਓਗੇ ਔਰ ਤੁਸੀਂ ਅਗਰ ਪਾਣੀ ਦੀ ਲੋੜ ਪੈ ਜਾਂਦੀ ਹੈ ਲੰਚ ਜਦੋਂ ਕਰਨ ਦੇਲੇ ਤੁਸੀਂ ਕੋਸ਼ਿਸ਼ ਕਰੋ ਕਿ ਉਹ ਪਾਣੀ ਬਿਲਕੁਲ ਵਾਰਮ ਨਾ ਹੋਵੇ ਨਾ ਹੀ ਉਹ ਰੂਮ ਟੈਂਪਰੇਚਰ ਹੋਵੇ ਤਾਂ ਉਹ ਤੁਹਾਡੇ ਲਈ ਕਾਫੀ ਲਾਭਦਾਇਕ ਹੈ ਇੱਕ ਉਹਨਾਂ ਨੇ ਜਾਂ ਚਾਹ ਇਹਨਾਂ ਨੁਕਸਾਨ ਨਹੀਂ ਕਰਦੀ ਜਿੰਨਾ ਤੁਹਾਨੂੰ 슈ਗਰ ਕਰਦੀ ਹੈ ਐਕਚੁਅਲੀ ਇਹ ਸਾਡੀਆਂ ਪ੍ਰੋਬਲਮ ਆਪਣੇ ਆਪ ਹੀ ਅਸੀਂ ਖੁਦ ਕ੍ਰੀਏਟ ਕਰਦੇ ਹਾਂ ਅਸੀਂ ਖੁਦ ਰਿਸਪੌਂਸੀਬਲ ਆ ਫਿਰ ਅਸੀਂ ਡਾਕਟਰਾਂ ਕੋ ਯਾਦ ਆਯੂਵੇਦ ਡਾਕਟਰਾਂ ਕੋ ਜਾਣਨੇ ਹੈਗੇ ਆ ਕਿ ਸਾਨੂੰ ਇਹਦਾ ਇਲਾਜ ਦੱਸੋ ਸਭ ਤੋਂ ਵੱਡੀ ਬਿਮਾਰੀ ਸ਼ੂਗਰ ਹੈਗਾ ਅਗਰ ਤੁਸੀਂ ਜਿੰਨਾ ਵੀ ਸ਼ੂਗਰ ਨੂੰ ਅਵੋਇਡ ਕਰ ਸਕਦੇ ਆ ਠੀਕ ਹੈ ਦੋ ਚਮਚੇ ਪਾਣੀ ਤੁਸੀਂ ਚਾਹ ਦੇ ਕਾਫੇ ਵਿੱਚ ਕੋਸ਼ਿਸ਼ ਕਰੋ ਇੱਕ ਪਾਓ ਫਿਰ ਇੱਕ ਪਾਣੀ ਤੁਸੀਂ ਅੱਧਾ ਪਾਓ ਸਭ ਤੋਂ ਵੱਡਾ ਜਿਹੜੀ ਸਾਡੀ ਪ੍ਰੋਬਲਮ ਹੈਗੀ ਆ ਉਹ ਸ਼ੂਗਰ ਜੋ ਜਿਹੜੇ ਪ੍ਰੋਡਕਟਸ ਵੀ ਮਦਰ ਇੰਡੀਆ ਤੇ ਵਿਕਦੇ ਆ ਉਹ ਉਹਨਾਂ ਨੂੰ ਜੇ ਤੁਸੀਂ ਵੇਖੋ ਕੁਦਰਤ ਦੇ ਨੇੜੇ ਕੁਦਰਤੀ ਜੜੀ ਬੂਟੀਆਂ ਜਿਵੇਂ ਪਹਿਲਾਂ ਦੱਸਿਆ ਜਿਸ ਤਰ੍ਹਾਂ ਹੁਣ హెయిਰ ਡਾਈ ਬਣਾਇਆ ਹੀ ਉਹਦੇ ਉਹਦੇ ਵਿੱਚ ਕੋਈ ਅਮੋਨੀਆ ਨਹੀਂ ਕੋਈ ਕੈਮੀਕਲ ਨਹੀਂ ਔਰ ਉਹ ਬਹੁਤ ਫਿੱਟ ਬੈਠ ਰਹੀ ਆ ਕਿਤੇ ਕਿਤੇ ਕੋਈ ਮੁਸ਼ਕਲ ਹੁੰਦੀ ਆ ਉਹ ਵੀ ਜੇ ਕੋਈ ਪਹਿਲਾਂ ਕਿਸੇ ਨੂੰ ਸਕਿਨ ਦੀ ਕਿਸੇ ਹੋਰ ਕਮਰਸ਼ੀਅਲ ਡਾਈ ਤੋਂ ਕੈਮੀਕਲ ਤੋਂ ਕੋਈ ਮੁਸ਼ਕਲ ਹੋਈ ਹੋਵੇ ਆਦਰਵਾਇਸ ਤਾਂ ਮੇਰੇ ਖਿਆਲ ਜਿਸ ਜਿਹੜੇ ਹਿਸਾਬ ਨਾਲ ਵੋਲੀਅਮ ਹੈ ਜਿਸ ਸਾਹਿਬ ਨਾਲ హెయిਰ ਡਾਈ ਵਿਕ ਰਹੀ ਹੈ ਉਦੇ ਹਿਸਾਬ ਨਾਲ ਬਹੁਤ ਜ਼ਿਆਦਾ ਬਹੁਤ ਮਿਨੀਮਮ ਜਿਹੜੇ ਨੇ कोई ਉਹਦੀ ना ਕੋਈ ਕਿਸੇ ਨਾ ਕਿਸੇ ਨੂੰ ਇਹ ਮੁਸ਼ਕਲ ਆਈ ਹੈ ਇਹਨੂੰ ਵੀ ਜਦ ਤੂੰ ਤਿਆਰ ਕਰਾ ਰਹੇ ਸੀ ਜੀ ਉਹਦੇ ਵਿੱਚ ਕੀ ਕੀ ਤੁਹਾਡੀਆਂ ਗਾਈਡ ਲਾਈਨ ਸੀ ਵੀ हेयर डाई ਬਣਾਉਣੀ हां <Sedan> बिल्कुल जैसा साठी कोशिश ये ऐसी की जबो मैं हमेशा इसे देखता सका जे assi hair dye तक काफी ऑलमोस्ट 40 साल से दे दे है हरबल हेयर डाई पाउडर तक काफी देर से दे दे सके लेकिन उस तो बाद बड़ी चेंज आई है की या लोकांदा बहुत जबो स्पेशली हेयर डाई करते होंदे सके तो पता भी वो टप भी खराब होंदे सके शर्ट्स डिफरेंट जो तुसी रखते सके फिर बड़ी स्ट्रेस होती थी पण ਕੋਸੋਂ ਤੁਸੀਂ ਕੀ ਹਨ ਨੂੰ ਪਤਾ ਨਹੀਂ ਲੱਗਦਾ ਸਿਗਾ ਇਸ ਕਰਕੇ ਦੀ ਕੋਈ ਚੀਜ਼ ਅਸੀਂ ਤਿਆਰ ਕਰੀਏ ਜੀ ਤੁਸੀਂ ਸ਼ੈਂਪੂ ਲਾਓ ਤਾਂ ਤੁਹਾਡਾ ਕਰਾਈ ਅਸੀਂ ਜਿਹੜਾ ਕਿ ਇਹਦੇ ਵਿੱਚ ਕੋਈ ਅਮੋਨੀਆ ਨਹੀਂ ਹੈ ਔਰ ਬੇਸਡ ਹੈਗਾ ਤੁਹਾਡੀ ਸਕਿਨ ਨੂੰ ਟੱਚ ਨਹੀਂ ਕਰਦਾ ਤੁਹਾਡੇ ਟੱਪ ਦੇ ਵਿੱਚ ਕੋਈ ਔਰ ਔਰ ਟਾਈਮ ਸਿਰਫ 6 ਜਾਂ 7 ਮਿੰਟ ਲੈਂਦੇ ਲੱਗਦੇ ਹੈਗੇ ਆ 6 ਜਾਂ 7 ਮਿੰਟਾਂ ਵਿੱਚ ਤੁਸੀਂ ਵਰ ਪਾਰਟੀ ਤੇ ਜਾਣਾ ਹੈਗਾ ਤਾਂ ਤੁਸੀਂ ਬਿਲਕੁਲ ਆਰਾਮ ਨਾਲ ਜਾ ਸਕਦੇ ਆ ਅੱਜ ਇਸੇ ਇੱਕ ਭਰਾ ਆਏ ਸੀਗੇ ਉਹ ਕਹਿੰਦੇ ਜਿਆਦਾ ਮੈਂ ਯੂਜ਼ ਕਰਦਾ ਮੈਂ ਤਾਂ ਅਰੰਭਤ ਹੋ ਗਿਆ ਜਦੋਂ ਅਸੀਂ ਬਿਊਟੀ ਪਾਲ ਉਹ ਜਾਂਦੇ ਸੀ ਜਾਂ ਤਕਰੀਬਨ 2.5 ਘੰਟੇ ਉੱਥੇ ਲੱਗ ਜਾਂਦੇ ਸੀਗੇ 35 ਦਾ ਲੱਗ ਜਾਂਦੇ ਸੀਗੇ ਹੇਅਰ ਡਰਾਈ ਕਰੰਦੇ ਲੇਕਿਨ ਟਾਈਮ ਤਾਂ ਵੀ ਬਹੁਤ ਵਧੀ ਸੀ ਲੇਕਿਨ ਉਹ ਸਾਨੂੰ ਇਹ ਵੀ ਨਹੀਂ ਪਤਾ ਸੀ ਵੀ ਉਹ ਕੀ ਯੂਜ਼ ਕਰਦੇ ਆ ਤਾਂ ਉਸ ਤੋਂ ਬਾਅਦ ਤਕਰੀਬਨ ਹੁਣ ਅੱਜ ਦੇਖ ਲਓ ਵੀ ਕੈਨੇਡਾ ਦੇ ਵਿੱਚ ਸਾਡੀਆਂ 250 ਲੋਕੇਸ਼ਨਸ ਹੈਗੀਆਂ ਜਿੱਥੇ ਸਾਡਾ ਪ੍ਰੋਡਕਟ ਜਾ ਰਿਹਾ ਹੈਗਾ ਔਰ ਬਹੁਤ ਹੀ ਭੈਣ ਭਰਾ ਖੁਸ਼ ਹੈਗੀ ਆ ਅਗਰ ਕਿਸੇ ਨੂੰ ਕੋਈ ਅਲਰਜੀ ਪ੍ਰੋਬਲਮ ਹੈਗੀ ਆ ਜਿਹੜਾ ਕਿ ਉਹਨਾਂ ਨੇ ਪਹਿਲਾਂ ਦਾ ਪ੍ਰੋਡਕਟਸ ਯੂਜ਼ ਕੀਤਾ ਹੈਗਾ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਆ ਹਮੇਸ਼ਾ ਕਹਿੰਦੇ ਆ ਜੇ ਤੁਸੀਂ ਆਂ ਨਹੀਂ ਸਾਡੇ ਕੋਲ ਆਓ ਸਾਡੇ ਕੋਲ ਆਕਸੀ 99 ਇੱਕ ਗ੍ਰੀਨ ਪੈਕਟ ਹੈਗਾ ਜਿਨ੍ਹਾਂ ਭੈਣ ਭਰਾਵਾਂ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਅੱਖਾਂ ਮਿਟਕੇ ਪਿਛਕ ਲਾ ਦਿਓ ਕੁਝ ਨਹੀਂ ਹੋਏਗਾ ਲੇਕਿਨ ਉਹਨਾਂ ਨੂੰ ਮੇਕ ਸ਼ੋਰ ਮਦਰ ਇੰਡੀਆ ਦਾ ਆਕਸੀ 99 ਪੈਕਟ ਯੂਜ਼ ਕਰੋ ਉਹ ਤੁਹਾਨੂੰ ਕੁਝ ਨਹੀਂ ਕਰੇਗਾ ਔਰ ਤੁਹਾਡੇ ਬਾਲ ਵੀ ਵਧੀਆ ਗ੍ਰੇਹ ਵੀ ਕਵਰ ਕਰ ਦੇਗਾ ਔਰ ਇਹਦੀ ਹੋਰ ਜਾਣਕਾਰੀ ਜਾਂ ਤੁਹਾਨੂੰ ਕੋਈ ਹੋਰ ਕੁਐਸਚਨ ਹੋਵੇ ਤੁਸੀਂ ਸਾਨੂੰ ਲੋਕਾਂ ਨੂੰ ਮਿਲਦੇ ਆ ਭਾਂ ਭਾਂ ਨੂੰ ਲੁੱਦੇ ਆ ਜੇ ਕੋਈ ਨਵੇਂ ਪ੍ਰੋਡਕਟਸ ਦੱਸਦੇ ਆ ਐਸ ਅਸੀਂ ਮੈਗਾ ਸਟੋਰ ਤੇ ਗਿਆ ਸੀ ਬਹੁਤ ਅੱਛਾ ਰਿਸਪੌਂਸ ਆਇਆ لیکن ਅਸੀਂ ਸਰਵ ਨਹੀਂ ਕਰ ਸਕੇ ਸਕੇ ਸੋ ਮੈਂ ਸਾਰੇ ਭੈਣ ਭਰਾਵਾਂ ਨੂੰ ਚਾਹੁੰਦਾ ਕਿ ਐਸ ਸੈਟਰਡੇ ਨੂੰ ਤੁਸੀਂ ਪਲੀਜ਼ ਫੇਰ ਆ ਸਕਦੇ ਆ ਮੈਗਾ ਫ루ਟੀ ਕਨਾਂ 120 ਤੇ 80 ਦੇ ਆਓ ਆਪਣੀ ਜਾਣਕਾਰੀ ਲਓ ਅਸੀਂ ਕਾਫੀ ਗਿਵ ਚੀਜ਼ਾਂ ਵੀ ਦਿੰਨੇ ਹੈਗੀਆਂ স্পੈਸ਼ਲ ਦੀ ਆਫਰ ਦਿੰਨੇ ਹੈਗੀਆਂ ਅਗਰ ਤੁਸੀਂ ਇਸ ਸੈਟਰਡੇ ਨੂੰ ਆ ਸਕਦੇ ਆ 3 ਤੋਂ 6 ਫ루ਟੀ ਕਨਾਂ ਜਿਹੜਾ ਕਿ ਬਿਲਕੁਲ 120 ਤੇ 80 ਤੇ ਹੈਗੇ ਆ ਤੁਸੀਂ ਉੱਥੋਂ ਇਹ ਸਾਡਾ ਪ੍ਰੋਡਕਟ ਲੈ ਸਕਦੇ ਆ अच्छा शुक्ला साहब एक आख़िर दे विच दस के जाओ ए हेयरडाई दा दस्त है ते जडियां बूटीयां दी गल दस सी सेहत बंदे तो बाद जड़ी चमड़ी दी संभाल है स्किन दी जड़ी स्त्रियां बारे ता स्त्रियां लब् भी लंदियां है स्त्रियां तुसी दस भी दने हो मर्द ਘੱਟ ਖਿਆਲ ਰੱਖਦੇ ਆ ਜੀ ਪੈਰਾਂ ਦਾ ਪੈਰਾਂ ਦੇ ਨਹ ਹੱਥਾਂ ਦਾ ਹੱਥਾਂ ਦੇ ਨਹ ਤੇ ਚਿਹਰੇ ਦਾ ਉਹਦੇ ਬਾਰੇ ਕੁਛ ਪ੍ਰੋਡਕਟ ਦਸੋ ਜਿਹੜੇ ਉਹ ਵੀ ਖਰੀਦ ਸਕਣ ਉਹ ਵੀ ਮਾਰਾ ਹੱਥ ਪੈਰ ਆਪਣੇ ਵਧੀਆ ਰੱਖਣ हां बिल्कुल उन वास्ते भी बहुत अच्छे प्रोडक्ट्स हमारे को हैगे या एक तो हमारे को सारे हर्बल सोप हैगे या तुलसी तुम्हारे बाला वास्ते भी बढ़िया तुम्हारी बॉडी वास्ते भी बढ़िया हर्बल और ऑर्गेनिक है कोई उन है केमिकलस नहीं हैगे और हमारे को जिनियां भी क्रीम्स हैगियां चाहे पिंपल ऑफ क्रीम होवे एकक्स्ट्रा क्रीम होवे या तुम्हारे को दूसरी क्रीम आ हैगियां नीम क्रीम है तो उसी क्रीम हैगियां ये सारे डिफरेंट डिफरेंट प्रोडक्ट्स हैगे ऑर्गेनिक ਇਹ ਤੁਹਾਡੇ ਬਲੈਕ ਸਪਕਲ ਨੂੰ ਦੂਰ ਕਰਦੇ ਹੈਗੇ ਆ ਫੇਸ ਤੋਂ ਔਰ ਤੁਹਾਡੇ ਮਨਮੋਤੇ ਜਾਓ ਤੁਹਾਡਾ ਚਿਹਰਾ ਇੱਕਦਮ ਗਲੋ ਕਰਦਾ ਇੱਕਦਮ ਗਲੋ ਕਰਦਾ ਔਰ ਤੁਹਾਡੀ ਸਕਿਨ ਨੂੰ ਵੀ ਟਾਈਟ ਕਰਦਾ ਹੈਗਾ ਆਪਣੀਆਂ ਚੁਰੀਆਂ ਸ਼ੁਰੂ ਹੋ ਜੰਨੀ ਰਿੰਕੋ ਸ਼ੁਰੂ ਹੋ ਜਾਂਦੇ ਹੈਗੇ ਆ ਉਹਨਾਂ ਨੂੰ ਵੀ ਪ੍ਰੋਟੈਕਟ ਕਰਦਾ ਅਗਰ ਤੁਸੀਂ ਨਹੀਂ ਟਰਾਈ ਕੀਤਾ ਸਾਡੀ ਤੁਸੀਂ ਮਦਰ ਇੰਡੀਆ ਦੀ ਫੇਅਰਨਸ ਕਰੀਮ ਜ਼ਰੂਰ ਟਰਾਈ ਕਰੋ ਕੁਛ ਪੈਣ ਪ੍ਰਮਾਣ ਦਾ ਰੰਗ ਸਾੰਬਲਾ ਹੁੰਦਾ ਉਹ ਚਾਹੁੰਦੇ ਆ ਕਿ ਥੋੜਾ ਜਿਹਾ ਹੁੰਦਾ ਰੰਗ ਗੋਰਾ ਹੋਵੇ ਉਹਨਾਂ ਵਾਸਤੇ ਵੀ ਬਹੁਤ ਅੱਛਾ ਪ੍ਰੋਡਕਟ ਆ ਮਦਰ ਇੰਡੀਆ ਦੀ ਫੇਅਰਨਸ ਕਰੀਮ ਤਕਰੀਬਨ 25 ਲੋਕੇਸ਼ਨ ਤੋਂ ਤੁਸੀਂ ਸਾਨੂੰ ਇਹ ਪ੍ਰੋਡਕਟ ਛਾਟਾਂ ਦੇ ਸਕਦਾ ਅਗਰ ਤੁਹਾਨੂੰ ਕਿਸੇ ਵੀ ਸ਼ਹਿਰ ਜਾਂ ਟਾਊਨ ਚ ਜਦੋਂ ਸਿੱਕਿਆ ਸੀ ਬੀ ਅਮਰੀਕਾ ਚ ਨਹੀਂ ਜਾਂ ਕੈਨੇਡਾ ਚ ਕਿਸ਼ੇ ਸ਼ਹਿਰ ਚ ਨਹੀਂ ਹੈ ਤੁਸੀਂ ਸਾਨੂੰ ਕਾਲ ਕਰੋ ਅਸੀਂ ਤੁਹਾਡੇ ਘਰ ਡਿਲੀਵਰ ਕਰਦੇ ਹਾਂ ਅਸੀਂ ਕੋਈ ਵੀ ਡਿਲੀਵਰੀ ਦਾ ਚਾਰਜ ਨਹੀਂ ਲੈਂਦੇ ਇੱਕ ਇਤਰ ਵੀ ਅਖੀਰ ਚ ਕੇ ਜਾਓ ਉਹ ਵੀ ਬਹੁਤ ਨੇ ਕਹਿੰਦੇ ਹਾਂਜੀ ਸਾਡੇ ਕੋਲ ਜਿੰਨੇ ਵੀ ਆਰਗੇਨਿਕਸ ਸਾਰੇ ਪਰਫਿਊਮ ਹੈਗੇ ਆ ਇਹ ਬਿਲਕੁਲ ਆਰਗੇਨਿਕ ਦਾ ਚੰਦਨ ਦਾ ਵਾਈਟ ਦੂਸਰਾ ਜਿੰਨੇ ਵੀ ਜੈਸਮੀਨ ਹੈਗੇ ਆ ਪਰਫਿਊਮ ਮਿਲਦੇ ਆ ਤੁਸੀਂ ਅਗਰ ਨਹੀਂ ਟ੍ਰਾਈ ਕੀਤਾ ਟ੍ਰਾਈ ਜ਼ਰੂਰ ਕਰੋ ਬਹੁਤ ਹੀ ਅੱਛੇ ਪ੍ਰੋਡਕਟਸ ਆਗੇ ਆ ਮਦਰ ਇੰਡੀਆ ਦੇ ਪਰਫਿਊਮ ਨਹੀਂ ਨਹੀਂ ट्राई ਕਿਤਾ ਪਲੀਜ਼ ਆ ट्राई ਕਰੋ ਅچھے ਪ੍ਰੋਡਕਟ ਹੋਣ ਨਾਲ ਕਈ ਵਾਰੀ ਦੇ ਘਰ ਜਾਨੇ ਹੈਗੇ ਆ ਜਾਂ ਤਾਂ ਤੁਸੀਂ ਸਾਡੇ ਇਹਦੇ ਪਰਸ ਹੈਗੇ ਆ ਬਹੁਤ ਹੀ ਸਵੀਟ ਸਮੈਲ ਆਂਦੀ ਹੈਗੀ ਆ ਬਿਲਕੁਲ ਇੰਨੀ ਅੱਛੀ ਸੁਗੰਧ ਆਂਦੀ ਆ ਤੁਸੀਂ ਜਦੋਂ ਵੀ ਜਾਓਗੇ ਕਿਸੇ ਕੋ ਸਾਨੂੰ ਜ਼ਰੂਰ ਪੁੱਛੇਗਾ ਤੁਸੀਂ ਕੀ ਲਾਇਆ ਹੈਗਾ ਇਸ ਕਰਕੇ ਸਾਡੇ ਇਸੇ ਬਿਊਟੀ ਹੈ ਸਾਡੇ ਪ੍ਰੋਡਕਟਸ ਦੀ ਜਿੰਨੇ ਵੀ ਸਾਡੇ ਪ੍ਰੋਡਕਟਸ ਆ ਗਏ ਹੁਣ ਤੱਕ तकरीबन ਸਾਡੇ ਕੋਲ 475 ਪ੍ਰੋਡਕਟਸ ਆ ਗਏ ਆ ਅਦਰ ਇੰਡੀਆ ਦੇ ਜਿਨ੍ਹਾਂ ਵਿੱਚ ਸਾਰੇ ਆਰਗੈਨਿਕ ਆ ਗਏ ਆ ਔਰ ਦੀ ਆਰਗੈਨਿਕ ਸਟੈਂਪ ਲੱਗੀ ਹੈਗੀ ਹਮਮ ਸ਼ਕੁਲਾ ਸਾਹਿਬ ਤੁਹਾਡੇ ਸਮੇਂ ਲਈ ਧੰਨਵਾਦ ਮੈਨੂੰ ਜਿੱਥੇ ਵੀ ਸੁਣਦੇ ਆ ਤੇ ਹੋਰ ਕੋਈ ਜਾਣਕਾਰੀ ਹੋਵੇ ਤਾਂ ਮਦਰ ਇੰਡੀਆ ਤੇ ਨਰੇਸ਼ ਸ਼ੁਕਲਾ ਜੀ ਨੂੰ ਤੁਸੀਂ ਫੋਨ ਕਰ ਸਕਦੇ ਹੋ ਧੰਨਵਾਦ ਜੀ ਥੈਂਕ ਯੂ ਗੁਰ ਸਾਹਿਬ ਥੈਂਕ ਯੂ ਹਰ ਖ਼ਬਰਾਂ ਤੋਂ ਬਾਅਦ ਵਾਪਸ ਆਉਣੇ ਪਹਿਲਾਂ ਇੱਕ ਖ਼ਬਰ ਤੁਹਾਨੂੰ ਨੂੰ ਕੁਝ ਕਲਾਸੀਫਾਈਡ ਡਾਕੂਮੈਂਟਸ ਮਿਲੇ ਨੇ ਜਿਹੜੇ 2005-15 ਦੇ ਵਿੱਚ ਚੀਫ ਆਫ ਡਿਫੈਂਸ ਜਨਰਲ ਜੋਨਾਥਨ ਵੈਂਸ ਨੂੰ 2015 ਦੇ ਵਿੱਚ ਇਹ ਡਾਕੂਮੈਂਟਸ ਦਿੱਤੇ ਗਏ ਕਿ ਸਤੰਬਰ 11 ਵਰਗਾ ਹਮਲਾ ਕੈਨੇਡਾ ਦੇ ਵਿੱਚ ਵੀ ਹੋ ਸਕਦਾ ਜੇ ਸੀਐਨ ਟਾਵਰ ਨੂੰ ਕੋਈ ਜੈਟ ਹੈ ਜਿਹੜਾ ਉਹ ਨਿਸ਼ਾਨਾ ਬਣਾਉਣਾ ਚਾਹੁੰਦਾ ਤੇ ਉਸ ਕਿਵੇਂ ਸਿਰਿਆ ਜਾ ਸਕਦਾ ਜੇ ਕੋਈ ਹਾਈਜੈਕਟ ਪਲੇਨ ਹੋਵੇ ਇਹ ਡਿਸੀਜਨ ਕੌਣ ਕਰੂ ਤੇ ਕਿੰਨਾ ਸਮਾਂ ਹੋਊਗਾ ਡਿਸੀਜਨ ਬਣਾਉਣ ਦੇ ਲਈ ਕੈਨੇਡੀਅਨ ਤੇ ਅਮਰੀਕਨ ਫਾਈਟਰ ਜੈਟ ਨੇ ਜਿਹੜੇ ਉਹ ਕਿੱਥੇ ਖੜਨਗੇ ਇੱਥੇ ਕੈਨੇਡੀਅਨ ਜੈਟਸ ਨੇ ਜਿਹੜੇ ਉਹ ਲੋਕੇਟ ਕੀਤੇ ਜਾਣਗੇ ਕਿ ਛੇਤੀ ਟਾਰਗੇਟ ਦੇ ਨੇੜੇ ਹੋਣ ਤੇ ਕਦ ਕੈਨੇਡੀਅਨ ਤੇ ਅਮਰੀਕਨ ਜੈਟਸ ਨੇ ਜਿਹੜੇ ਅਥਰਾਾਈਜ਼ ਕੀਤੇ ਫੋਰਸ ਦੇ ਲਈ ਤੇ ਆਪਰੇਸ਼ਨ ਨੋਬਲ ਈਗਲ ਜਿਹੜਾ ਹਰ ਵਕਤ ਤਿਆਰ ਜਿਸ ਵਿੱਚ ਫਾਈਟਰ ਪਾਇਲਟ ਤੇ ਫਾਈਟਰ ਜੈਟਸ ਜਿਹੜੇ ਰਹਿੰਦੇ ਨੇ ਸੀਐਫ18 ਜਿਹੜਾ ਸਾਡਾ ਹਾਰਡਵੇਅਰ ਹੈ ਉਹ ਵੀ ਇਸ ਦੇ ਅੰਡਰ ਆ ਕਿਉਂਕਿ ਨੌਰੈਡ ਜਿਹੜੀ ਹੈ ਨਾਰਥ ਅਮਰੀਕਨ 에ਰੋਸਪੇਸ ਡਿਫੈਂਸ ਮਾਨ ਮਾਂਡਾਡੀ ਜਿਹੜੀ ਕੋਲੋਰੈਡੋ ਦੇ ਵਿੱਚ ਹੈ ਸਤੰਬਰ 11 ਵਰਗਾ ਦੁਆਰਾ ਇਹ ਹਮਲਾ ਨਾ ਹੋ ਜਾਏ ਇਸ ਦਾ ਖਿਆਲ ਰੱਖਣ ਲਈ ਇਹ ਇਹਦਾ ਮਤਲਬ ਕੁਝ ਨਾ ਕੁਝ ਥ੍ਰੈਟ ਇਹ ਜੇ ਸੀ ਜਾਂ ਕੋਈ ਪਲਾਨ ਇਹ ਜੀ ਸੀ ਕੋਈ ਇਹ ਹਵਾਈ ਜਹਾਜ਼ ਜਿਹੜੇ ਨੇ ਪੈਸੇਂਜਰ ਜੈਟਸ ਨੇ ਜਿਹੜੇ ਉਹ ਸਤੰਬਰ 11 ਦੀ ਤਰਜ਼ ਤੇ ਅਗਵਾ ਕਰਕੇ ਹਾਈਜੈਕ ਕਰਕੇ ਸੀਐਨ ਟਾਵਰ ਦੇ ਵਿੱਚ ਠੋਕੇ ਜਾਣ ਆਕੇ ਰਾਨੀ ਕਰ ਦਿੱਤੀ ਇਸ ਖਬਰ ਨੇ ਸੀਬੀਸੀ ਨੂੰ ਇਹ ਡਾਕੂਮੈਂਟਸ ਮਿਲੇ ਦੁਜੇ ਬਨੇ ਦੁਨੀਆ ਦੀਆਂ ਖਬਰਾਂ ਦੇ ਵਿੱਚੋਂ ਡੋਨਲਡ ਟਰੰਪ ਨੇ ਪਹਿਲੀ ਤੇ ਦੋਨੇ ਹਾਊਸਸ ਨੂੰ ਹਾਊਸ ਆਫ ਰਿਪ੍ਰেজੈਂਟੇਟਿਵ ਨੂੰ ਸੰਬੋਧਨ ਕਰ ਕੀਤਾ ਤੇ ਵਾਕਿਆ ਤਰਜ ਜਿਹੜੀ ਸੀ ਉਹ ਉਹੀ ਸੀ ਜਿਵੇਂ ਰਾਸ਼ਟਰਪਤੀ ਬੋਲ ਰਿਹਾ ਕੈਂਪੇਨ ਗੀਅਰ ਤੋਂ ਬਾਹਰ ਨਿਕਲ ਕੇ ਕੀ ਕੀ ਕਰਨਾ ਇਨਫਰਾਸਟ੍ਰਕਚਰ ਜਿਹੜੇ ਨੇ ਬਹੁਤ ਵੱਡੀ ਜਿਹੜੇ ਬਹੁਤ ਵੱਡਾ ਹਿੱਸਾ ਇਨਫਰਾਸਟ੍ਰਕਚਰ ਦਾ ਸੜਕਾਂ ਦਾ ਪੁਲਾਂ ਦਾ ਇੰਟਰਚੇਂਜਸ ਦਾ ਅਮਰੀਕਾ ਵਾਲੇ ਪਾਸੇ ਉਹ ਹੁਣ ਕੇਅਰ ਖਤਮ ਕਰ ਦੇਣਾ ਮਿਲਟਰੀ ਬੂਸਟ ਕਰਨੀ ਹੈ ਤੇ ਨਾਲ ਉਹਨਾਂ ਨੇ ਇੱਕ ਇਹਦੇ ਵਿੱਚ ਕਿਹਾ ਕਿ ਜਿਨ੍ਹਾਂ ਦਾ ਕ੍ਰਿਮੀਨਲ ਕੋਈ ਵੀ ਬੈਕਗ੍ਰਾਉਂਡ ਨਹੀਂ ਇਲੈਗਲ ਨਹੀਂ ਉਹਨਾਂ ਨੂੰ ਪੱਕਿਆਂ ਕਰਨ ਦੀ ਵੀ ਗੱਲ ਇਹਦੇ ਵਿੱਚ ਹੋਈ ਜਿਨ੍ਹਾਂ ਤੇ ਦਾਗ ਨੇ ਉਹ ਭੇਜੇ ਜਾਣਗੇ ਜਿਹੜੇ ਬੇਦਾਗ ਨੇ ਉਹਨਾਂ ਨੂੰ ਪੱਕਿਆ ਕੀਤਾ ਜਾਊ ਇਸ ਗੱਲ ਦੀ ਉਹਨਾਂ ਲੋਕ ਬਿਨਾਂ ਕਾਗਜ਼ਾਂ ਪੱਤਰਾਂ ਨਾਲ ਜਾਂ ਕਾਗਜ਼ਾਂ ਪੱਤਰਾਂ ਨਾਲ ਡਰੇ ਹੋਏ ਸੀ ਉਹਨਾਂ ਨੂੰ ਸਾਹਜ ਸਾਹ ਆਇਆ ਲੋਕਲ ਖਬਰਾਂ ਦੇ ਵਿੱਚ ਇੱਕ ਨਵਾਂ ਜਿਹੜਾ ਖਬਰ ਜਿਹੜੀ ਪ੍ਰੋਵਿੰਸ ਦੇ ਵਿੱਚ ਵਨ ਫਾਰਮਰ ਨੇ ਜਿਹੜੀ ਛਾਪੀ ਹੈ ਉਹਦੇ ਵਿੱਚ ਉਸਨੇ ਇਨਕਸ਼ਾਫ ਕੀਤਾ ਹੈ ਕਿ ਦੇ ਹੁਣ ਤੇ ਬੀਸੀ ਲਿਬਰਲ ਨੇ 1 ਅਰਬ ਡਾਲਰ ਦੀ ਸਰਕਾਰੀ ਜ਼ਮੀਨ ਤੇ ਜਾਂ ਸਰਕਾਰੀ ਜਿਹੜੇ ਅਸਾਸੇ ਨੇ ਪਿਛਲੇ ਸਾਲਾਂ ਚ ਵੇਚੇ ਨੇ ਤੇ 1 ਅਰਬ ਦੀ ਹੋਰ ਵੇਚਣ ਦੀ 1 ਮਿਲੀਅਨ ਦੀ ਹੋਰ ਜ਼ਮੀਨ ਤੇ ਗਵਰਨਮੈਂਟ ਦਾ ਦੇ ਜਿਹੜੀਆਂ ਪ੍ਰਾਪਰਟੀਆਂ ਵੇਚਣ ਦੀ ਤਿਆਰੀ ਹੈ ਇਹ ਜਿਹੜੀ ਇੱਕ ਰਿਪੋਰਟ ਸੀ ਜਿਸ ਨੂੰ RAEG ਕਿਹਾ ਜਾਂਦਾ ਹੈ ਰੀਜ਼ ਆਫ ਐਸੈਟਸ ਫਾਰ ਇਕਨੋਮਿਕ ਜਨਰੇਸ਼ਨ ਉਹਦੇ ਤਹਿਤ ਕਲਾਰਕ ਨੇ ਅਠ ਕਲਾਰਕ ਗਵਰਨਮੈਂਟ ਨੇ 800 ਮਿਲੀਅਨ ਦੀ ਆਲਮੋਸਟ ਜ਼ਮੀਨ ਜਿਹੜੀ ਪ੍ਰਾਈਵੇਟ ਡਿਵੈਲਪਰਾਂ ਨੂੰ 베ਚੀ ਵੈਨਕੂਵਰ ਦੀ ਡੌਗਵਰਡ ਪੀਅਰਸ ਤੋਂ ਤੇ ਲਿਟਲ ਮਾਊਂਟਨ ਦੀ ਜਿਹੜੀ ਸੀ ਤੇ 300 ਮਿਲੀਅਨ ਦੇ ਐਸੈਟਸ ਨੇ ਜਿਹੜੇ ਉਹ ਅਲੱਗ ਵਿਕੇ ਮਾਰਚ 31 ਤੱਕ 1.1 ਬਿਲੀਅਨ ਤੇ 1 ਬਿਲੀਅਨ ਦੀ ਗਾਹ ਵਾਲੇ ਸਮੇਂ ਦੀ ਤਿਆਰੀ ਹੈ ਇਸ ਦੇ ਉੱਪਰ ਆਡੀਟਰ ਜਨਰਲ ਜਿਹੜੇ ਸਾਡੇ ਬੀਸੀ ਦੇ ਨੇ ਕੈਰਲ ਬਲ ਉਹਨਾਂ ਨੇ ਇਦੇ ਵਿੱਚ ਇਹਦੇ ਤੇ ਸੋਚਿਆ ਇਸ ਨੂੰ ਬਹੁਤ ਨੇੜਿਓਂ ਵੇਖ ਕੇ ਤੇ ਉਹਨਾਂ ਨੇ ਅਫਸੋਸ ਨਹੀਂ ਪਰ ਉਹਨਾਂ ਨੇ ਦੱਸਿਆ ਕਿ ਮੇਰੀ ਇਸ ਨਿਗਾਹ ਆਉਣ ਵਾਲੇ ਸਮੇਂ ਚ 500 ਮਿਲੀਅਨ ਡਾਲਰ ਦੀ ਜ਼ਮੀਨ ਜਿਹੜੀ ਜੈਰੀਪਲੈਂਡ ਬਰਕੂਵਰ ਦੇ ਵਿੱਚ ਹੈ ਉਹਦੇ ਵਿੱਚੋਂ ਜਿਹੜੀ ਕਿ ਹੁਣ ਲੋਕਲ ਫਸਟ ਨੇਸ਼ਨ ਨੂੰ ਵੇਚਣ ਦੀ ਤਿਆਰੀ ਹੈ ਮਤਲਬ ਹੁਣ ਜਿਹੜੀ ਅਗਲੀ ਜ਼ਮੀਨ ਵੇਚਣੀ ਹੈ ਨਾਨ-ਪ੍ਰੋਫਿਟ ਹਾਊਸਿੰਗ ਸੋਸਾਇਟੀਜ਼ ਨੂੰ ਵੇਚਣੀ ਇਹ ਭਾਈਚਾਰੇ ਵਿੱਚ ਬਹੁਤ ਚਿਰ ਦਾ ਵਿਸ਼ਾ ਰਿਹਾ ਹੈ ਕਿ 99 ਸਾਲਾਂ ਤੇ ਕਿਸੇ ਨੂੰ ਐਨ ਮੋਰ ਦੇ ਵਿੱਚ ਜ਼ਮੀਨ ਤੋਂ ਪਹਿਲਾਂ ਦੀ ਵੀ ਇਹ ਗੱਲ ਹੁਣ ਇਹਦੇ ਨਾਲ ਅਟਾਰਨੀ ਸੌਰੀ ਆਡੀਟਰ ਜਨਰਲ ਨੇ ਜਿਹੜੀ ਅੱਗੇ ਗੱਲ ਕਹੀ ਕਿ ਜਿਹੜਾ ਹੋਰ ਅਗਲੇ ਕੰਟ੍ਰੈਕਟ ਕਰੀ ਬੈਠੇ ਨੇ ਜਿਹੜੀ ਕੰਟਰੈਕਟ ਅਬਲੀਗੇਸ਼ਨ BC ਲਿਬਰਲ ਕਰੀ ਬੈਠੀ ਆ ਦੇ ਕਰੀਬ ਹੈ 101 ਬਿਲੀਅਨ 9 ਬਿਲੀਅਨ ਦੀ BC ਫੈਰੀਜ਼ ਦੀ 9 ਬਿਲੀਅਨ ਦੀ ਹੈਲਥ케ਅਰ ਸੈਕਟਰ ਦੀ ਤੇ 5 ਬਿਲੀਅਨ ਦੀ आरਸੀਐਮਪੀ ਦੇ ਕੰਟਰੈਕਟ ਦੀ ਤੇ ਸਭ ਤੋਂ ਵੱਡੀਆਂ 58 ਬਿਲੀਅਨ ਦੀ ਆਬਲੀਗੇਸ਼ਨ ਜਿਹੜੀ BC ਲਿਬਰਲ ਲਈ ਬੈਠੇ ਆ ਉਹ ਆ BC ਹਾਈਡਰੋ ਦੀ ਬਿਜਲੀ ਖਰੀਦਣ ਦੀ ਇੰਡੀਪੈਂਡੈਂਟ ਪ੍ਰੋਵਾਈਡਰਸ ਤੋਂ ਸੋ ਆਡੀਟਰ ਜਨਰਲ ਨੇ ਇਹ ਗੱਲ ਕੀਤੀ ਕਿ ਇਹ ਜਿਹੜਾ ਕੰਟਰੈਕਚੁਅਲ ਆਬਲੀਗੇਸ਼ਨ ਇਹ ਪਹਿਲਾ ਜਿਹੜਾ 68 ਬਿਲੀਅਨ ਦਾ ਪ੍ਰੋਵਿੰਸ਼ੀਅਲ ਡੈਟਾ ਉਹਦਾ ਹਿੱਸਾ ਨਹੀਂ ਉਹ ਤੋਂ ਬਾਹਰ ਆ ਇਹ ਇਹ ਖਬਰ ਇਸ ਤੇ ਜਦ ਇਸ ਪੱਤਰਕਾਰ ਨੇ ਇਹ ਖਬਰ ਛਾਪੀ ਆ ਜ਼ਮੀਨ ਇਹ ਜਿਵੇਂ ਆਪਾਂ ਨਾ ਆਪਣੇ ਸੂਬੇ ਜਿੱਥੇ ਸਾਡੀਆਂ ਪੀੜ੍ਹੀਆਂ ਨੇ ਰਹਿਣਾ ਉਹਦੇ ਲਈ ਚਿੰਤਾ ਤੁਰਨੀ ਪੰਜਾਬ ਲਈ ਚਿੰਤਾ ਤੁਰ ਬਹੁਤ ਹੁੰਨੇ ਆ ਉਹ ਬਾਦਲਾਂ ਨੇ ਆਹ ਵੇਚਦਾ ਨੇ ਆਹ ਵੇਚਦਾ ਫਰਾਨੀ ਕਾਂਗਰਸ ਨੇ ਆਹ ਵੇਚਦਾ ਮਾਰਕਫਲ ਬੇਚਤੀ ਹੋਏ ਆਹ ਢੀਲੋ ਰਿਜ਼ੋਰਟ ਵੇਚਦਾ ਫਲੋਟਿੰਗ ਰੈਸਟੋਰੈਂਟ ਵੇਚਦਾ ਆ ਵੇਖੋ ਤੁਹਾਡੇ ਘਰ ਦੇ ਵਿੱਚ ਕੀ ਕੀ ਵਿਖ ਰਿਹਾ ਡਿਵੈਲਪਰ ਨੂੰ ਜਿਹੜੇ ਪ੍ਰਾਈਵੇਟ ਡਿਵੈਲਪਰਸ ਨੇ ਜਿਨ੍ਹਾਂ ਨੂੰ ਬਹੁਤ ਵੱਡੀ ਟੈਕਸ ਬ੍ਰੇਕ 2% ਜਿਹੜੇ ਵਿੱਚ ਨੇ ਉੱਪਰਲੇ ਉਹਨਾਂ ਨੂੰ ਐਡੀ ਵੱਡੀ ਟੈਕਸ ਬ੍ਰੇਕ ਦਿੱਤੀ ਹੈ ਇੱਕ ਪ੍ਰਾਈਵੇਟ ਡਿਵੈਲਪਰズ ਨੂੰ ਹੀ 800 ਮਿਲੀਅਨ ਤੇ 300 ਮਿਲੀਅਨ 1.1 ਮਿਲੀਅਨ ਟੋਟਲ ਮਾਰਚ 31 2016 ਤੱਕ ਪਿਛਲੇ ਸਮੇਂ 'ਚ ਬੀਸੀ ਲਿਬਰਲਸ ਦੇ ਤੇ ਹੁਣ ਅਗਲੇ ਸਮੇਂ ਦੇ ਵਿੱਚ ਵੀ ਬਿਲੀਅਨ ਦੀ ਤਿਆਰੀ ਹੈ ਉਹਦੇ ਤੋਂ ਬਾਅਦ ਜਿਹੜਾ ਅਹਿਦ ਕਰੀ ਬੈਠੇ ਆ ਉਹ 101 ਬਿਲੀਅਨ ਦੇ ਕਰੀਬ ਆ ਜੀ ਚ ਫੈਰੀਆਂ ਹੋਣਗੀਆਂ ਜੇ ਹੈਲਥ케ਅਰ ਸੈਕਟਰ ਹੋਵੇ 58 ਬਿਲੀਅਨ ਦੇ ਆਲਰੇਡੀ ਜਿਹੜੇ ਕੰਟਰੈਕਟ ਸਾਈਨ ਨੇ ਜਿਹੜੀ ਆਬਲੀਗੇਸ਼ਨ ਆ ਬੀਸੀ ਹਾਈਡਰੋ ਦੀ ਸਭ ਤੋਂ ਵੱਡੀ ਜਿਸ ਬਿਜਲੀ ਖਰੀਦਨੀ ਇੰਡੀਪੈਂਡੈਂਟ ਪ੍ਰੋਵਾਈਡਰਸ ਤੋਂ ਆਡੀਟਰ ਜਨਰਲ ਨੇ ਇਸ ਨੂੰ ਬਹੁਤ ਨੇੜਿਓਂ ਰਿਪੋਰਟ ਨੂੰ ਪੜਿਆ ਤੇ ਇਹ ਗੱਲਾਂ ਬਾਹਰ ਹੁਣ ਛਪੀਆਂ ਇਹਦੇ ਨਾਲ ਹੀ ਰਾਜਨੀਤਿਕ ਜਿਹੜੇ ਪੈਂਤੜੇ ਆ ਉਹਦੇ ਤੇ ਬੜੀ ਰਦੋਬਦਲ ਖਾਸ ਤੌਰ ਤੇ ਜਿਹੜਾ ਸੋਮਵਾਰ ਨੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਲਿਬਰਲ ਦੀ ਗ੍ਰੀਨ ਟੈਂਬਰ ਤੋਂ ਜਿਹਦੇ ਵਿੱਚ ਪੁਰਾਣੇ ਬੰਦੇ ਤੁਰੇ ਫਿਰਦੇ ਆ ਵੀ ਸਾਨੂੰ ਮਿਲੀ ਸੀਟ ਸਾਨੂੰ ਮਿਲੀ ਉਹ ਨਹੀਂ ਮਿਲਣੀ ਬ੍ਰੈਂਡਾਂ ਲੋਕ ਆ ਰਹੀ ਐ ਸੋਮਵਾਰ ਨੂੰ ਤੁਹਾਨੂੰ ਮੈਂ ਦੱਸਿਆ ਸੀ। ਔਰ ਇਹ ਹੁਣ ਜਨਤਕ ਹੋ ਚੁੱਕਾ। ਇੱਥੋਂ ਹੀ ਉਹ ਐਮਐਲਏ ਬਣ ਕੇ ਮਨਿਸਟਰ ਬਣੇ ਸਨ। ਹੁਣ ਗੱਲ ਇਹ ਐ ਕਿ ਭਾਈ ਨਾਲ ਜਿਹੜਾ ਇਹ ਮਖੌਲ ਹੋ ਰਿਹਾ ਇਹਦੀ ਵਜ੍ਹਾ ਕੀ ਐ? ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਇਸ ਬਾਰੇ ਗੱਲ ਕਰਦੇ ਬਹੁਤ ਵਾਰ ਆਪਾਂ ਇਸ ਵਿਸ਼ੇ ਤੇ ਗੱਲ ਕੀਤੀ ਹੈ ਰਾਜਨੀਤੀ ਦੇ ਵਿੱਚ ਸਾਡੇ ਖੂਨ ਦੇ ਵਿੱਚ ਹੈ ਤੇ ਰਾਜਨੀਤੀ ਦੀ ਤਿਗੜਮ ਵੀ ਅਸੀਂ ਪੰਜਾਬ ਵਾਲੀ ਇੱਥੇ ਹੀ ਲੈ ਕੇ ਆਏ ਆ ਇੱਥੇ ਰਾਜਨੀਤੀ ਦਾ ਹੋਰ ਬੇਸ ਹੈ ਇੱਥੇ ਸਿੱਧੀ ਗੱਲ ਕੀਤੀ ਜਾਂਦੀ ਹੈ ਔਰ ਸਾਫ਼ ਕਰਨੀ ਪੈਂਦੀ ਹੈ ਔਰ ਰਾਜਨੀਤੀ ਦੇ ਵਿੱਚ ਇੱਕ ਗੱਲ ਸਿੱਧੀ ਜਿਹੜੇ ਤੁਹਾਡੀਆਂ ਬਾਹਮਾਂ ਹੈ ਜਿਹੜੇ ਤੁਹਾਡੇ ਸਪੋਰਟਰ ਨੇ ਜਦ ਤੁਹਾਨੂੰ ਉਹਨਾਂ ਤੋਂ ਡਰ ਲੱਗਣ ਲੱਗ ਗਿਆ ਤਾਂ ਤੁਸੀਂ ਆਪਣਾ ਵੀ ਪਤਨ ਤੁਹਾਡਾ ਸ਼ੁਰੂ ਆ ਤੇ ਉਹਨਾਂ ਦਾ ਕਰ ਹੀ ਦੇਣਾ ਜਿਹੜੇ 10 20 25 ਬੰਦੇ ਨਾਲ ਪਹੁੰਚਾਉਂਦੇ ਨੇ ਚਾਹੇ ਉਹ ਤੁਸੀਂ ਲੋਕਲੋਂ ਚਾਹੇ ਪ੍ਰੋਵਿੰਸ਼ਲੋਂ ਚਾਹੇ ਤੁਸੀਂ ਆਊਟਵਾਚ ਬੈਠੇ ਹੋ ਉਹ ਤੁਹਾਡੇ ਵੈਲਵਿਸ਼ਰੇ ਨੇ ਉਹ ਤੁਰੇ ਫਿਰਦੇ ਆ ਦਿਨ ਰਾਤ ਪੈਸੇ ਖਰਚਦੇ ਆ ਘਰਾਂ ਦੇ ਵਿੱਚ ਕਲੇਸ਼ ਹੁੰਦਾ ਘਰੇ ਮੁੜਦੇ ਨਹੀਂ ਬਾਲ ਬੱਚਿਆਂ ਦਾ ਖਿਆਲ ਨਹੀਂ ਜੇ ਕਿਸ ਨੇ ਐਮਐਲਏ ਬਣਨਾ ਕਿਸੇ ਨੇ ਐਮਪੀ ਬਣਨਾ ਕਿਸੇ ਨੇ ਕੌਂਸਲਰ ਬਣਨਾ ਹੈ ਉਹ ਤਾਂ ਉਹਨੇ ਹੀ ਬਣਨਾ ਜਿਹਦਾ ਨੌ ਹੈ ਥੱਲੜਾ ਲੈਵਲ ਥੱਲੇ ਹੀ ਰਹਿ ਜਾਂਦਾ ਉਹਦੇ ਚੋਂ 60% ਤਾਂ ਜਿੱਦਾਂ ਰਿਜ਼ਲਟ ਆਏ ਉਹਦਨੇ ਛਿਟਕਾ ਦਿੱਤੇ ਜਾਂਦੇ 40 ਦੇ ਵਿੱਚੋਂ 10 ਕਿੰਨੇ ਜਿਹੜੇ ਅਗਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਥੱਲੇ 10 ਅਖੀਰ 'ਚ 2-4 ਰਹਿ ਜਾਂਦੇ ਆ ਜੇ 2-4 ਤੋਂ ਵੀ ਤੁਹਾਨੂੰ ਡਰ ਲੱਗਣ ਲੱਗ ਗਿਆ ਤੇ ਜਾਂ ਤੁਹਾਡੇ ਮਨ ਦੇ ਵਿੱਚ ਇੱਕ ਗੱਲ ਬੈਠ ਗਈ ਕਿ ਰਾਜਨੀਤੀ ਫੁੱਲ ਟਾਈਮ ਕਰਕੇ ਕੋਈ ਵੀ ਅਸੀਂ ਬਰਾਬਰ ਨੀ ਆਪਣੇ ਆਉਣ ਦੇਣਾ ਮੰਨ ਲਓ ਵੀ ਤੁਸੀਂ ਵੀ ਉਸ ਭਾਈਚਾਰੇ ਚੋਂ ਅਫੇ ਜਿੱਦਣ ਸ਼ੇਰ ਆਉਣਾ ਉਸ ਦਿਨ ਪਿੰਡ ਨੇ ਵੀ ਨੀ ਆਉਣਾ ਇਹ ਇੱਕ ਵਾਰ ਨਹੀਂ ਨਾਲ ਬਹੁਤ ਵਾਰ ਮਜ਼ਾਕ ਹੋਇਆ ਉਹ ਸਰਕਾਰ ਉਹ ਸਰਕਾਰ ਸੌਰੀ ਉਹ ਪਾਰਟੀ ਜਿਹਨੂੰ ਕਿਸੇ ਦੀ ਵਿਦਵਤਾ ਤੇ ਸ਼ੱਕ ਹੈ ਉਹਨੂੰ ਪਹਿਲੇ ਦਿਨੇ ਹਵਾ ਕਿਉਂ ਦਿੰਦੀ ਹੈ ਸਰਕਾਰ ਪਾਰਟੀ ਵੇ ਤੂੰ ਸਾਡਾ ਸੰਭਾਵੀ ਉਮੀਦਵਾਰ ਆ ਐਮ ਐਲ ਏ ਜਾਂ ਐਮ ਪੀ ਆ ਜਾਂ ਲੋਕਲ ਉਹਨੂੰ ਗਲਤ ਕਿਉਂ ਵਿਸ਼ਵਾਸ ਦਿੰਦੀ ਹੈ ਉਹਦੇ ਪਿੱਛੇ ਕਾਰਨਕ ਹੈ ਕਿ ਜਿਹੜਾ ਮੂਹਰੇ ਬੰਦਾ ਜੋੜਿਆ ਹੁੰਦਾ ਉਹਨੂੰ ਉਹਦੇ ਤੱਕ ਫਾਇਦਾ ਹੁੰਦਾ ਗਾਉਂ ਹੁੰਦਾ ਇਹ ਜੇ ਇਹਨੂੰ ਲਾਤ ਹੈ ਕਈ ਵਾਰ ਅਸੀਂ ਪ੍ਰੋਕਲੇਮਡ ਵੀ ਹੋ ਜਾਂਦੇ ਆ ਆਪਣੇ ਤੌਰ ਤੇ ਸੋਚਣ ਲੱਗ ਜਾਂਦੇ ਆ ਹੁਣ ਜਿਹੜਾ ਦੋਨੇ ਪਾਰਟੀਆਂ ਨੇ ਧਾਂਦਲੀ ਕੀਤੀ ਆ ਗ੍ਰੀਨ ਟੈਂਪਰ ਦੇ ਵਿੱਚ NDP ਦੀ ਨਾਮਿਨੇਸ਼ਨ ਨੂੰ ਚੈਲੰਜ ਹੋਇਆ NDP ਦੇ ਪੁਰਾਣੇ ਵਰਕਰਾਂ ਨੇ ਰੌਲਾ ਪਾਇਆ ਕਿ ਜਿਸ ਸੀ ਤੇ ਨਹੀਂ ਸੀ ਰਾਈਟ ਧੱਕੇ ਦੇ ਨਾਲ ਕਿਵੇਂ ਬਣਾ ਦਿੱਤਾ ਹੈ ਦਾ ਵੀ ਇਹ ਹੋਇਆ ਲਿਬਰਲਸ ਦੇ ਵਿੱਚ ਸੀਟ ਦੀ ਗੱਲ ਹੈ ਜਿਹੜੀ ਉਹ ਕਲੀਅਰ ਹੋਈ ਹੋਈ ਸੀ ਤੇ ਬਾਹਰ ਜਿਹੜੇ ਉਹਦੇ ਸੰਭਾਵਨਾ ਦੀ ਉਮੀਦਵਾਰ ਸੀ ਉਹ ਬਾਹਰ ਕਹਿ ਰਹੇ ਸੀ ਕਿ ਸਾਨੂੰ ਸੀਟ ਇਹ ਮਿਲ ਗਈ ਫੇਰ ਪਿਛਲੇ 10-20 ਦਿਨਾਂ 25 ਦਿਨਾਂ ਦੇ ਵਿੱਚ ਹੋਰ ਅਚੀਵਮੈਂਟ ਹੋਊਗੀ ਹੋਰ ਉਮੀਦਵਾਰ ਵਿੱਚੋਂ ਹੀ ਲਿਬਰਲ ਨੇ ਉਹਨਾਂ ਨੂੰ ਤੌਰ ਤੇ ਤੁਨੂ ਵੀ ਬਣਾ ਸਕਦੇ ਹੁਣ ਭਾਈਚਾਰੇ ਚੋਂ 2 3 4 ਜਣੇ ਤੁਰੇ ਫਿਰਦੇ ਚਾਰਾਂ ਨੂੰ ਪਿੱਛੇ ਕਰਕੇ ਮੂਹਰੇ ਲਿਆ ਕੇ ਬ੍ਰਿੰਡਲੌਕ ਨੂੰ ਬਿਠਾ ਦਿੰਦਾ ਹੁਣ ਇਹਦੇ ਦੋ ਰੀਜ਼ਨ ਨੇ ਜਾਂ ਤਾਂ ਇਹ ਸੀ ਕਿ ਸਾਡੇ ਨਾਲ ਮਜ਼ਾਕ ਹੋਇਆ ਜਾਂ ਅਗਲੀ ਗੱਲ ਇਹ ਕਿ ਅਸੀਂ ਚਾਰੇ ਲੜ ਰਹੇ ਸੀ ਉਹ ਕਹਿੰਦੇ ਇਹ ਤਾਂ ਲੜਾਈ ਬਹੁਤ ਹੋਊ ਤੇ ਅਸੀਂ ਇਹਨਾਂ ਦੇ ਉੱਪਰ ਬਿਠਾ ਦਿੰਦੇ ਹਰ ਕੰਸਟਿਚੂਐਂਸੀ ਚ ਇਹੋ ਹੋ ਰਿਹਾ ਜਿੱਥੋਂ ਹੁਣ ਨਿਊਟਨ ਦੀ ਗੱਲ ਪੈਨਰੋਮਾ ਦੀ ਲੈ ਲਓ ਪੈਨਰੋਮਾ ਦੇ ਸਟਿੰਗ ਐਮਰ ਨੂੰ ਚੁੱਕ ਕੇ ਤੁਸੀਂ ਗਲੋਬਲ ਡੇਟ ਮਾਰਦੇ ਹੋ ਮਰਜ਼ੀ ਲਿਬਰਲ ਦੀ ਹੈ ਮੈਂ ਲਿਬਰਲ ਦਾ ਕੋਈ ਹਿੱਸਾ ਨਹੀਂ ਪਰ ਮੈਂ ਦੱਸ ਰਿਹਾ ਕਿ ਕੀ ਹੋਕੀ ਰਿਹਾ ਵਾਲੀ ਦੇ ਵਿੱਚ ਚੀਮਾ ਉਣੀ ਬਣਾਏ ਨੇ ਉਹਦੇ ਉਹਨਾਂ ਦੇ ਬਾਰੇ ਗੱਲ ਚੱਲ ਰਹੀ ਹੈ ਕਿ ਕਮਿਊਨਿਟੀ ਕਿੱਥੇ ਕੰਮ ਕਿੱਥੇ ਕੀ ਕੀਤਾ ਕਿਹਨੇ ਕੀਤਾ ਕੋਈ ਪੁੱਛ ਨਹੀਂ ਰਿਹਾ ਡੇਲ ਦੇ ਵਿੱਚ ਜੋ ਲੋਣਾ ਹੀ ਮੈਂਬਰਸ਼ਿਪ ਬਣਾ ਰਹੇ ਸੀ ਔਰ ਬੂਰਾ ਕਲੀਅਰ ਹੋ ਗਿਆ ਕਿ ਉੱਥੇ ਸਟੈਫਨੀ ਕ੍ਰਿਊ ਨੂੰ ਗਾਹਾਂ ਲੈ ਜਾਾਂਗੇ ਉੱਥੋਂ ਚਾਕੇ ਸਾਰਾ ਕੁਝ ਇੱਕ ਰਾਤ ਸਵੇਰੇ ਖਤਮ ਭਾਈ ਦੇ ਵਿੱਚ ਜੇ ਕੋਈ ਪੋਲਿਟਿਕਲ ਵੱਧ ਬੰਦੇ ਨੂੰ ਤੁਸੀਂ ਵੱਢਦੇ ਹੋ ਜਾਂ ਇੱਕ ਦੂਜਾ ਵੱਢਦਾ ਉਹ ਬਹੁਤ ਘਾਤਕ ਹੈ ਦੁਨੀਆ ਪਿਛਲੇ ਰੈਕੋਰਡ ਸਾਲਾਂ ਵਧੀ ਦੇਖ ਰਿਹਾ ਕਿ ਕੌਣ ਕਿਹਦੇ ਨਾਲ ਸੀ ਅੱਜ ਉਹ ਕਿੱਥੇ ਹੈ ਬਹੁਤ ਲੰਮੀ ਲਿਸਟ ਹੋ ਜਾਂਦੀ ਹੈ ਇੱਕ ਇਹ ਫਲਾ ਫਲਾ ਫਲਾ ਬੰਦੇ ਯਾਰ ਕਿੱਥੇ ਗਏ ਫਲਾ ਫਲਾ ਬੰਦੇ ਕਿੱਥੇ ਇੱਕ ਨਹੀਂ ਬਹੁਤ ਲੰਮੀ ਲਿਸਟ ਹੈ ਕੰਮ ਲਿਆ ਛਿਟਕਾਇਆ ਕੰਮ ਲਿਆ ਛਿਟਕਾਇਆ ਕੰਮ ਲਿਆ ਛਿਟਕਾਇਆ ਪਰ ਇੱਕ ਦਿਨ ਵਾਰੀ ਆ ਜਾਣੀ ਹੈ ਬ੍ਰੈਮਟਨ ਦੇ ਵਿੱਚੋਂ ਇਸ ਵਾਰ ਨਵੇਂ ਨਵਨੀਤ ਅੰਟਰੀਓ ਦੇ ਵਿੱਚੋਂ ਨਵਦੀਪ ਬੈਂਸ ਹੋਣੀ ਮੈਂ ਹੁਣ ਲਿਬਰਲ ਗੱਲ ਕਰਾਂ ਫੈਡਰਲ ਦੀ ਉਹ ਪੁਰਾਣੇ ਸੀ ਨਵੇਂ ਮੁੰਡੇ ਗਰੇਵਾਲ ਗਏ ਹੋਰ ਗਏ ਘੱਟੋ ਘੱਟ 50 60 ਸਾਡੇ ਬਾਦ ਬੱਚੇ ਇਸ ਸਮੇਂ ਆਟੋਆ ਦੇ ਵਿੱਚ ਕੰਮ ਕਰ ਰਹੇ ਨੇ ਸਰਕਾਰ ਦੇ ਵਿੱਚ ਇਹਨੂੰ ਕਹਿੰਦੇ ਨੇ ਫਾਰ ਦਾ ਕਮਿਊਨਿਟੀ ਬਾਈ ਦਾ ਕਮਿਊਨਿਟੀ ਸਹੀ ਆਲੇ ਦੱਸਣ ਐਮਪੀ ਜਿਹੜੇ ਇੱਥੇ ਆ ਵੀ ਕਿਹੜੇ ਬੰਦੇ ਨੂੰ ਨੌਕਰੀ ਸਿਰਫ ਆਪਣੇ ਟੱਬਰ ਤੋਂ ਬਿਨਾਂ ਦੱਸਣ ਕਿਸੇ ਨੂੰ ਕੋਈ ਕਿਸੇ ਨੂੰ ਲੈ ਕੇ ਗਿਆ ਵੀ ਹਾਂ ਮੈਂ ਫਲਾਣੇ ਨੂੰ ਕੀਤਾ ਮੈਂ ਆਹ ਕੀਤਾ ਨੋ ਸਵਾਇਸ ਝੂਠੀਆਂ ਚਿੱਠੀਆਂ ਦੇਣ ਤੋਂ ਹੋਰ ਕੀ ਹੋਇਆ ਅੱਜ ਮੈਨੂੰ ਇਹ ਸਵੇਰੇ ਗੱਲ ਦਾ ਪਤਾ ਲੱਗਿਆ ਉੱਥੋਂ ਹੀ ਕਿ ਘੱਟੋ ਘੱਟ 40 50 60 ਨੌਜਵਾਨ ਬੱਚੇ ਇੱਥੇ ਦੇ ਜੰਪੜ ਕਿਸੇ ਨਾ ਕਿਸੇ ਨੌਕਰੀ ਤੇ ਔਟਵਾ ਦੇ ਵਿੱਚ ਸਰਕਾਰ ਚ ਨੇ ਚਾਹੇ ਉਹ ਦੁਪਹਾਸ਼ੀਏ ਨੇ ਚਾਹੇ ਉਹ ਸੈਕਟਰੀ ਨੇ ਚਾਹੇ ਉਹ ਕੁਛ ਨੇ ਬਹੁਤ ਵੱਡੀ ਅਚੀਵਮੈਂਟ ਆ ਤਿੰਨ ਚਾਰ ਐਮਪੀ ਇੰਨਾ ਕੰਮ ਕਰ ਗਏ ਇਹ ਜਿੱਥੇ ਤੁਹਾਡੇ ਕੋਲ ਸੀਨੀਅਰ ਮਿਨਿਸਟਰੀਆਂ ਹੋਣ ਇੱਥੇ ਲੋਕਲ ਤੇ ਦੱਸਣ ਕੋਈ ਕੋਈ ਬੱਚਾ ਸਾਡੀ ਕੰਸਟਿਟੂਐਂਸੀ ਚ ਕੋਈ ਨਵਾਂ ਬੱਚਾ ਆ ਵੀ ਜਿਹੜਾ ਕੋਈ ਵੀ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਮੰਨ ਲਓ ਮੈਂ ਇੱਥੇ ਬ੍ਰੌਡਕਾਸਟਰ ਆ ਚੇਰੇ ਪੰਜਾਬ ਆਪਣੇ ਕੇ ਆਰ ਪੀ ਆਈ ਤੇ ਮੇਰੀ ਅੱਖੇ ਨੇ ਵੀ ਮੇਰਾ ਤਾਂ ਮਾਈਕ ਹੈਗਾ ਹੀ ਹੈਗਾ ਹੋਰ ਕਿਸੇ ਰੇਡੀਓ ਤੇ ਵੀ ਕੋਈ ਬੰਦਾ ਨਾ ਬਣ ਜਵੇ ਬਸ ਚਾਹੇ ਉਹ ਮੇਰੇ ਤੋਂ ਇਹ FM ਹੋਵੇ ਚਾਹੇ AM ਹੋਵੇ ਚਾਹੇ ਲੋਕਲ ਹੋਵੇ ਚਾਹੇ ਚਿੱਪ ਵਾਲਾ ਹੋਵੇ ਚਾਹੇ ਫ੍ਰੀਕੁਐਂਸੀ ਸਿੱਧੀ ਵਾਲਾ ਹੋਵੇ ਮੈਂ ਨਹੀਂ ਬੰਨ੍ਹ ਦੇਣਾ ਕਿਤਾਬ 'ਚ ਲਿਖਿਆ ਹੋਇਆ ਹੈ ਤੇ ਫਿਰ ਜਦ ਕਹਿਣਾ ਤਾਂ ਇਹੀ ਗੱਲ ਕਹਿਣੀ ਕਿ ਨਾ ਨਾ ਨਾ ਨਾ ਇਹਦਾ ਫਰਕ ਏ ਨਹੀਂ ਇਹ ਕਹਾਣੀਆਂ ਹੋ ਹੈ ਨਹੀਂ ਗਲਤ ਜਾਂ ਤੁਸੀਂ ਝੂਠੇ ਵਾਅਦੇ ਕਰਦੇ ਹੋ ਕਿਸੇ ਨਾਲ ਸਾਲਾਂ ਵਧੀ ਕਿਸੇ ਨੂੰ ਨਾਲ ਲਈ ਫਿਰਦੇ ਹੋ ਤੇ ਉਹਨੂੰ ਗਲਤ ਵਾਅਦੇ ਕਰਦੇ ਹੋ ਫਿਰ ਤੁਸੀਂ ਉਹ ਵਾਅਦੇ ਪੂਰੇ ਨਹੀਂ ਕਰਦੇ ਉਹਦੇ ਚੋਂ ਕੀ ਨਿਕਲਦਾ ਗੁੱਸਾ ਸਾੜਾ ਲੜਾਈ ਗਾਲਾਂ ਦੁੱਪੜ ਇੱਕ ਇੱਕ ਜਗ੍ਹਾ ਤੇ ਤਿੰਨ ਤਿੰਨ ਬੰਦੇ ਖੜ ਜਾਂਦੇ ਆ ਉਹਨਾਂ ਨੂੰ ਕੌਣ ਖੜਾਉਂਦਾ ਭਾਈ ਚਾਰੇ ਕੋਈ ਜੀ ਇਹ ਲੀਗਲ ਸਾਡਾ ਵਕੀ ਆਪਣੇ ਕੈਂਡੀਡੇਟ ਆ ਇੱਕ ਆਹਾ ਬੰਦਾ ਹੈ ਇਹ ਜੀ ਪਹਿਲਾਂ ਹੀ ਹਲੇ ਨੌ ਨਾ تھے ਇਹ ਆਜ਼ਾਦ ਖਰੂ ਜੀ ਵੀ ਕਿਵੇਂ ਨਾ ਕਿਵੇਂ ਵੋਟਾਂ ਟੁੱਟਣ ਔਰ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚੋਂ ਕੋਈ ਪੱਕਾ ਬੰਦਾ ਪਰਾਂ ਕਰਨ ਦੇ ਲਈ ਵੀ ਚਾਲਾਂ ਚੱਲੀਆਂ ਜਾਂਦੀ ਵੀ ਫਲਾਣ ਜਗ੍ਹਾ ਆ ਬੰਦਾ ਖੜਾ ਦਿਓ ਉਹ ਹਾਰ ਜੂ ਤੇ ਫਲਾਣ ਬੰਦਾ ਮੇਰੇ ਰਾਹ ਚੋਂ ਪਰਾਂ ਚਲੇ ਜਾਓ ਇਹ ਸਭ ਦਾ ਨੌ ਹੈ ਰਾਜਨੀਤੀ ਤੁਸੀਂ ਕਹਦੇ ਨਾ ਬਾਦਲ ਤੋੜੇ ਹੋਣਾਂ ਦੀਆਂ ਗੱਲਾਂ ਤੇ ਅਮਰਿੰਦਰ ਦੀਆਂ ਤੇ ਉਹ ਇੱਥੇ ਦੇਖੋ ਸਰੀ ਦੇ ਕਿੰਨੇ ਬਾਦਲ ਕਿੰਨੇ ਟੋੜੇ ਕਿੰਨੇ ਤਲਵੰਡੀ ਇੱਥੇ ਬੈਠੇ ਨੇ ਜਿਹੜੇ ਦਿਨ ਰਾਤ ਵੱਢਣ ਤੇ ਹੀ ਲੱਗੇ ਹੋਏ ਆ। ਅਰਸੇ ਝੂਠ ਸਦਾ ਦਿਨ ਰਾਤ ਝੂਠ ਬੋਲਣਾ ਫਲਾਣਾ ਮੇਰਾ ਮੈਂ ਤੇਰਾ ਤੂੰ ਮੇਰਾ ਆ ਮੇਰਾ ਉਹ ਮੇਰਾ ਟੱਬਰ ਮੇਰਾ ਭਾਈਚਾਰਾ ਮੇਰਾ ਕੋਈ ਮੇਰਾ ਨਹੀਂ ਨਿੱਜ ਤੋਂ ਉੱਪਰ ਕੁਝ ਨਹੀਂ ਹੈ। ਸਤਕਾਰ ਤਾਂ ਇਸ ਗੱਲ ਤੇ ਬਣਦਾ ਹੈ ਕਿ ਆਪਣਾ ਅਧਿਕਾਰ ਖੇਤਰ ਆਪਣਾ ਪੋਰਟਫੋਲੀਓ ਉਹ ਦਾਇਰੇ ਤੋਂ ਬੰਦਾ ਬਾਹਰ ਨਾ ਜਾਵੇ ਸਭ ਤੋਂ ਵੱਡਾ ਸਤਕਾਰ ਇਹ ਮਿਲੂਗਾ ਜਦੋਂ ਹਰ ਜਗ੍ਹਾ ਉਂਗਲ ਪਾਊਗਾ ਬੰਦਾ ਜਾਂ ਪਾਊਗੀ ਉਹਦੇ ਚੋਂ ਕੱਖ ਨਹੀਂ ਮਿਲਣਾ ਹੁਣ ਇਹ ਮਜ਼ਾਕ ਨਹੀਂ ਹੋਇਆ ਦਾਵੇਦਾਰ ਜਿਹੜੇ ਨੇ ਭਾਈ ਚਾਰੇ ਚੋਣਾਂ ਚਲੋ ਆਫੀਸ਼ੀਅਲੀ ਨਹੀਂ ਕਿਹਾ ਅਨਫੀਸ਼ੀਅਲੀ ਦੋਸਤਾਂ ਮਿੱਤਰਾਂ ਚ ਤਾਂ ਬੰਦਿਆਂ ਨੇ ਕਿਹਾ ਨਾ 100-100 ਬੰਦੇ ਬਰਿਆਂ ਬੱਦੀ ਕਿਸੇ ਨੇ ਪੈਸੇ ਖਰਚੇ ਹੁਣ ਬਰਿਆਂ ਬੱਦੀ ਫੰਡ ਰੇਜਿੰਗਾਂ ਤੇ ਤੁਰਿਆ ਫਿਰੇ ਬੰਦਾ ਬਰਿਆਂ ਬੱਦੀ ਗੱਡੀ ਭੁਜਾਈ ਫੇ ਬਰਾਂ ਬੱਦੀ ਤੁਰਿਆ ਫਿਰੇ ਕਿਸੇ ਨਾਲ ਅੱਜ ਕਿੱਥੇ ਖੜੂਗਾ ਜਾ ਕੇ ਕੋਈ ਕਿਉਂ ਗਲਤ ਛਤਰੀ ਦਿਖਾਈ ਗਈ ਔਰ ਜੇ ਗੱਲ ਕਹੀ ਤਾਂ ਪੂਰੀ ਕਿਉਂ ਨਹੀਂ ਹੋਈ ਕਿਉਂਕਿ ਇੱਥੇ ਗੱਲ ਹੋਰ ਤੇ ਉੱਥੇ ਗੱਲ ਹੋਰ ਗੱਲ ਆ ਚੱਲਦੀ ਏ ਪਹਿਲਾਂ ਇੱਕ ਨੂੰ ਖੜਾ ਦੇਣਾ ਫਿਰ ਦੂਜੇ ਧਰਮ ਵਾਲਾ ਕੋਈ ਫੜ ਲੈਣਾ ਉਹਨੂੰ ਖੜਾ ਦੇਣਾ ਪਹਿਲਾਂ ਦੋਨੇ ਲੜਕੋ ਦੋਨਾਂ ਚੋਂ ਨਿਕਲੂ ਫਿਰ ਕੋਈ ਨਾਲ ਆਜ਼ਾਦ ਖੜਾ ਦਾਂਗੇ ਉਹਦੀਆਂ ਵੋਟਾਂ ਲੈ ਜੂ ਫਲਾਣੇ ਨੂੰ ਜਿਤਾ ਦਾਂਗੇ ਸਰੀ ਦੇ ਵਿੱਚ ਪਾਰਟੀ ਤੋਂ ਪਾਰਟੀ ਦੀ ਮਦਦ ਲੋਕਾਂ ਦੇ ਸਾਹਮਣੇ ਆ ਮੈਨੂੰ ਤੂੰ ਫੈਡਰਲ ਮਦਦ ਕਰਦੀ ਮੈਂ ਤੈਨੂੰ ਪਰਵਿੰਸ਼ਲ ਮਦਦ ਕਰੂੰ ਪਾਰਟੀਆਂ ਅਲੱਗ ਇਹ ਲੋਕਾਂ ਨੂੰ ਪਤਾ ਹੈ ਇਹ ਭਾਈਵੰਦੀਆਂ ਜਿਹੜੀਆਂ ਪਈਆਂ ਹੋਈਆਂ ਨੇ ਇੱਥੇ ਮੈਂ ਫਲਾਣੇ ਨੂੰ ਵੋਟ ਪਾਉਂ ਤੂੰ ਮੈਨੂੰ ਉੱਪਰ ਮੈਨੂੰ ਪਾਈ ਜੇ ਨਾ ਹੀ ਕਹਾਣੀ ਜਾਵੇ ਅਖੀਰ 'ਚ ਫਿਰ ਪੈਂਤੜਾ ਹੋਏ ਆਪਾਂ ਮਲਵਈਆਂ ਤੂੰ ਕਮਲਾ ਹੋ ਗਿਆ ਦਵਾਵੀਆਂ ਦੇ ਪਿੱਛੇ ਤੁਰਿਆ ਫਿਰਦਾ ਅਖੀਰ 'ਚ ਫਿਰ ਆ ਸੱਟਣਾ ਡੋਲ ਲਿਆ ਕੇ। ਇੱਥੇ ਫਿਰ ਜਿਹੜੇ ਆਥ ਨੇ ਵਿਚਾਰੇ ਕੰਮਾਂ ਤੋਂ ਆਏ ਹੁੰਦੇ ਆ ਉਹ ਇਕੱਠੇ ਹੋ ਜਾਂਦੇ ਸਾਧ ਦੀ ਢੇਰੀ ਤੇ ਇਕੱਠ ਹੁੰਦਾ ਉਹ ਕਹਿੰਦਾ ਹਾਂ ਅਸੀਂ ਮਲਵਈਆਂ ਅਸੀਂ ਮਲਵਈ ਦੇ ਨਾਲ ਖੜਨ। ਤੋ ਆ ਵੀ ਇਹਨੂੰ ਅਸੀਂ ਨੇੜੇ ਨਹੀਂ ਹੋਣ ਦਿੰਦੇ ਫਿਰ ਅਖੀਰਲਾ ਜਿਹੜਾ ਦਾ ਪੇਚ ਆ ਸ਼ਾਮਸ ਜਿਹੜਾ ਦੰਡ ਭੇਵ ਆਫ ਪਰ ਐ ਨਹੀਂ ਦੇਖਣਾ ਕਿ ਜਿਹੜੀ ਕਮਿਊਨਿਟੀ ਦੇ ਵਿੱਚੋਂ ਮੇਰਾ ਸਾਰਾ ਕੁਝ ਬਣਿਆ ਜਾ ਮੈਂ ਜਿਹਦੇ ਤੋਂ ਬਣੀ ਆ ਉਹਨੂੰ ਮੈਂ ਖਾ ਰਹੀ ਆ ਜਾਂ ਖਾ ਰਿਹਾ ਇੱਕ ਦਿਨ ਅੰਤ ਆ ਜਾਣਾ ਕਮਿਊਨਿਟੀ ਨੇ ਨਾਲ ਨਹੀਂ ਖੜਨਾ ਔਰ ਇਹ ਜਿਹ ਪ੍ਰੈਜ਼ੀਡੈਂਟ ਅਸੀਂ ਸੈੱਟ ਕਰ ਰਹੇ ਆ ਸਾਡਾ ਅੱਗੇ ਵੀ ਕੱਖਨ ਕਿਵੇਂ 3-4 MP 100 ਬੰਦਾ ਲੈ ਗਏ ਬ੍ਰੈਂਟਨ ਦੇ ਵਿੱਚੋਂ 70-80 ਬੱਚੇ ਲੈ ਗਏ ਉਹ ਕਿਵੇਂ ਲੈ ਗਏ ਤੇ ਇੱਥੋਂ ਕਿਉਂ ਨਹੀਂ ਜਾ ਰਿਹਾ ਸਿਰਫ ਤੇ ਸਿਰਫ ਡਰ ਜਿਹੜੇ ਖੰਭ ਆ ਨਾ ਉਹ ਖੰਬੇ ਰਹਿੰਦੇ ਜਲਦ ਲੱਗੇ ਵੀ ਖੰਭ ਮੇਰਾ ਸਰੀਰ ਬਣ ਜਾਣਗੇ ਇਹ ਨਹੀਂ ਪੋਸੀਬਲ ਜੇ ਮੈਨੂੰ ਕੋਈ ਵੋਟ ਪਾ ਰਿਹਾ ਮੈਂ MP MLA ਬਣਨਾ ਮੈਂ ਹੀ ਇਹ ਮੈਲੇ ਬਣ ਮੈਂ ਹੀ MP ਬਣਨਾ ਪਿਛਲੇ ਪਿੱਛੇ ਰਹਿ ਜਾਣੇ ਨੇ ਜਹਾਜ਼ ਚੜ ਜਾਣਾ ਬੰਦੇ ਧਰਤੀ ਤੇ ਇੱਥੇ ਹੀ ਰਹਿ ਜਾਣੇ ਨੇ ਉਹਨਾਂ ਚੋਂ ਫੇਰ ਚੁਣ ਲੈਣੇ ਨੇ ਪੰਜ ਚਾਰ ਬਈ ਆ ਇਹਦੇ ਕਹੇ ਆ ਇਹਦੇ ਕਹੇ ਆ ਉਹ ਇੱਥੋਂ ਆ ਕਰਾਂਗੇ ਇੱਥੋਂ ਆ ਕਰਾਂਗੇ ਔਰ ਮੰਨਣਾ ਨਹੀਂ ਜਗ ਜਹਰ ਨੇ ਹੁਣ ਸਾਡਾ ਕੀ ਬਣ ਰਿਹਾ ਇਸਤਰੀਆਂ ਆਪਣੇ ਧਰਮ ਦੇ ਆਪਣੇ ਸੱਭਿਆਚਾਰ ਆਪਣੀ ਬੋਲੀ ਦੀਆਂ ਇਸਤਰੀਆਂ ਨੂੰ ਪਿਛੇ ਧੱਕ ਕੇ ਅ ਨਗ ਤੇ ਫੈਨਸੀ ਡਰੈਸ ਜਦ ਪਹਿਣੀ ਆ ਉਹਨਾਂ ਦੇ ਮੂਹਰੇ ਅਸੀਂ ਹੱਥ ਜੋੜ-ਜੋੜ ਸਲਾਮਾ ਕਰਦੇ ਆ ਧਿਰਗ ਨਹੀਂ ਹੈ ਸ਼ਰਮ ਨਹੀਂ ਸਾਨੂੰ ਆਉਂਦੀ ਕਿ ਅਸੀਂ ਆਪਣੇ ਆਪ ਕਰੇ ਇਹ ਸਰਕਾਰ ਦੇ ਰੇ ਭਾਈਆਂ ਨੂੰ ਆਪਣੀਆਂ ਭੈਣਾਂ ਨੂੰ ਤੇ ਅਸੀਂ ਤੁਰੇ ਫਿਰਦੇ ਹਾਂ ਢਮਰੂ ਵਜਾਉਂਦੇ ਲੋਕਾਂ ਮਗਰ ਔਰ ਲੋਕਾਂ ਨੂੰ ਇਹ ਖਣਾ ਸਾਡੀ ਪਕੜ ਬਹੁਤ ਹੈ ਆ ਸਰਕਾਰ ਚ ਵੀ ਇੱਥੇ ਵੀ ਉੱਥੇ ਵੀ ਜੇ ਪਕੜਾ ਫਿਰ ਕਰਕੇ ਦਿਖਾਓ ਮੰਜੇ ਨਾ ਕੂਕਿਆਂ ਦੇ ਡੋਲ ਲੰਗੂ ਨਾਲੇ ਪੁਜੋਤ ਗਾ ਨਾਲੇ ਜਜਮਾਨ ਗਾ ਹਰਪ੍ਰੀਤ ਸਿੰਘ ਜੀ ਲਾਈਨ ਨੰਬਰ 4 ਬਫਾਰਕਸ ਨੇਸ਼ ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਹਰ ਰੋਜ਼ ਹਫ਼ਤੇ 'ਚ 2-3 ਦਿਨ ਆਪਾਂ ਇਹ ਗੱਲਾਂ ਕਰਦੇ ਆਂ ਕਿ ਭਾਈ ਚਾਰੇ ਨੂੰ ਸੰਗਠਿਤ ਹੋਣਾ ਚਾਹੀਦਾ ਤੇ ਆਪਣਾ ਸਤਕਾਰ ਬਹਾਲ ਕਰਾਉਣਾ ਚਾਹੀਦਾ। ਇਓ ਨਾ ਹੋਵੇ ਕਿ ਬਲੀ ਦੇਣ ਵਾਲੇ ਕੁੱਕੜ ਵਾਂਗੂ ਬਲੀ ਦੇਣ ਵਾਲੇ ਬੱਕਰੇ ਵਾਂਗੂ 2 ਦਿਨ ਤਾਂ ਛੋਲੇ 4 ਦਿਨ 3 ਦਿਨ ਸਾਡੀ ਕੋਈ ਧੌਣ ਵੱਢ ਕੇ ਲੈ ਜਾਵੇ। ਇਹੀ ਕਾਰਨ ਹੈ ਕਿ ਅਸੀਂ ਇੱਕ ਦੂਜੇ ਤੋਂ ਉੱਪਰ ਫੜ ਕੇ ਕੋਈ ਇੱਧਰ ਦੀ ਲੰਘਿਆ ਕੋਈ ਉੱਧਰ ਦੀ ਲੰਘਿਆ ਜਦ ਉੱਪਰਲੀਆ ਸਫਾਂ ਦੇ ਵਿੱਚ ਜਾ ਕੇ ਸਾਡੇ ਕਲੇਸ਼ ਦਾ ਪਤਾ ਲੱਗਦਾ एक तो ਵੱਧ ਦਾਅਵਿਆਂ ਦਾ ਪਤਾ ਲੱਗਦਾ ਉੱਥੇ ਗੜਬੜ ਹੁੰਦੀ ਹੈ ਕਿਤੇ ਇਹਨਾਂ ਮੇਨਸਟ੍ਰੀਮ ਦੇ ਬੰਦੇ ਇੱਕ ਸੀਟ ਤੇ ਕਿਤੇ ਇਹ ਮਲਟੀਪਲ ਨਹੀਂ ਲੜਦੇ ਇਹ ਵੀ ਲੜਦੇ ਪਰ ਇਹ ਫੇਰ ਵੀ ਇੱਕ ਦੂਜੇ ਦੇ ਬਰਾਏ ਬਿਰਦੇ ਆ ਔਰ ਇੱਕ ਰਾਜਨੀਤਿਕ ਪੈੰਤੜੇ ਦੇ ਵਿੱਚ ਕਦੇ ਵੀ ਆਪਣੇ ਆਪ ਆਪਣੇ ਹਿੱਤ ਦੇ ਵਿੱਚ ਔਰ ਜਿਹੜੀ ਤੁਹਾਡਾ ਸੋਰਸ ਹੈ ਮੈਂ ਪਹਿਲਾਂ ਵੀ ਕਿਹਾ ਜਿਹੜੇ ਘੋੜੇ ਤੇ ਪੈਸੇ ਲਾਉਣ ਨੇ ਉਹ ਘੋੜਾ ਭੱਜਣ ਵਾਲਾ ਹੋਵੇ ਬੈਠਣ ਵਾਲੇ ਤੇ ਜਾਂ ਜਿਹਦੇ ਪੰਜਾਲੀ ਪਾਈ ਉਹਨੇ ਗੋਡਣੀ ਲਾਤੀ ਉਹ ਜਿਹੜੇ ਸਿੰਘ ਚੋਪੜੇ ਹੋਏ ਨੇ ਉਹਨਾਂ ਤੇ ਨਾ ਕਰੋ ਬਰਾਦਰ ਆਪ ਸਿੱਧੇ ਜਾ ਕੇ ਮਿਲੋ ਕਿ ਮੈਂ ਫਲਾਣਾ ਮੈਂ ਆ ਮਦਦ ਕਰਨਾ ਤੁਹਾਡੀ ਪਾਰਟੀ ਦੀ ਤੇ ਮੈਨੂੰ ਇਹ ਚਾਹੀਦਾ ਤੇ ਮੋਸਤਾ ਹੁੰਦੀ ਹੈ ਅੱਜ ਸੁਮੇਰਾ ਕੱਲ ਇੱਕ ਦੂਜੇ ਨੂੰ ਮਿਹਣੇ ਗੱਲਾਂ ਟੈਕਸਟ ਆ ਹੋ ਗਿਆ ਉਹ ਹੋ ਗਿਆ ਕੈਨੇਡਾ ਦੇ ਪ੍ਰਧਾਨ मंत्री ਜਸਟਨ ਟੂਡੋ ਇਸ ਹਫਤੇ BC ਫੇਰੀ ਤੇ ਆ ਰਹੇ ਨੇ ਪ੍ਰਧਾਨ ਮੰਤਰੀ ਜਸਟਨ ਟੂਡੋ ਵੱਲੋਂ BC ਵਿੱਚ ਫੈਲੇ ਨਸ਼ਾ ਦੇ ਸੰਕਟ ਦਾ ਜਾਇਜ਼ਾ ਲੈਣ ਲਈ ਇਹ ਵਿਸ਼ੇਸ਼ ਫੇਰੀ ਪਾਈ ਜਾਏਗੀ ਉਹ ਵਿਕਟੋਰੀਆ ਅਤੇ ਡਾਊਨਟਾਊਨ ਵੈਨਕੂਵਰ ਪਹੁੰਚ ਵੈਨਕੂਵਰ ਵਿਖੇ ਪੁਲਿਸ ਦੀ ਹਾਜ਼ਰੀ ਵਿੱਚ ਗੀੜਾ ਕੱਢਣਗੇ ਦਾ ਸੰਜੋਗ ਹੈ ਕਿ BC ਵਿੱਚ ਨਸ਼ਿਆਂ ਦਾ ਸੰਕਟ ਗਹਿਰਾਇਆ ਹੋਇਆ ਹੈ ਪਿਛਲੇ ਸਾਲ ਨਸ਼ਿਆਂ ਦਾ ਵਧੇਰੇ ਮਾਤਰਾ ਵਿੱਚ ਸੇਵਨ ਕਰਨ ਨਾਲ 900 ਤੋਂ ਵਧੇਰੇ ਮੌਤਾਂ ਹੋਈਆਂ ਨੇ ਸਰੀ ਦੇ ਰਹਿਣ ਵਾਲੇ ਪੰਜਾਬੀ ਵਿਕਰਮ ਬਾਜਵਾਨ ਨੇ BC ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੈ ਉਹਨਾਂ BC ਪੀਪਲਜ਼ ਪਾਰਟੀ ਬਣਾਈ ਹੈ ਜੋ ਇਮੀਗ੍ਰੈਂਟ ਬਹੁ ਗਿਣਤੀ ਵਾਲੇ 18 ਹਲਕਿਆਂ ਤੋਂ ਆਪਣੇ ਉਮੀਦਵਾਰ ਖੜੇ ਕਰੇਗੀ ਵਿਕਰਮ ਬਾਜਵਾ ਨੇ ਕਿਹਾ ਕਿ ਚੋਣਾਂ ਵਿੱਚ ਖੜੇ ਹੋਣ ਵਾਲੇ ਉਮੀਦਵਾਰਾਂ ਨੂੰ ਪਾਰਟੀ ਵੱਲੋਂ ਕੋਈ ਵਿੱਤੀ ਮਦਦ ਨਹੀਂ ਦਿੱਤੀ ਜਾਏਗੀ ਉਮੀਦਵਾਰਾਂ ਨੂੰ ਚੋਣ ਲੜਨ ਲਈ ਆਪਣੇ ਪੱਲੇੋਂ ਖਰਚਾ ਕਰਨਾ ਪਏਗਾ ਉਹਨਾਂ ਇਲਜ਼ਾਮ ਲਗਾਇਆ ਕਿ ਬੀਸੀ ਮੁੱਖ ਰਵਾਇਤੀ ਪਾਰਟੀਆਂ ਇਮੀਗ੍ਰੈਂਟਾਂ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਅਸਫਲ ਰਹੀਆਂ ਨੇ ਉਹਨਾਂ ਖੁਦ ਸਰੀ ਗ੍ਰੀਨ ਟਿੰਬਰਜ਼ ਹਲਕੇ ਤੋਂ ਚੋਣ ਲੜਨ ਦਾ ਵੀ ਐਲਾਨ ਕੀਤਾ ਹੈ ਕੈਨੇਡਾ ਵਿੱਚ ਭੋਲੇ-ਪਾਲੇ ਲੋਕਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਲੱਖਾਂ ਡਾਲਰਾਂ ਦੀ ਠੱਗੀ ਮਾਰੀ ਗਈ ਹੈ ਪਿਛਲੇ ਸਾਲ ਵਾਪਰੀ ਪ੍ਰਮੁੱਖ ਘਟਾਲਿਆਂ ਦਾ ਜ਼ਿਕਰ ਕਰਦੇ ਹਾਂ ਬੈਟਰ ਬਿਜ਼ਨਸ ਬਿਊਰੋ ਨੇ ਕਿਹਾ ਕਿ ਸਭ ਤੋਂ ਵੱਧ ਮਾਰ ਉਹਨਾਂ ਲੋਕਾਂ ਨੂੰ ਪਈ ਹੈ ਜਿਹੜੇ ਨੌਕਰੀ ਦੀ ਝਾਕ ਵਿੱਚ ਠੱਗੇ ਗਏ ਇਸ ਤੋਂ ਇਲਾਵਾ ਡੇਟਿੰਗ ਨਾਲ ਜੁੜੇ ਕੱਪਲਾਂ ਵਿੱਚ ਵੀ ਕੈਨੇਡੀਅਨਜ਼ ਨੂੰ ਤਕਰੀਬਨ 17 ਮਿਲੀਅਨ ਡਾਲਰ ਦਾ ਚੂਨਾ ਲੱਗਿਆ ਨੌਕਰੀ ਦੇਣ ਦਾ ਲਾਲਾ ਲਾ ਕੇ ਲੋਕਾਂ ਤੋਂ ਬੈਂਕ ਸਬੰਧੀ ਜਾਣਕਾਰੀ ਹਾਸਲ ਕਰ ਲਈ ਗਈ ਅਜਿਹੇ ਲੋਕਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨਾਲ ਠੱਗੀ ਵੱਜ ਗਈ कनेडियन एंटी फ्रॉड सेंटर ਨੂੰ ठगी वजन ਦੇ ਸੈਂਕੜੇ मामले ਰਿਪੋਰਟ ਕੀਤੇ गए ने शनाखत ਸਬੰਧੀ ਧੋਖਾਧੜੀ ਦੇ ਮਾਮਲਿਆਂ ਵਿੱਚ ਵੀ 11 मिलियन डालर ਦੀ ठगी ਵਜੀ है ਧੋਖੇਬਾਜ਼ਾਂ ਵੱਲੋਂ ਕਨੇਡਾ ਰੈਵਨਿਊ ਏਜੰਸੀ ਦੇ ਜਾਲੀ ਅਧਿਕਾਰੀ ਬਣ ਕੇ ਵੀ ਲੋਕਾਂ ਨਾਲ ਠੱਗੀ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 ਉਦਰ ਪ੍ਰਵਾਸ ਪ੍ਰਣਾਲੀ ਬਾਰੇ ਅਮਰੀਕੀ ਰਾਸ਼ਟਰਪਤੀ 트੍ਰੰਪ ਦੇ ਰੁਖ ਵਿੱਚ ਥੋੜੀ ਨਰਮੀ ਦਿਖਾਈ ਦਿੱਤੀ ਹੈ ਡੋਨਲਡ 트੍ਰੰਪ ਨੇ ਮੈਟ ਆਧਾਰਿਤ ਪ੍ਰਵਾਸ ਪ੍ਰਣਾਲੀ ਅਪਣਾਉਣ ਦਾ ਸੱਦਾ ਦਿੱਤਾ ਕਾਂਗਰਸ ਦੇ ਸੰਜੇ ਕਿਹਾ ਕਿ ਮੈਟ ਆਧਾਰਿਤ ਪ੍ਰਵਾਸ ਪ੍ਰਣਾਲੀ ਅਪਣਾਈ ਜਾਏਗੀ ਇਸ ਨਾਲ ਅਣਗਿਣਤ ਡਾਲਰ ਬਚਣਗੇ ਕਾਮਿਆਂ ਦੀਆਂ ਤਨਖਾਹਾਂ ਵਧਣਗੀਆਂ ਅਤੇ ਜੱਦੋਜहद ਕਰ ਰਹੇ ਮੱਧ ਵਰਗੀ ਪ੍ਰਵਾਸੀ ਪਰਿਵਾਰਾਂ ਨੂੰ ਲਾਭ ਮਿਲੇਗਾ 70 ਸਾਲਾ 트੍ਰੰਪ ਨੇ ਕਿਹਾ ਕਿ ਲੱਖਾਂ ਨੌਕਰੀਆਂ ਵਾਪਸ ਲਿਆ ਰਹੇ ਨੇ ਉਹਨਾਂ ਕਿਹਾ ਕਿ ਜਦੋਂ ਤੱਕ ਦੇਸ਼ ਦੀ ਸੁਰੱਖਿਆ ਤੇ ਕਾਨੂੰਨਾਂ ਦਾ ਸਤਕਾਰ ਬਹਾਲ ਨਹੀਂ ਹੁੰਦਾ ਸਾਡਾ ਧਿਆਨ ਅਮਰੀਕੀਆਂ ਲਈ ਨੌਕਰੀਆਂ ਤੇ ਉਜਰਤਾਂ ਵਿੱਚ ਸੁਧਾਰ ਕਰਨ ਤੇ ਕੇਂਦਰਿਤ ਰਹੇਗਾ ਪ੍ਰੰਪਰੇ ਰਿਪਬਲਿਕਨਾਂ ਦੇ ਕਬਜ਼ੇ ਵਾਲੀ ਕਾਂਗਰਸ ਨੂੰ ਸਿਹਤ ਸੰਭਾਲ ਸਕੀਮ ਓਬਾਮਾ ਕੇਅਰ ਖਤਮ ਕਰਨ ਦਾ ਸੱਦਾ ਦਿੱਤਾ ਹੈ ਉਹਨਾਂ ਕਿਹਾ ਕਿ ਸਰਕਾਰ ਤੋਂ ਮੰਨਤਾ ਪ੍ਰਾਪਤ ਸਿਹਤ ਬੀਮਾ ਖਰੀਦਣਾ ਅਮਰੀਕੀਆਂ ਲਈ ਕਦੇ ਵੀ ਸਹੀ ਹੱਲ ਨਹੀਂ ਸੀ ਕੈਂਸਸ ਕੌਂਡ ਬਾਰੇ ਚੁੱਪੀ ਤੋੜਦਿਆਂ ਅਮਰੀਕੀ ਸਦਰ ਨੇ ਕਿਹਾ ਕਿ ਪਿਛਲੇ ਹਫਤੇ ਕੈਂਸਸ ਸਿਟੀ ਵਿੱਚ ਹੋਈ ਗੋਲੀਬਾਰੀ ਸਾਨੂੰ ਇਸ ਗੱਲ ਦਾ ਚੇਤਾਵਨੀ ਕਰਾਉਂਦੀ ਹੈ ਕਿ ਭਾਵੇਂ ਅਸੀਂ ਨਿੱਕੀਆਂ ਪੱਖੋਂ ਇੱਕ ਵੰਡਿਆ ਹੋਇਆ ਮੁਲਕ ਹਾਂ ਪਰੰਤੂ ਬੁਰਾਈ ਤੇ ਨਫ਼ਰਤ ਦੇ ਸਾਰੇ ਰੂਪਾਂ ਦੀ ਨਿਖੇਦੀ ਪੱਖੋਂ ਮੁਲਕ ਦਾ ਰੁਖ ਸਾਂਝਾ ਹੈ ਚਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹਰਚਰਨ ਸਿੰਘ ਨੇ ਸਵੈ ਇੱਛਾ ਨਾਲ ਆਪਣੀ ਤਨਖਾਹ 3 ਲੱਖ ਰੁਪਏ ਪ੍ਰਤੀ ਮਹੀਨਾ ਵਿੱਚੋਂ 2 ਲੱਖ ਰੁਪਏ ਗੁਰੂ ਘਰ ਲਈ ਛੱਡ ਦਿੱਤੇ ਨੇ ਉਹਨਾਂ ਹੁਣ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਣ ਦਾ ਫੈਸਲਾ ਕੀਤਾ ਫੈਸਲਾ ਇਸ ਵਾਰ ਦੇ ਜਨਵਰੀ ਮਹੀਨੇ ਤੋਂ ਲਾਗੂ ਹੋਏਗਾ ਉਹਨਾਂ ਨੂੰ 3 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਪੈਕੇਜ ਤਿਆ ਕੀਤਾ ਗਿਆ ਸੀ ਉਹਨਾਂ ਦੀ ਤਨਖਾਹ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਸੀ ਅਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਮਾਮਲਾ ਅਦਾਲਤ ਵਿੱਚ ਲਿਆਂਦਾ ਗਿਆ ਸੀ ਹੁਣ 72 ਸਾਲਾ ਚੀਫ ਸੈਕਟਰੀ ਹਰਚਰਨ ਸਿੰਘ ਨੇ ਆਪਣੀ ਕੁੱਲ ਤਨਖਾਹ ਵਿੱਚੋਂ 65% ਤਨਖਾਹ ਛੱਡ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਮਾਮਲੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਸੁਣਦੇ ਰਹੋ ਰੇਡੀਓ ਕੇ ਆਰ ਪੀ ਆਈ 1550 ਏ ਐਮ ਮੈਂ ਹਾਂ ਗੁਰਬਾਜ ਸਿੰਘ ਬਰਾੜ। ਸਰੀਵਤ ਜਸਮਿਲੇ ਤਾਪਮਨ 9 ਡਿਗਰੀ ਸੈਲਸੀਅਸ ਤੇ ਪਹੁੰਚਿਆ ਹੋਇਆ ਤੇ ਘੱਟ ਤੋਂ ਘੱਟ 3 ਡਿਗਰੀ ਸੈਲਸੀਅਸ ਦੇ ਹੈ ਸੂਰਜ ਅੱਜ ਸਵੇਰੇ 6:53 ਮਿੰਟ ਤੇ ਚੜ੍ਹਿਆ ਹੈ ਅਤੇ ਸ਼ਾਮ ਨੂੰ ਮਿੰਟ ਤੇ ਛਿਪੇਗਾ ਅੱਜ ਸ਼ਾਮ ਨੂੰ ਵਰਖਾ ਹੋਣੀ ਸ਼ੁਰੂ ਹੋ ਜਾਏਗੀ ਅਤੇ ਰਾਤ ਪਰ ਵਰਖਾ ਹੁੰਦੀ ਰਹੇਗੀ ਆਉਣ ਵਾਲੇ ਕੱਲ ਵੀ ਵਰਖਾ ਹੋਏਗੀ ਇੱਕ ਹੋਰ ਇਹਦੇ ਐਡ ਕਰਦੇ ਰਾਜਨੀਤਿਕ ਜਿਹੜੀ ਗੱਲ ਚੱਲ ਰਹੀ ਹੈ ਇਸ ਗੱਲ ਦਾ ਖਿਆਲ ਰੱਖੋ ਕਈ ਵਾਰ ਪਾਰਟੀਆਂ ਕਿਸੇ ਟਿਕੇ ਹੋਏ ਵਧੀਆ ਇਨਸਾਨ ਦੇ ਬਾਰੇ ਗੱਲ ਕਰਕੇ ਵੀ ਤੁਸੀਂ ਆਜੋ ਅੱਗੇ ਜੇ ਤੁਹਾਨੂੰ ਪਤਾ ਹੈ ਵੀ ਤੁਸੀਂ ਗਰਾਊਂਡ ਵਰਕ ਨਹੀਂ ਕੀਤਾ ਕੋਈ ਵਰਿਆਂ ਵੱਧੀ ਕੰਮ ਕਰ ਰਿਹਾ ਤੇ ਤੁਹਾਨੂੰ ਪਾਰਟੀ ਹੁਣ ਤਿਆਰੀ ਕਰ ਰਹੀ ਹੈ ਵੀ ਤੁਸੀਂ ਵੀ ਰੇਸ 'ਚ ਭੱਜੋ ਕਦੇ ਨਾ ਤੁਰੋ ਨਾ ਕਹੋ ਵੀ ਚੰਗਾ ਜੇ ਮੈਨੂੰ ਕੰਸੀਡਰ ਕਰਦੇ ਹੋ ਤਾਂ ਮੈਨੂੰ ਡਿਕਲੇਅਰ ਕਰੋ ਵੀ ਮੈਂ ਤੁਹਾਡਾ ਕੈਂਡੀਡੇਟ ਹਾਂ ਬਸ ਇਦੋਂ ਅੱਗੇ ਤੁਰੋ ਹੀ ਨਾ ਤੇ ਉਸ ਸਮੇਂ ਕਹਿੰਨਗੇ ਨਹੀਂ ਇਹ ਤਾਂ ਪ੍ਰੋਟੋਕਾਲ ਨਹੀਂ ਹੈ ਨਾਮਿਨੇਸ਼ਨ ਲੜਨੀ ਪਣੀ ਹੈ ਤੇ ਫਿਰ ਹੁਣ ਨਾਮਿਨੇਸ਼ਨ ਤੋਂ ਬਿਨਾ ਕਿਸ ਤਰ੍ਹਾਂ ਸਿਰ ਤੇ ਲਿਆ ਕੇ ਬਿਠਾ ਦਿੱਤਾ ਕੈਂਡੀਡੇਟ ਕਈ ਵਾਰ ਨਿੱਜ ਤੌਰ ਤੇ ਆਪਣੇ ਆਪ ਨੂੰ ਹੀ ਲੱਗਣ ਲੱਗ ਜਾਂਦਾ ਵੀ ਮੈਂ ਬਹੁਤ ਫਿੱਟ ਹਾਂ ਕਿਸੇ ਕੰਮ ਲਈ ਪਰ ਇਹ ਨਹੀਂ ਗੱਲ ਹੁੰਦੀ ਵਧੀਆ ਤੁਰਨਾ ਫਿਰਨਾ ਵਧੀਆ ਲਿਖਣਾ ਵਧੀਆ ਬੋਲਣਾ ਵਧੀਆ ਸਲੀਕੇ ਨਾਲ ਰਹਿਣਾ ਜਾਂ ਵਧੀਆ ਆਦਤਾਂ ਦਾ ਮਤਲਬ ਇਹ ਨਹੀਂ ਅਸੀਂ ਹਰ ਜਗ੍ਹਾ ਫਿੱਟ ਹੋ ਸਕਦੇ ਹਾਂ ਲੋਕ ਰਾਜਨੀਤੀ ਜਿਹੜੀ ਐ ਬਲੱਡ ਗੇਮ ਐ ਇਹ ਬਹੁਤ ਇੱਥੇ ਕੋਈ ਕਿਸੇ ਦਾ ਨਹੀਂ ਇੱਥੇ ਤਾਂ ਚਾਕ ਲਾ ਦਿੰਦੇ ਆ ਵੜ ਦਿੰਦੇ ਆ ਜਿਹਦਾ ਮੂਹ ਜਿਹੜਾ ਮੂਰੇ ਆ ਗਿਆ ਔਰ ਖਾਸ ਤੌਰ ਤੇ ਜਿਹੜੀ ਜਿਹੜੇ ਦਰਖਤ ਤੇ ਜਿਹੜੀ ਟਾਣੀ ਤੇ ਬਹਿ ਕੇ ਅਸੀਂ ਖਾਣੇ ਆ ਜਿਹਦੇ ਮਿੱਠੇ ਬੇਰ ਖਾਣੇ ਉਹ ਦਰਖਤ ਨੂੰ ਵੀ ਵੜ ਦਿੰਦੇ ਆ ਅਸੀਂ ਕਿਨਾ ਨਾ ਕਿਤੇ ਇਹ ਤਾਂ ਬਹੁਤ ਫੈਲਰ ਦਾ ਜਾਂਦਾ ਇਹਦੀਆਂ ਟਾਹਣੀਆਂ ਵੜਦੇ ਹੋ ਖਿਆਲ ਰੱਖਿਆ ਕਰੋ ਕਈ ਵਾਰ ਅਸੀਂ ਭਰਮ ਪਾਲ ਬੈਨੇ ਆ ਭਰਮ ਪਾਲਣ ਤੋਂ ਬਾਅਦ ਫਿਰ ਹਰਟ ਹੁੰਨੇ ਆ ਦੂਸਰੀ ਗੱਲ ਇਸ ਦਿਨੀ ਜਸ਼ਨਪ੍ਰੀਤ ਸਿੰਘ ਨੌ ਦੇ ਮੁੰਡੇ ਦੀ ਜਿਹਦੀ ਮੌਤ ਸਟੂਡੈਂਟ ਸੀ ਅਟਗੜ ਸਾਹਿਬ ਦੇ ਏਰੀਆ ਦਾ ਗਹਿਣੇ ਰੱਖ ਕੇ ਮਾਂ ਨੇ ਭੇਜਿਆ ਤੇ ਪਿਤਾ ਦੀ ਵੀ ਡੈਥ ਹੋ ਗਈ ਸੀ ਉਹਦੇ ਬਾਰੇ ਡਾਲਰ ਪੈਸੇ ਇਕੱਠੇ ਤੁਸੀਂ ਫੰਡ ਔਨ ਮੀ ਜਾਂ ਕੁਝ ਕੋਈ ਇੱਕ ਵੈਬਸਾਈਟ ਜਿਹਦੇ ਤੇ ਬਹੁਤ ਪੈਸੇ 40-45 ਹਜ਼ਾਰ ਇਕੱਠਾ ਹੋ ਗਿਆ ਲੋਕਲ ਉਸਦੇ ਮੁੰਡੇ ਦੋਸਤ ਹਨ ਖੁਸ਼ ਹੁਣੀ ਉਹਨਾਂ ਨੇ ਪੈਸੇ ਇਕੱਠੇ ਕੀਤੇ ਪਰ ਇਹਦੇ ਵਿੱਚ ਕੱਲ ਮੈਨੂੰ ਸ਼ਾਮ ਨੂੰ ਹੀ ਪਤਾ ਲੱਗਿਆ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਕਹਿੰਦੇ ਸਾਡੇ ਲੋਕਲ ਸਾਡੀ ਜਿਹੜੀ ਅੰਬੈਸੀ ਵੈਨਕੂਵਰ ਬੋਡੀ ਭੇਜਣ ਲਈ ਕੰਮ ਕੀਤਾ ਖਾਸ ਤੌਰ ਤੇ ਸਰ ਅਮਰਜੀਤ ਸਿੰਘ ਉਹਨਾਂ ਦੇ ਉਹ ਪਰਿਵਾਰ ਨੇ ਕੱਲ ਦੱਸਿਆ ਕਿ ਸਾਰਾ 9900 ਡਾਲਰ ਦਾ ਪਹਿਲਾਂ ਆਪਣੇ ਮੁੰਡੇ ਡਰਾਫਟ ਬਣਾ ਕੇ ਲੈ ਗਏ ਸੀ ਮੇਰੇ ਕੋਲ ਉਹਦੀ ਕਾਪੀ ਹੈ ਖੁਸ਼ ਹੁਣੀ ਈਡੀ ਕੈਨੇਡਾ ਟਰਸਟ ਦਾ ਡਰਾਫਟ ਸੀ ਪਰ ਕੌਂਸਲਰ ਜਨਰਲ ਜਿਹੜਾ ਹੈ ਕੌਂਸਲਰ ਜਨਰਲ ਜਿਹੜਾ ਕੌਂਸਲ ਖਾਨਾ ਸਾਡਾ ਭਾਰਤੀ ਕੌਂਸਲ ਖਾਨਾ ਵੈਨਕੂਵਰ ਦਾ ਉਸਨੇ ਸਾਰੀ ਜ਼ਿੰਮੇਵਾਰੀ ਇਸ ਲਈ ਤੇ ਆਪ ਖਰਚਾ ਕੀਤਾ ਤੇ ਪਰਿਵਾਰ ਨੂੰ ਸਾਰਾ ਐਵਰੇਜ ਮੇਰੇ ਲਾਦਾ 50000 ਡਾਲਰ ਦੇ ਕਰੀਬ ਵਧੀਆ ਪਰਿਵਾਰ ਦੇ ਲੜਕੇ ਦੀ ਮਾਮੀ ਮਾਮਾ ਜੀ ਇੱਥੇ ਆਏ ਸੀ ਉਹਨਾਂ ਦੇ ਰਾਹੀਂ ਉਹ ਪਹੁੰਚਦਾ ਜਿਹੜੇ ਨੇ ਡਾਲਰ ਨੇ ਉਹ ਕਰ ਦਿੱਤੇ ਜਾਣਗੇ ਤੇ ਕਰ ਦਿੱਤੇ ਗਏ ਹੋਣਗੇ ਤਾਂ ਉਹਦਾ ਐਗਜ਼ੈਕਟ ਅਮਾਉਂਟ ਵੀ ਮੈਂ ਤੁਹਾਨੂੰ ਦੱਸਾਂਗਾ ਇਹ ਸਾਰੇ ਮੀਡੀਆ ਆਊਟਲੈਟਸ ਤੇ ਇਸ ਬੱਚੇ ਦੀ ਗੱਲ ਹੋਈ ਸੀ ਪਰ ਬਹੁਤ ਜ਼ਿਆਦਾ ਵਧੀਆ ਹੈ ਉਸ ਦਿਨ ਗੱਲ ਚੱਲੀ ਸੀ ਪਰ ਲਾਸਟ ਮਿੰਟ ਤੇ ਇਹ ਕਲੀਅਰ ਨਹੀਂ ਸੀ ਹੋ ਰਿਹਾ ਪਰਿਵਾਰ ਵੀ ਬਹੁਤ ਜਿਨ੍ਹਾਂ ਨੇ ਆਰਗੇਨਾਈਜ਼ ਉਹ ਬਹੁਤ ਖੁਸ਼ ਨੇ ਕਿ ਅਮਰਜੀਤ ਸਿੰਘ ਉਹਣਾ ਨੇ ਬਹੁਤ ਮਦਦ ਕੀਤੀ। ਪਰ ਇਹਦੇ ਵਿੱਚ ਇੱਕ ਹੋਰ ਜਿਹੜੀ ਇਹ ਐਡ ਕਰ ਲਿਆ ਕਿ ਵਰਿਆਂ ਵਧੀਆਂ ਜਿਨ੍ਹਾਂ ਦੇ ਕੇਸ ਜਿਨ੍ਹਾਂ ਦੇ ਵੀਜ਼ਿਆਂ ਦਾ ਰੌਲਾ ਸੀ ਬੰਦੇ ਬਹੁਤ ਕਿਸੇ ਕਾਰਨ ਕਰਕੇ ਉਹਨਾਂ ਦੇ ਵੀਜ਼ੇ ਰੁਕੇ ਹੋਏ ਸੀ 80 90% ਦੇ ਕਰੀਬ ਲੋਕਾਂ ਤੇ ਲੋਕ ਖੁਸ਼ ਨੇ। ਕੋ ਰਿਫਿਊਜ਼ ਕਲੇਮ ਔਖਾ ਤੋ ਇਹ ਬਹੁਤ ਵਧੀਆ ਇੱਕ ਸ਼ਗਨ ਹੋਇਆ ਜਿਹੜੇ ਜਿਸ ਐਮਬੈਸੀ ਨੂੰ ਡੈਸਪੋਰ ਡੈਸਪੋਰਾ ਭਾਰਤੀਆਂ ਦੀ ਮਦਦ ਦੇ ਲਈ ਰੱਖਿਆ ਗਿਆ ਉਸ ਤੋਂ ਲੋਕਾਂ ਨੂੰ ਡਰ ਲੱਗਣ ਲੱਗ ਗਿਆ ਸੀ ਇਹ ਡਰ ਜਿਹੜਾ ਹੈ ਪਿਛਲੇ ਸਾਲ ਤੋਂ ਸਾਲ ਦੇ ਵਿੱਚ ਚੱਕਿਆ ਤੇ ਅਮਰਜੀਤ ਸਿੰਘ ਉਹਨਾਂ ਨੇ ਇਸ ਤੇ ਕੰਮ ਕਰਕੇ ਵਾਵਾ ਵੀ ਖੱਟੀਆ ਭਾਈਚਾਰੇ ਚ ਉਹਨਾਂ ਦਾ ਸਤਕਾਰ ਵੀ ਇਸ ਗੱਲ ਦਾ ਬਣਿਆ ਔਰ ਚਾਹੀਦਾ ਵੀ ਇਸ ਤਰ੍ਹਾਂ ਤੇ ਇਸ ਬੱਚੇ ਲਈ ਜਿਹੜਾ ਇੱਕ ਮਾਂ ਤੇ ਪੰਜ ਕਿਲੇ ਜ਼ਮੀਨ ਉਹਦੇ ਲਈ ਖਰਚਾ ਜਿਹੜਾ ਕਰਕੇ ਸਾਰਾ ਕੁਝ ਲਫਤਾਨਜ਼ਾ ਦੇ ਰਾਹੀਂ ਉਸਦੀ ਬਾਡੀ ਭੇਜੀ ਸਾਰਾ ਇਸ ਗੱਲ ਦਾ ਜਿਹੜਾ ਜਿੰਮਾ ਜਿਹੜਾ ਉਹ ਕੌਨਸਟੈਂਟ ਜਨਰਲ ਨੇ ਚੱਕਿਆ ਲੋਕਲ ਵੈਨਕੂਵਰ ਦੇ ਨੇ ਇਹ ਅシャਦਰ ਰਜੀਬ ਚੰਦਰ ਜੀ ਨੇ ਮੇਨ ਜਿਹੜੇ ਕੌਂਸਲਰ ਜਨਰਲ ਨੇ ਤੇ ਸਰਾ ਮਰਜੀਤ ਸਿੰਘ ਵੀਜ਼ਾ ਕੌਂਸਲ ਨੇ ਤੇ ਉਹਨਾਂ ਨੇ ਇਸ ਤੇ ਬਹੁਤ ਜ਼ਿਆਦਾ ਮਦਦ ਕੀਤੀ। ਔਰ ਥੈਂਕ ਯੂ ਕਮਿਊਨਿਟੀ ਵੱਲੋਂ ਵੀ ਤੇ ਔਰ ਇਸ ਤਰ੍ਹਾਂ ਜਦ ਸਾਨੂੰ ਕਦੇ ਜ਼ਰੂਰਤ ਪੈਂਦੀ ਆ ਭਾਈਚਾਰੇ ਦੇ ਵਿੱਚ ਮਦਦ ਦੀ ਤਾਂ ਇਸ ਤਰ੍ਹਾਂ ਹੀ ਚਾਹੀਦਾ ਇੱਕ ਦੂਜੇ ਨਾਲ ਭਾਈਚਾਰਾ ਸਟਰੋਂਗ ਹੋ ਕੇ ਹੀ ਰਹਿ ਸਕਦਾ ਮੈਂ ਗੱਲ ਤੇ ਬਹੁਤ ਜ਼ੋਰ ਸਦਾ ਦਿੰਦਾ ਕਿ ਇਕੱਲੇ ਤੁਸੀਂ ਵੱਡੇ ਨਹੀਂ ਹੋ ਸਕਦੇ ਕਲੀ ਮਾਨਕ ਦਾ ਇੱਕ ਗੀਤ ਵਪਾਰਕ ਸੰਦੇਸ਼ ਤੇ ਦਵਿੰਦਰ ਸਿੰਘ ਮਲਹਾਂਸ ਦੀ ਕਹਾਣੀ ਤੁਹਾਡੇ ਸਾਹਮਣੇ ਇੱਕ ਵਜ ਕੇ ਵਾਈਮੈਂਟ ਹੋ ਗਿਆ ਦਵਿੰਦਰ ਸਿੰਘ ਮਲਹਾਸ ਹੁਣੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਜਰਦੀ ਉਮਰ ਦੇ ਵਿੱਚ ਹੀ ਸੌਰੀ ਜਰਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਦੇ ਛੱਡਿਆ ਜਰਮਨ ਜਰਮਨ ਜਰਮਨੀ ਜਰਮਨੀ ਤੋਂ ਬਾਅਦ ਕੈਨੇਡਾ ਜੋ ਉੱਥੇ ਦਾ ਜੀਵਨ ਤੇ ਇੱਥੇ ਦਾ ਜੀਵਨ ਉਹਨਾਂ ਨੇ ਬਹੁਤ ਨੇੜਿਓਂ ਕਹਾਣੀਆਂ 'ਚ ਲਿਖਿਆ ਬੇਗਮ ਤੇ ਗੁਲਾਮ ਤੇ ਗੋਰੀ ਸਕਾਰ ਜੀਤ ਸਿੰਘ ਬਲਹਾਰਾ ਸੁਣੋਂ ਦਾ ਪਿੰਡ ਜਿਹੜਾ ਲੁਧਿਆਣੇ ਦੇ ਵਿੱਚ ਐਲ ਦੇ ਨੇੜੇ ਅਲੂਣਾ ਟੋੜਾ ਅਲੂਣਾ ਟੋੜਾ ਤੇ ਅਲੂਣਾ ਪੱਲਾ ਕਈ ਏ ਨੇੜੇ ਨੇੜੇ ਬਹੁਤ ਮਿੱਗੇ ਸੁਆਦ ਇਹਨਾਂ ਦੇ ਜੀਤ ਸਿੰਘ ਬਲਹਾਰਾ ਸੁਣੀ ਉਹਨਾਂ ਦੀਆਂ ਕਿਤਾਬਾਂ ਕਿਵਾਰੇ 'ਚ ਜਿਆਦਾ ਪੈਂਦੇ ਸੀ ਸ਼ੇਰੇ ਪੰਜਾਬ ਦੇ ਉਹਨਾਂ ਮਾਤਾ ਜੀ ਦੇ ਕੇ ਗਏ ਇਹ ਉਹਦੇ ਵਿੱਚੋਂ ਕਹਾਣੀ ਮੋਚਨਾ ਮੋਚਨੇ ਲੱਗੇ ਨੂੰ ਮੈਨੂੰ ਪਤਨੀ ਤੇ ਖਿੱਚ ਆਉਂਦੀ ਸੀ ਕਿੰਨਾ ਕੂੜਕਬਾਰ ਇਕੱਠਾ ਕੀਤਾ ਤਿੰਨੇ ਬਾਥਰੂਮ ਭਰੇ ਪਏ ਨੇ ਲੈ ਸਾਲ ਦਾ ਸਮਾਨ ਇਕੱਠਾ ਕਰੀ ਬੈਠੀ ਹੈ ਜਦ ਮੈਂ ਆ ਮਗਰੀ ਭਰ ਕੇ ਤੂੜੀ ਵਾਲੀ ਆਂਗੂ ਮੈਂ ਕਹਿੰਦਾ ਤੂੰ ਐਨੇ ਕੀ ਕਰਨੇ ਨੇ ਕਹਿੰਦੀ ਆ ਲੱਗੇ ਹੋਏ ਸੀ ਸਸਤੇ ਸੀ ਮੈਂ ਲੈ ਜਿਵੇਂ ਨਾ ਪਛਾਲ ਦੇ ਵਿੱਚ ਸਮਾਨ ਇਕੱਠਾ ਕਰਨਾ ਇੰਨਾ ਇਕੱਠਾ ਕੀਤਾ 20 ਸਾਲ ਕਰੀਮ ਗੱਲ ਆਏ ਪਏ ਮੋਛਣਾ ਦਾ ਲੱਭੇ ਇੱਥੇ ਬੀਬੀਆਂ ਬਲੱਕਰ ਪਰ ਮੈਨੂੰ ਮੋਛਣਾ ਦਾ ਲੱਭਿਆ ਮੈਂ ਦੁਖੀ ਹੋ ਗਿਆ ਫਿਰ ਮੈਂ ਕਿਹਾ ਪਹਿਲਾਂ-ਪਹਿਲਾਂ ਜਦ ਆ ਕੇ ਫੈਕਟਰੀਆਂ ਧੱਕੇ ਜੇ ਖਾਣੇ ਲੱਗੇ ਮੈਂ ਕਿਹਾ ਯਾਰ ਨਾਈਫ ਦਾ ਕੰਮ ਦਾ ਸਿੱਖ ਲਈਏ ਨਾਈਫ ਬਣੇ ਪੈਸਾ ਬਹੁਤ ਬਣਦਾ ਫਿਰ ਅੰਦਰੋਂ ਜੱਟ ਬੋਲਿਆ ਅੱਛਾ ਦਾੜੀਆਂ ਮੁੰਨਿਆ ਕਰੇਗਾ ਖਤ ਕੱਢਿਆ ਕਰੇਗਾ ਹੁਣ ਲੋਕਾਂ ਦੇ ਧਾਗੇ ਫੇਰਿਆ ਕਰੇਗਾ ਗੱਲਾਂ ਲਾਲ ਕਰਿਆ ਕਰਈਆਂ ਲੋਕਾਂ ਦੀਆਂ ਮੈਂ ਕਿਹਾ ਚੱਲ ਸੰਦ ਆਪਣਾ ਹੀ ਬਣ ਇਹ ਬਣਿਆ ਹੋਇਆ ਵੀ ਘਰ ਵਾਲੀ ਇੰਡੀਆ ਗਈ ਹੋਈ ਸੀ 3.5 ਮਹੀਨੇ ਮੈਂ ਕਿਹਾ ਚੱਲ ਹੁਣ ਸਵਾ ਮਿਲਿਆ ਮਾੜੀ ਦੀ ਛੁੱਟੀ ਦਾ ਲਈਏ ਪਹਿਲਾਂ ਤਾਂ ਕਾਲੇ ਦੇ ਵਿੱਚ ਚਿੱਟਾ-ਚਿੱਟਾ ਕਿਤੇ ਸੀ ਹੁਣ ਚਿੱਟਿਆਂ ਦੇ ਵਿੱਚ ਕਾਲਾ ਕੋਈ ਕੋਈ ਔਰ ਬਸ ਛੁੱਟੀ ਲਾਉਣ ਦੇ ਚੱਕਰ ਦੇ ਵਿੱਚ ਗੱਡੀ ਚੱਕੀ ਤੇ ਮੋਟਨਾ ਲੈ ਕੇ ਜਦ ਬਾਥਰੂਮ ਤੇ ਖੜੇ ਰਹਿ ਕੇ iracialੀ ਗੱਲ ਯਾਦ ਆ ਗਈ ਫੋਨ ਕੋਲ ਰੱਖਣਾ ਖਾਸ ਤੋ ਆਪੇ ਜਦ ਬਾਥਰੂਮ ਚ ਬੰਦਣਾ ਕਿਉਂਕਿ ਮੈਂ ਬਾਥਰੂਮ ਦੀ ਫੋਨ ਜਦ ਮਰਜੀ ਮੈਂ ਕਰਾਂ ਤੇ ਫੋਨ ਚੱਕਣਾ ਅੰਦਰ ਬਾਥਰੂਮ ਚ ਬੈਠੇ ਕਿਤੇ ਕੂਚੀ ਜਾਉ ਆਪਣੀਆਂ ਲੱਤਾਂ ਨੂੰ ਉੱਥੇ ਕੋਲ ਫੋਨ ਰੱਖਣਾ ਮੈਂ ਫੋਨ ਕੋਲ ਰੱਖ ਅਤੀਤ ਤੇ ਵਰਤਮਾਨ ਦੀ ਗਹਿराई ਵਾਲੇ ਸੋਕ ਅਕਸਰ ਜੇ ਤੁਸੀਂ ਮੋਚਣਾ ਫੇਰਦੇ ਛੀਸ਼ੇ 'ਚ ਖੜੇ ਗੱਲਾਂ ਇਧਰੋਂ ਕੱਢਦੇ ਆ ਤੇ ਮੂੰਹ ਇਧਰੋਂ ਬੁਲੰਬੁਲਾ ਜਿਹਾ ਬਣਾਉਂਦੇ ਉਸ ਸਮੇਂ ਗੱਲਾਂ ਬਹੁਤ ਯਾਦ ਆਉਂਦੀਆਂ ਪ੍ਰਾਣੀਆਂ ਉੱਚੀ ਮਹਿੰਦੀਆਂ ਜਵਾਨੀ ਤੇ ਹਜ਼ਾਰ ਖਿੱਚੀ ਦਾ ਵਾਲ ਤੱਕ ਚੀਸ ਵੀ ਪੈਂਦੀ ਤਿੰਨ ਮਹੀਨੇ ਲਈ ਰਹਿਂਦੀ ਆ ਸਭ ਰੁੱਗ ਗਿਆ ਮੇਰਾ ਜੀ ਕਰੇ بڑے ਮੁੰਡੇ ਨੂੰ ਕੋਲ ਰੱਖ ਲੈ ਤੇ ਮੈਂ ਕਿਹਾ ਯਾਰ ਤੂੰ ਰਹਿ ਪਰ ਮੇਰਾ ਜੀ ਨਹੀਂ ਲੱਗਣਾ ਦਾ ਮੈਂ ਤੁਹਾਡੇ ਕੋਲ ਰਹਿਣਾ ਤੁਸੀਂ ਅਲੋਨ ਫੀਲ ਕਰੋਗੇ ਨਹੀਂ ਉਨਾਨਾ ਘਰ ਵਾਲੀ ਕਹਿੰਦੀ ਇਹ ਨੂੰ ਤਾਂ ਲੇਜੈਂਡਾ ਮੁਰਕੀਆਂ ਲਈ ਫਿਰਦਾ ਹੈ ਇਹਨੂੰ ਮਾੜਾ ਮਾੜਾ ਜਾ ਉੱਥੇ ਦਾ ਦਿਖਾਉਣਾ ਵੀ ਜਵਾਨੀ ਦੀਆ ਪੈੜਾ ਆਪਣੇ ਮੂੰਹ ਤੋਂ ਲੱਭਦਾ ਨਜ਼ਰ ਲਈ ਢਾਈ ਦਿਨ ਭੇਡ ਤੇ ਵੀ ਆਉਂਦੀ ਉਹ ਵੀ ਮੈਨੂੰ ਤਾਂ ਦੇਖੀ ਨਾ ਜਾਲ ਲੱਗੀ ਨੇ ਜਿਹੜਾ ਵੀਜ਼ਾ ਲੈੜਾ ਸੀ ਕਾਦਾ ਤੇ ਕਰਛੇ ਗਈ ਉਹ ਸੀ ਆਪਣੀ ਉਹ ਗਈ ਮੁੱਛੇ ਫੋਟੋਏ ਸੀ ਜਦ ਅਮਨਦੀਪ ਮੇਰੇ ਗੱਲ ਦਾ ਹਾਰ ਬਣੀ ਉਹ ਸਮੇਂ ਬਾਅਦ ਇਹ ਗੱਲ ਦਾ ਹਾਰ ਕਿਉਂ ਲੱਗੇ ਯਾਰ ਫੰਦਾ ਹੀ ਪੈ ਗਿਆ ਜਵਾਨੀ ਆਉਣ ਨੂੰ ਫਿਰਦੀ ਸੀ ਪਰ ਜਵਾਨੀ ਨਾ ਹੀ ਘਰ ਵਾਲੀ ਆ ਆ ਮਗਰ ਮੁੰਡੇ ਨਿਆਣੇ ਕੁੜੀਆਂ ਦੇ ਚੱਕਰ ਚ ਰੋਗੀ ਬਣ ਗਏ ਪਰ ਮੋਢੇ ਤੇ ਸਾਉਦੀ ਮੇਰੇ ਫੀਤੀ ਲੱਗੀ ਸਾਉਦੀ ਫੀਤੀ ਦਾ ਇਨਾਮ ਮੰਨਦੀ ਜ਼ੋਰ ਤੋਂ ਤੇ ਵੀ ਘਰਾਂ ਦਾ ਮੰਨ ਨਹੀਂ ਜੀ ਮੈਂ ਪੜਨਾ ਹਜੇ ਉਹ ਪੜੀ ਜਾਈ ਯਾਰ ਬੰਦ ਤੈਨੂੰ ਕੀ ਐ ਲਾਣ ਨੂੰ ਤਾਂ ਨਹੀਂ ਚੱਲਿਆ ਵਿਆਹ ਹੀ ਕਰਨਾ ਪੜਾਈ ਆਪੇ ਹੋਈ ਜਾਊ ਇੱਕ ਨਾ ਚੱਲੀ ਜੋ ਵਿਆਹ ਹੋ ਗਿਆ ਦੋ ਜੋ ਆਖ ਉਪਰ ਖਰੀਦੇ ਪਹਿਲਾ ਮੁੰਡਾ ਇਹੋ ਸਰਕਾਰ ਨੇ ਹੋ ਗਈ ਉਹਦਾ ਕਾਰ ਕੰਮ ਕਰਦੀ ਮੇਰਾ ਛਕਾ ਉਹਦੇ ਮੋਰ ਵੱਧਦਾ ਜਾ ਰਿਹਾ ਮੈਨੂੰ ਸੁਪਰਵਾਈਜ਼ਰ ਪਾਲ ਨੇ ਦੱਸਿਆ ਨਾਲ ਸਟਾਉਣਾ ਇਹਨਾਂ ਵਾਲਾ ਚਾਕੀ 57 58 ਸਾਲ ਦੇ ਬੁਢੇ ਨਾਲ ਵਿਆਹੀ ਹੋਈ ਹੈ ਦੇਖ ਦਿਓ ਸ਼ਾਂਤ ਪਰ ਅੰਦਰੋਂ ਸੰਤੋਸ਼ ਨਹੀਂ ਬੁਰਾ ਇਹ ਉਹ ਕਿ ਸਿਰ ਆਪ ਛੱਡ ਕੇ ਆਪ ਲੈ ਕੇ ਜਾਂਦਾ ਦੇਖੀ ਕਿਤੇ ਪੰਗਾ ਪਾ ਕੇ ਇਹਦਾ ਘਰ ਖਰਾਬ ਕਰ ਦਿੰਦਾ ਪਰ ਉਹ ਪਾਲ ਨਾਲ ਅਲੱਗ-ਅਲੱਗ ਸੀ ਪਰ ਸਾਡੇ ਨਾਲ ਠੀਕ ਗੱਲ ਪਾਲ ਹਮ ਛੱਡ ਗਿਆ ਮੇਰਾ ਸੁਪਰਵਾਈਜ਼ਰ ਦਾ ਚਾਂਸ ਲੱਗਿਆ ਮੇਰੇ ਖਿਆਲ ਆ ਗੱਲ ਬਣ ਧਰਾਲਾ ਉਹਦਾ ਸ਼ੱਕੀ ਸੁਭਾਅ ਦਾ ਸੀ ਬਹੁਤ ਉਹ ਖੁਦ ਕੰਮ ਤੇ ਛੱਡ ਕੇ ਜਾਂਦਾ ਤੇ ਖੁਦ ਲੈ ਕੇ ਜਾਂਦਾ ਇੱਕ ਵਾਰ ਮੈਨੂੰ ਪਾਲਣਾ ਦੱਸਿਆ ਕਿ ਜਦੋਂ ਸਟੋਰ ਤੇ ਆਪਣੇ ਪਤੀ ਨਾਲ ਘੁੰਮ ਰਹੀ ਸੀ ਤਾਂ ਮੈਂ ਉਹਨੂੰ ਹੈਲੋ ਜੀ ਸਤਿ ਸ੍ਰੀ ਅਕਾਲ ਕਹਤਾ ਉਹਨੇ ਤੇ ਆ ਕੇ ਔਖੀ ਹੋ ਗਈ ਬਾਅਦ ਵਿੱਚ ਪੁੱਛਣ ਤਾਂ ਨੇ ਹੋਰੇ ਬੁਲਾਇਆ ਤਾਂ ਭੈਣ ਜੀ ਕਹਿ ਕੇ ਬੁਲਾਉਂਦੇ ਮੇਰੇ ਹਸਬੰਡ ਕੋਲ ਅੱਛਾ ਉਹ ਤੇਰਾ ਹਸਬੰਡ ਹੈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਸੋਚਿਆ ਸਹੁਰਾ ਹੋਣਾ ਤੇਰਾ ਪਤਾ ਨਹੀਂ ਕਈ ਵਾਰ ਗੱਲਾਂ ਮੂੰਹ ਚੋਂ ਹੀ ਨਿਕਲ ਜਾਂਦੀਆਂ ਨੇ ਮੈਂ ਮੂੰਹ ਰੋਂ ਬਾਣ ਛੱਟਿਆ ਪਰ ਉਹਨੇ ਉਸਨੇ ਮਾਇ ਕੀਤਾ ਨਹੀਂ ਜੀ ਹਸਬੰਡ ਨੇ ਮੇਰੇ ਇਹ ਬੈਂਡ ਨੂੰ ਮੈਂ ਹੱਸ ਕੇ ਬਜਾ ਬੁਲਾ ਰਹੀਆਂ ਜਾਂ ਰਹੀਆਂ ਹਾਂ ਮੈਂ ਉਹਦੀ ਗੱਲ ਤੇ ਹੱਸ ਤੇ ਖੁਦ ਵੀ ਹੱਸ ਪੀ ਕਹਿਣ ਲੱਗੀ ਬੜਾ ਸ਼ਕੀ ਹੈ ਉਹਨੇ ਪਹਿਲੀ ਪਤਨੀ ਉਹਦੀ ਜਵਾਨ ਬੱਚਿਆਂ ਨੂੰ ਛੱਡ ਕੇ ਟ੍ਰਾਂਟੋ ਜਾਪ ਅਸੀਂ ਕਿਸੇ ਨਾਲ ਇਹਦੇ ਲਈ ਔਰਤ ਜਾਤ ਤੋਂ ਵਿਸ਼ਵਾਸ ਜਮਾਈ ਚੱਕੀ ਬੈਠਾ ਕਿ ਕੋਈ ਭਰੇ ਤੇ ਕੋਈ ਕਰੇ ਤੇ ਕੋਈ ਭਰੇ ਮੈਨੂੰ ਤਾਂ ਸਾਹ ਨਹੀਂ ਕੱਢਣ ਦਿੰਦਾ ਬਾਹਰੋਂ ਫੈਕਟਰੀ ਨੂੰ ਲੈ ਜਾਂਦਾ ਫੈਕਟਰੀ ਤੇ ਰੱਖ ਜਾਂਦਾ ਬਾਹਰ ਕਿਤੇ ਵੀ ਜਾਣ ਨਹੀਂ ਦਿੰਦਾ ਨਾ ਹਿਲਣ ਦਿੰਦਾ ਇੱਕ ਦਿਨ ਉਸਨੇ ਮੈਨੂੰ 1.5 ਸਾਲ ਦੀ ਬੱਚੀ ਦੀ ਤਸਵੀਰ ਮਖਾਈ ਅੱਜ ਸੇ ਉਹ ਤਾਂ ਧੀ ਕਿਹਦੇ ਅਰਗੀ ਐ ਐ ਬਈ ਤੇਰੇ ਅਰਗੀ ਹੋਣੀ ਐ ਹੋਰ ਮੇਰਾ ਹਸਬੰਦ ਕਹਿੰਦਾ ਫਲਾਣੇ ਅਰਗੀ ਐ ਤਿੰਕੇ ਅਰਗੀ ਐ ਹਰ ਰੋਜ਼ ਆਹੀ ਗੱਲ ਤੇ ਝੱਜੂ ਪਾਉਂਦਾ ਜਿਉਣਾ ਦੁੱਭਾ ਕੀਤਾ ਪਿਆ ਇਹ ਬੁੜੇ ਨੇ ਮੇਰੀ ਜਾਨ ਲੈ ਲੈਣੀ ਆ ਤੁਸੀਂ ਲੋਕ ਦੇਖਦੇ ਰਹਿ ਜਾਓ ਉਡੀਆਂ ਅੱਖਾਂ ਚੋਂ ਦੋ ਤੱਕ ਕੇ ਲਾਸ ਹੁਣਿਆ ਉਹ ਕੋ ਕੱਲਾ ਤੇ ਆ ਕੇ ਮੈਂ ਸਾਫ ਕਰਨਾ ਚਾਹੇ ਪਰ ਆੜਾ ਦੋੜਾ ਦੇਖ ਕੇ ਹੱਥ ਪਿੱਛੇ ਦਾ ਕੰਮ ਸੀ ਰੌੜਾ ਪੈ ਗਿਆ ਪਿਛਲੇ ਹੱਥ ਤੇ ਪੁੱਛਣ ਲੱਗੀ ਅੱਛਾ ਤੁਸੀਂ ਜਾਂਦਾ ਨਹੀਂ ਇੰਡੀਆ ਗਈ ਦੀ ਹੈ ਦੋ ਤਿੰਨ ਮਹੀਨੇ ਬਾਸਤੇ ਅੱਛਾ ਕੱਲੇ ਰਹੇ ਨੇ ਹੁਣ ਤੁਸੀਂ ਹਵੇ ਹੀ ਹੋਰ ਕੀ ਨੇ ਰਹਿਣਾ ਮੇਰੇ ਉਸਨੇ ਸਮਾਈਲ ਦਿੱਤੀ ਮੈਨੂੰ ਲੱਗਿਆ ਜਿਵੇਂ ਕੁਝ ਕਹਿ ਰਹੀ ਅਕਸਰ ਸੇ ਗੱਲ ਤੇ نیند ਨਾ ਆਈ ਸਾਰੀ ਰਾਤ ਮੈਂ ਉਹਨੂੰ ਕਹਿ ਲਿਆ ਰਾਜਦੀਪ ਅਰੇ ਸਮਾ ਕੱਢ ਆਪਾਂ ਇਕੱਠੇ ਬੈਠ ਕੇ ਗੱਲਾਂ ਕਰੀਏ ਖੁੱਲੀਆਂ ਗੱਲਾਂ ਪਰ ਮੈਂ ਸਰਜੰਟ ਸੁਪਰਵਾਈਜ਼ਰ ਹੋਣ ਦੇ ਨਾਤੇ ਮੂੰਹ ਰੋਕ ਲੈਂਦਾ ਕਿਤੇ ਸੁਪਰਵਾਈਜ਼ਰ ਮੰਨ ਤੇ ਇਹ ਲੋਕ ਮੇਰੇ ਤੋਂ ਔਖੇ ਸੀ ਮੇਰੀ ਕਿਸੇ ਕਿਸੇ ਦੀ ਕਮਜ਼ੋਰੀ ਦੀ ਸਾਖ ਜੀ ਉੱਪਰ ਦੱਸਣ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੈਨੇਜਮੈਂਟ ਦੇ ਮੈਨੂੰ ਕੱਢਦੇ ਆ ਤਵੇ ਤੋਂ ਮੈਨੂੰ ਪਾਲ ਦੇ ਤੇ ਵੀ ਲੱਗਦਾ ਵੀ ਖੜੇ ਪੈ ਰਹੇ ਕਿਵੇਂ ਚਲੇ ਤੁਹਾਨੂੰ ਭਾਏ ਜਿਹੜਾ ਮੁੱਲ ਦਾ ਫੂਡ ਹੈ ਜੰਕਪੂਰ ਹੁੰਦਾ ਸਰ ਇਹ ਖਦਾਈ ਦਾ ਠੀਕ ਹੈ ਪਰ ਡੇਲੀ ਨੋ ਗੁਣ ਯਾ ਆਈ ਨੋ ਬਸ ਕੀ ਕਰੀਏ ਜੇ ਡੱਤਾ ਹੁਣ ਭਰਨਾ ਹੀ ਹੈ ਜੰਕ ਹੋਵੇ ਤਾਜ਼ਾ ਹੋਵੇ ਅੰਦਰ ਤੱਕ ਉਹ ਸਿੱਟਣਾ ਹੀ ਹੈ ਆਸ਼ ਮੈਂ ਤੁਹਾਡੇ ਲਈ ਰੋਟੀ ਲੈ ਆਉਂਗੀ ਉਹਨੇ ਲੰਬਾ ਸਾਲ ਤੇ ਜਦੋਂ ਇਹ ਆ ਗੱਲ ਕਹੀ ਮੈਂ ਖੜਾ ਹੀ ਸੀ ਲੱਗੇ ਮੈਂ ਤਾਂ ਵੇਖਲਾ ਇੰਨਾ ਫਰਕ ਜਦੇ ਘਰ ਵਾਲੀ ਦਾ ਖਿਆਲ ਆਏ ਵਈ ਆ ਮੈਂ ਤਾਂ ਧੋਲਿਆਂ ਦੇ ਚੱਕਰ ਤੇ ਇਧਰ ਉਧਰ ਹੋਇਆ ਫਿਰਦਾ ਘਰ ਵਾਲੀ ਦੇ ਉਹੀ ਧੋਲਾ ਨਹੀਂ ਆਇਆ ਵਧੀਆ ਖਾਣਾ ਵਧੀਆ ਪੋਣਾ ਹੁਕਮ ਚਲਾਉਂਦੀ ਆ ਟਪ ਟਪ ਟਪ ਕਰਦੀ ਉਧਰ ਨੂੰ ਮੇਰ ਫੁੱਟ ਦਾ ਪਾਸਾ ਲਮਕਾਇਆ ਦੋਜੀਆਂ ਦੀ ਕੱਟੀ ਅੰਗੂ ਪਲੀ ਪਈ ਆ ਵੇਖ ਇਧਰ ਦੁੰਗੇ ਹੋਏ ਪਏ ਆ ਜਲ ਧੋੜੇ ਆ ਕੇ ਦਿਲ ਤਾਂ ਜਵਾਨ ਹੀ ਐ ਜਰਮਨੀ ਜਿਵੇਂ ਬੁੱਕ ਪੜ੍ਹੀ ਸੀ ਇੱਕ ਇਹ ਬੰਦਾ 40ਆਂ ਤੱਕ ਟੱਪ ਕੇ ਜਵਾਨ ਹੁੰਦਾ ਐ ਦੀ ਸੁਰੀ ਤੀਆਂ ਪੱਟਾ ਪਕੇ ਜਵਾਨ ਹੁੰਦੀ ਤੇ ਪਰ ਕਦੇ-ਕਦੇ ਸ਼ਸ਼ੀਲ ਜਿਹੜਾ ਦੋਸਤ ਵੀ ਸੀ ਮੇਰਾ ਉਹਨੇ ਕਿਹਾ ਯਾਰ ਜੀ ਕਰਦਾ ਕਿਸੇ ਨਾਲ ਕੋਈ ਲਵ ਸਟੋਰੀ ਤਾਂ ਕਹਿਨ ਕੀਤੀ ਜਾਵੇ ਸਾਰੀ ਉਮਰ ਇਹ ਜਾ ਕੁਝ ਨਹੀਂ ਕੀਤਾ ਲੱਗਦਾ ਬੁਢਾ ਹੀ ਹੋ ਕਦੇ ਸ਼ਸ਼ੀਲ ਯਾਦ ਆਉਂਦਾ ਕਦੇ ਮੋਚਨਾ ਯਾਦ ਆਉਂਦਾ ਕਦੇ ਰਾਜੀਲ ਯਾਦ ਆਉਂਦੀ ਕਿਉਂਕਿ ਘਰ ਵਾਲੀ ਇੱਥੇ ਹੈ ਨਹੀਂ ਸੀ ਮਨ ਖੁੱਲਾ ਸੀ ਇਸਨਾ ਕਿਤੇ ਹੁਝ ਦੇਖਣ ਨੂੰ ਜੀ ਕਰ ਸੋਮਵਾਰ ਨੂੰ ਲੰਚ ਬਾਕਸ ਜਦੋਂ ਅਸੀਂ ਮਡੇ ਰਾਜਦੀਪ ਮੈਨੂੰ ਕਹਿੰਦੀ ਕਿਉਂ ਕਰਿਓ ਜੀ ਜਦੋਂ ਐਂ ਬੋਲਿਆ ਮੈਂ ਵੀ ਛੱਕਿਆ ਤੁਸੀਂ ਮੇਰੇ ਲਈ ਪਾਰਟ ਟਾਈਮ ਜੌਬ ਲੱਭੋ ਮੈਂ ਆਪਣੇ ਘਰ ਨੂੰ ਸਪੌਂਸਰ ਕਰਨਾ ਇਹ ਜੌਬ ਨਾਲ ਮੇਰੀ ਇੱਕ ਵਾਰੀ ਪੂਰੀ ਹੋਵੇ ਮੈਂ ਕਿੰਨੇ ਆਉਣ ਵਾਲੇ ਆ ਦੋ ਭਾਈ ਦੇ ਮਾਪੇ ਨੇ ਉਹਨਾਂ ਨੇ ਕੈਨੇਡਾ ਵਾਸਤੇ ਮੈਨੂੰ ਫਹਾਦ ਦਿੱਤਾ ਆਪ ਆਉਣ ਨੂੰ ਤੇ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲਿਆ ਮੇਰੇ ਬਾਪ ਨੇ 20 25 ਸਾਲ ਬੜਾ ਮੇਰੇ ਹੁਣ ਜਦ ਵੀ ਫੋਨ ਆਉ ਬਾਪੂ ਸਿੱਧੀ ਗੱਲ ਇਹ ਕਹਿੰਦਾ ਸਾਡਾ ਕਦ ਤੱਕ ਬਣ ਜੂ ਨਾਲੇ ਤਾਂ ਕੈਨੇਡਾ ਵਰਦੇ ਹੋਗੇ ਸਾਨੂੰ ਵੀ ਵਰਦਾ ਕਰ ਭਾਈ ਇੱਥੇ ਏਡਾ ਹੂਲਾ ਫੂਕਿਆ ਤੇਰਾ ਉਲਟਾ ਮੈਨੂੰ ਕਹਿੰਦੇ ਆ ਮੁਰੇ ਨਾਲ ਪਿਆ ਕੇ ਫਿਰ ਮੈਨੂੰ ਕਹਿੰਦਾ ਫਿਰ 5 6 ਸਾਲ ਲੱਗਣਗੇ ਇੰਨਾ ਟਾਈਮ ਮੈਂ ਕਿਵੇਂ ਕਰ ਕੋਈ ਗੱਲ ਨਹੀਂ ਮੈਂ ਅੱਜ ਕੰਮ ਤੋਂ ਜਾ ਕੇ ਤੇਰੇ ਲਈ ਪਾਰਟ ਟਾਈਮ ਜੌਬ ਲੱਭਦਾ ਤੂੰ ਮੈਨੂੰ ਫੋਨ ਨੰਬਰ ਦੇ ਮਾਰਜਾ ਤੇ ਮੈਂ ਤੈਨੂੰ ਫੇਰ ਗੱਲ ਕਰਕੇ ਦੱਸਦਾ ਮੈਂ ਆਪਣੇ ਪੈਂਟ ਦੇ ਸੀ ਫੋਨ ਨੰਬਰ ਦਵਾ 285 ਨਹੀਂ ਨਹੀਂ ਨਹੀਂ ਨਹੀਂ ਨਹੀਂ ਕੋਨਾ ਕੋਨ ਨਹੀਂ ਦੇਣਾ ਤੁਹਾਨੂੰ ਆਪਾਂ ਫੋਨ ਕਿਉਂ ਨਹੀਂ ਦੇਣਾ ਤੁਹਾਨੂੰ ਪਤਾ ਹੈ ਬੁੜਾ ਮੈਨੂੰ ਮਾਰ ਤੇ ਬੈਠੀ ਦੂਜੀ ਕਾਰ ਵੱਲ ਸਰਸਰੀ ਦੇਖਣਾ ਸਾਰੀ ਰਾਤ ਮੇਰੀ ਤੋਬਾ ਬੁਲਾ ਦਿੰਦਾ ਸਾਰੀ ਰਾਤ ਰੋ ਰੋ ਕੱਢਣੀ ਪੈਂਦੀ ਆਹੀ ਗੱਲਾਂ ਕਹੀ ਜਾਂਦਾ ਇੱਕ ਪੱਤੀਆਂ ਬੁੜੀਆਂ ਵਾਂਗੂ ਦਿੰਦਾ ਬਸ ਉਹਦੇ ਬਹਿ ਜਾਂਦਾ, ਛੜਾਕ ਲੈਂਦਾ, ਬੋਲੀ ਪੁਰਿਆ ਜਾਂਦਾ ਫਿਰ, ਹੋਰ ਕੁਝ ਨਹੀਂ ਕਰਦਾ। ਦੂਜੇ ਦਿਨ ਮੈਨੂੰ ਪਾਰਟ ਟਾਈਮ ਜੌਬ ਦੀ ਉਹਨੇ ਖੁਸ਼ਖਬਰੀ ਦਿੱਤੀ ਪਰ ਉਹਦੇ ਚਿਹਰੇ ਤੇ ਖੁਸ਼ੀ ਦੀ ਬਜਾਇਆ ਦਰਦ ਸੀ। ਮੈਂ ਬੁੜੇ ਨਾਲ ਗੱਲ ਕੀਤੀ, ਪਹਿਲਾਂ ਤਾਂ ਲਾਰੇ ਲਾਈ ਜਾਂਦਾ ਪਰ ਰਾਤ ਤਾਂ ਲਾਲ ਲਾਈਨ ਮਾਰਦੀ, ਮੈਂ ਕਿਸੇ ਨੂੰ ਨਹੀਂ ਸਪான்ਸਰ ਕਰਨਾ। ਜੇ ਉਹ ਸਪான்ਸਰ ਨਹੀਂ ਕਰ ਸਕਦਾ ਤਾਂ ਫਿਰ ਮੈਂ ਜ਼ਿੰਦਗੀ ਕਿਉਂ ਗਾਲਾਂ ਵਿਗੜੇ ਨਾਲ? ਉਦੀਪੋ ਬੰਦੇ ਕਹਿੰਦੇ। ਪਰ ਬਹੁਤ ਰਾਸ ਆਂਦੀ, ਮੇਰੀ ਪਤਨੀ ਦੇ ਇੰਡੀਆ ਤੋਂ ਆਉਣ ਨੂੰ ਤੰਦਰ ਦੇ ਰਹਿ ਕੇ ਮੇਰੇ ਮਨ ਦੀ ਬੇਤਾਬੀ ਵਧ ਗਈ। ਫੇ ਰਾਜਦੀਪ ਨਾਲ ਹਮ ਗੱਲ ਤਾਂ ਘਰਾਂ ਮੈਂ ਫ੍ਰਾਈਡੇ ਸੀ ਅਸੀਂ ਗੱਲ ਕਰਨੀ ਜਰੂਰ ਹੈ ਕੰਮ ਦਾ ਆਖਰੀ ਦਿਨ ਆ ਮੂਰੇ ਵੀਕੈਂਡ ਹੋ ਚੁੱਕੀਆਂ ਜੇ ਅੱਜ ਨਾ ਗੱਲ ਹੋਈ ਫੇਰ ਗੱਲ ਗਈ ਸੋਮਵਾਰ ਨੂੰ ਤਾਂ ਫਲਾਈਟ ਉਤਰੇ ਆਉਣੇ ਆਪਣੇ ਵਾਲੀ ਫਕਰ ਠਕੜ ਹੋਊਗੀ ਸੱਤ ਟੈਚੀ ਹੋਣਗੇ ਕੁਲੀ ਬਣਾ ਲੈਣਾ ਦੂਰਾ ਕਰ ਦਊਂਗੀ ਆ ਦੋ ਦਿਨ ਰਹਿੰਦੇ ਨੇ ਜੇ ਇਹਦੇ ਤੇ ਨਾ ਗੱਲ ਹੋਈ ਫੇਰ ਤਾਂ ਗੱਲ ਖਤਮ ਨੰਚ ਵੀ ਅੱਜ ਵਾਰੋਂ ਕੀਤਾ ਸੀ ਉਹਨਾਂ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਹੱਥੋਂ ਜਾਂਦਾ ਰਿਹਾ ਡਿਊਟੀ ਖਤਮ ਜਾਂਦਾ ਘੰਟਾਂ ਦਾ ਮਨ ਕਰਦਾ ਕਰਕੇ ਉਹਦਾ ਕੰਮ ਚੈੱਕ ਦੇ ਬਹਾਨੇ ਨੇੜੇ ਗਿਆ ਮੁਸਕਰਾਈ ਮੈਂ ਜਾਂਦੇ ਖਾਸ ਹੋਤਾ ਮੈਂ ਰਾਜੀਪ ਅੱਜ ਟਾਈਮ ਕੱਢ ਆਪਾਂ ਬੈਠੀਏ ਬੰਦਾ ਕੀ ਕਰਾਂਗੇ ਉਹਨੇ ਪੁੱਛਿਆ ਮੈਨੂੰ ਸ਼ਹਿਰ ਕੋਈ ਕੁਝ ਨਹੀਂ ਕੱਲਾ ਕਰਾਂਗੇ ਬਸ ਕੀ ਗੱਲਾਂ ਕਰਨੀਆਂ ਸਿੱਧੀ ਤਰ੍ਹਾਂ ਦੱਸੋ ਮੈਨੂੰ ਸਭ ਪਤਾ ਹੈ ਤੁਹਾਡੇ ਦਿਲ 'ਚ ਕੀ ਹੈ ਜੇ ਉਹ ਗੱਲ ਤਾਂ ਫੇਰ ਭੁੱਲ ਜਿਓ ਮੈਂ ਐਸੀ ਵੈਸੀ ਨਹੀਂ ਤੇਰੇ ਅਰਗਸਤਾ ਪਹਿਲਾਂ ਦੱਦ ਲੱਗਿਆ ਘਰੇ ਮੈਂ ਤੇ ਤੱਤੀ ਲੈਣਾ ਹੈ ਜੇ ਖੋਰ ਤੋਂ ਉਸੇ ਤੇ ਨਾਲ ਉਹ ਉਹਨਾਂ ਘਰ ਬਲਾਂ ਕੋ ਸਾਹਨੇ ਮੈਂ ਮੈਂ ਆਪਰਾਬ ਨੂੰ ਸਤ ਰਾਜਦੀਪ ਗੱਲ ਤਾਂ ਸੁਣ ਲੈ ਦਲਤ ਸੁਣ ਰਹੀ ਆ ਤੂੰ ਮੈਨੂੰ ਮੇਰਾ ਮਤੋਂ ਇਹ ਨਹੀਂ ਸੀ ਤੂੰ ਕਿਉਂ ਮੈਂ ਚਾਹੁੰਦਾ ਤੂੰ ਬਹੁਤ ਅਫਸੇ ਦੇ ਕੋ ਗੱਲਾਂ ਕਰਕੇ ਵਜਨ ਤਾਂ ਹਲਕਾ ਕਰ ਮਾਰਾ ਮੋਟਾ ਮੈਨੂੰ ਹੰਦਰਦੀ ਨਹੀਂ ਲੋੜ ਮੈਂ ਆਪਦਾ ਭਲਾ ਬੁਰਾ ਸਮਝਦੀ ਆ ਤੁਸੀਂ ਸਾਰੇ ਲੋਕ ਇੱਕੋ ਜਿਹੇ ਹਾਂ ਉਸੇ ਦੇ ਮਾਰਦੀ ਬਲਾਈਤੀ ਬੱਚੇ ਮੂੰਹ ਪਿੰਡ ਤੇ ਹੱਥ ਨਾਲ ਤੰਦੇ ਇਹਨਾਂ ਨੂੰ ਬੱਲ ਵੱਜ ਗਈ ਵਰਕਰ ਬਹੁਤ ਆਹੀ ਕਾਰਸਕੈਂਚਰ ਕਰਨ ਲੱਗੇ ਸਕੈਨ ਕੀਤੇ ਬਿਨਾ ਹੀ ਚਲ ਗਈ ਕਮਲਿਆਂ ਨੂੰ ਮੈਂ ਦਫ਼ਤਰ ਕੇ ਕੰਪਿਊਟਰ ਤੇ ਹੱਥ ਮਾਰਾਂ ਤੇ ਮੈਂ ਕਿਹਾ ਫਹਾ ਪਾੜਿਆ ਮੈਨੂੰ ਲੱਗਦਾ ਵੀ ਉੱਪਰ ਦੱਸ ਨਹੀਂ ਨਹੀਂ ਉੱਪਰ ਨਹੀਂ ਦੱਸੀ ਐ ਤਾਂ ਗੱਲ ਨਰਮ ਚਲ ਘਾਰ ਵਾਲੇ ਨੂੰ ਮੈਂ ਕੀ ਬੱਤੀ ਦਾ ਦੋ ਮਾਰੂੰ ਘਸੌਣ ਔਰ ਕਿਤੇ ਇੱਧਰ ਨਾਲ ਆਪਣੇ ਵਾਲੀ ਜਨ ਤੂਫਾਨ ਮੇਨ ਉਤਰਨਾ ਸੋਮਵਾਰ ਤੇ ਇੱਧਰ ਕੰਨ ਬਲੇਲ ਪਾਦੀ ਮੇਰਾ ਦਾ ਸਮਾਨ ਹੋ ਇਕੱਠਾ ਮੈਨੂੰ ਇਹ ਉਹ ਲੱਗੇ ਜਿਹੜੇ ਮੋਚਨੇ ਨਾਲ ਚਿੱਟੇ ਬਾਲ ਪੱਟੇ ਸੀ ਬੈਠੇ ਬੈਠੇ ਦੇ ਦਫ਼ਤਰ ਚ ਆ ਕੇ ਕੰਪਿਊਟਰ ਤੇ ਹੱਥ ਉੱਥੇ ਮਾਰਦਾ ਇਹ ਗੱਲ ਨਾ ਬਣੀ ਚਲੇ ਗਏ ਸੋਮਵਾਰ ਆ ਗਿਆ ਸ਼ਿਫਟ ਸਟਾਰਟ ਹੋ ਗਈ ਵਰਕਰ ਆਪਣੀ ਆਪਣੇ ਕੰਮ ਤੇ ਲੱਗੇ ਰਾਜਦੀਪ ਨੂੰ ਮੈਂ ਲੱਭਣ ਲੱਗਿਆ ਰਾਜਦੀਪ ਹੈ ਨਹੀਂ ਘੰਟਾ ਲੇਟ ਹੋ ਗਈ ਤੋਂ ਹੋ ਗਈ ਪਰ ਉਹ ਕੰਮ ਤੇ ਆਈ ਮੇਰੇ ਮਨ ਚ ਹੋ ਗਿਆ ਬੇਲਾ ਬਈ ਮਸਲਾ ਹੋ ਗਈ ਗਾ ਸਟ੍ਰੈਸ ਦੀ ਘੁੰਮਣ ਤੇ ਵੀ ਜੋ ਹੈਡ ਆਫ ਜੋ ਫੋਨ ਨੰਬਰਾਂ ਦੀ ਫਾਈਲ ਮੰਗਵਾਈ ਪੂਰਾ ਫੋਨ ਨੰਬਰ ਨੋਟ ਕਰਕੇ ਦੱਸ ਜ ਗਿਆ ਫੋਨ ਘਮਾਉ ਲਿਆ ਫੇਰ ਹਿੰਮਤ ਨਾ ਪਈ ਪਰ ਕਿਤੇ ਪੈ ਜਾ ਕਰੀ ਫਿਰ ਮੈਂ ਦੇ ਸੱਜ ਦੇ ਗੱਲ ਕਰਾਂ ਪਾਲ ਇਹਦੇ ਬਾਰੇ ਮਸ਼ੀਨ ਫਿਰ ਮੈਂ ਪਾਲ ਦੇ ਘਰੇ ਦਾ ਨੰਬਰ ਸੀ ਮੈਂ ਉਹਦੇ ਘਰੇ ਕੱਲ ਕੀਤੀ ਜਦ ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲਦੇ ਆਂ ਕਹਿੰਦੀ ਪਾਲ ਪਾਲ ਜੀ ਘਰੇ ਨੇ ਗੱਲ ਕਰਾਇਆ ਪਾਲ ਤਾਂ ਮਰ ਗਿਆ ਭਾਈ ਹੋ ਭਾਈ ਜੀ ਕਾਹ ਦਾ ਕਾਹ ਮਰ ਗਏ ਪਾਲ ਦੀ ਵਾਇਰ ਗੁੱਸੇ ਦੀ ਐਣੀ ਗੱਲ ਕੀ ਹੋਊ ਵੀ ਕੀ ਗੱਲ ਹੋਊ ਹੋ ਗਿਆ ਸਾਨੂੰ ਤਾਂ ਉਹਨੇ ਕੰਜਰ ਦੇ ਦਸਨ ਲੋਕਾਂ ਛੱਡਿਆ ਕੋਈ ਇੱਥੇ ਦੀਪੋ ਦੀਪੋ થી ਸਾਡੇ ਕੰਮ ਕਰਦੀ ਤਿੰਨ ਦਿਨ ਹੋ ਗਏ ਮੈਨੂੰ ਰੋਂਦੀ ਘਰ ਨੂੰ ਮੈਂ ਇੱਥੇ ਕਿੱਥੇ ਲੱਭਦੀ ਫਿਰਦੀ ਆ ਉਹਦੇ ਨਾਲ ਕਿਸੇ ਕਾਰ 'ਚ ਬੈਠੇ ਨੇ ਕਿਸੇ ਨੇ ਵੇਖਿਆ ਉਹਨੂੰ ਇੱਥੇ ਦੀਪੋ ਥੋੜੇ ਕੋਈ ਕੰਮ ਕਰਦੀ ਸੀ ਪਹਿਲੇ ਕੰਮ ਤੇ ਜਿੱਥੇ ਇਕ ਪਾਲ ਕਰਦਾ ਸੀ ਉਹਦੇ ਨਾਲ ਹੁਣ ਦੋਨੇ ਰਹਿੰਦੇ ਆ ਕਹਿੰਦੇ ਇਸ ਦਾ ਇਕੱਠੇ ਰਹਿਣਾ ਓ ਮਾਈ ਤਾਂ ਹੀ ਕੰਮ ਚ ਨਹੀਂ ਮੇਰਾ ਫੋਨ ਜਦ ਮੈਂ ਕਿੱਦਰ ਤੇ ਰੱਖਿਆ ਮੈਂ ਕੁਰਸੀ ਦੇ ਬਾਅਦ ਕਿ ਸੋਚਾਂ ਹਵੇ ਚ ਤੇ ਮੇਰੇ ਦਿਮਾਗ ਚ ਆਇਆ ਜੇ ਕਿਤੇ ਪਾਲ ਆ ਕੰਮ ਚ ਤਾਂ ਨਹੀਂ ਕੱਟਿਆ ਇਹ ਜੀ ਗੱਲ ਹੋ ਗਈ ਜਦ ਕੰਮ ਖਤਮਿਆ ਘਰੇ ਆ ਕੇ ਸਭ ਤੋਂ ਪਹਿਲਾਂ ਮੋਛਣਾ ਚੱਕ ਕੇ ਘਰ ਸਰ ਦਵਿੰਦਰ ਸਿੰਘ ਮਲਹਾਂਸ ਦੀ ਕਹਾਣੀ ਮੋਛਣਾ ਮੋਛਣ ਦੇ ਆੜੇ ਵਾਲੇ ਖਮਾ ਦਿੱਤਾ ਜ਼ਿੰਦਗੀ ਦੀ ਦਾਸਤਾ ਬਹੁਤ ਵਧੀਆ ਉਹਨਾਂ ਦੀਆਂ ਕਹਾਣੀਆਂ ਜਰਮਨੀ ਦੇ ਵਿੱਚ ਇੱਕ ਦੋ ਕੁੜੀਆਂ ਜਿਨ੍ਹਾਂ ਦੇ ਨਾਲ ਕੰਮ ਕਰਨ ਵੇਲੇ ਤੇ ਡੋਂਕਰਾਂ ਦੀ ਅੜੀਕ ਪੱਕੀ ਫਸਲ ਕੈਲਗਰੀ ਦਾ ਲਾਇਬ ਵਧੀਆ ਕਹਾਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੁਣਾਵਾਂਗਾ ਦੋ ਇਹਦੇ ਵਿੱਚੋਂ ਤੁਹਾਨੂੰ ਸੁਣਾਈਆਂ ਸੀ ਪਹਿਲਾਂ ਇੱਕ ਤਾਂ ਬੇਗਮ ਤੇ ਗੁਲਾਮ ਤਾਸ਼ ਖੇਡ ਜਦ ਬੰਦੇ ਦਾ ਵਿਆਹ ਹੁੰਦਾ ਤੇ 에ਰਪੋਰਟ ਤੇ ਜਾਂਦਾ ਤੇ ਉਹ ਬੀਬੀ ਉਤਰਦੀ ਉਹ ਉੱਥੇ ਇੱਕ ਲక్ష్ਮੀ ਦਾ ਰੌਣਕੀ ਇਹ ਵੀ ਤੁਹਾਨੂੰ ਸੁਣਾਈ ਸੀ ਤੇ ਹੋਰ ਵੀ ਇਹਦੇ ਵਿੱਚੋਂ ਕਹਾਣੀਆਂ ਸੁਣਾਉ ਉਹਨਾਂ ਦੀਆਂ ਦੋ ਕਿਤਾਬਾਂ ਹੈ بیگم ਤੇ غلام ਤੇ گوری سرکار چھوٹییاں کہانیاں تے وڈییاں کہانیاں اتنا پرکاشن نہیں ਨੀ ਆਈ وجی کے 42 ਤੇ اج تواڈی ਤੇ نہیں آئی پہلا انٹرویو ہو رہی ہیں تے پھر راجنیتی تے لوکل خبراں تے ہن تواڈے کول سمے اج کہانی چھوٹی سی 7 8 منٹ 10 منٹ کسے ویشے تے ਉੱਥੇ ਵਾਲੀ ਕਹਾਣੀ ਜਿਹੜੀ ਦਿੱਲੀ ਜੀਕੇ ਉਹਨਾਂ ਦੀ ਜਿੱਤ ਹੈ ਜਿਹੜੀ ਜਿੱਤ ਤੇ ਸਰਨੇਉਣੀ ਬਹੁਤ ਚਰਕਾਬਜ ਰਏ ਸਰਨਿਆਂ ਤੋਂ ਬਾਅਦ ਹੁਣ ਜੀਕੇ ਉਹਣੀ ਜਿਹੜਾ ਪਾਵਰ ਦੇ ਵਿੱਚ ਹੁੰਦਾ ਹੈ ਉਹ ਰਿਸੋਰਸਸ ਵਰਤ ਲੈਂਦਾ ਉਹਨੂੰ ਹਰਾਉਣਾ ਬਹੁਤ ਸੌਖਾ ਔਖਾ ਹੈ ਤੇ ਉਹਨਾਂ ਨੇ ਕੁਝ ਕੰਮ ਕੀਤੇ ਵੀ ਜਿਹੜੀਆਂ ਸ਼ਟਾਬ ਦੀਆਂ ਵਗੈਰਾ ਜਿਹੜੇ ਮਹੱਲੇ ਵਗੈਰਾ ਕੱਢੇ ਹਾਂ ਬੰਦੇ ਉਹਨਾਂ ਨੇ ਬਦਲਤੇ ਹੁਣ ਪਹਿਲਾਂ ਮਿਸ਼ਨਰੀ ਆਉਂਦੇ ਸੀ ਹੁਣ ਦੂਜੇ ਆਉਂਦੇ ਐ ਇੱਕ ਪਾਸੇ ਲਾ ਕੇ ਦੱਸਦੇ ਗੱਪੇ ਨਹੀਂ ਰਹਿਣ ਦ। ਈਸਟ ਔਰ ਵੈਸਟ, ਨਾਰਥ ਔਰ ਸਾਊਥ, ਗੱਬੇ ਵਾਲੀ ਕਹਾਣੀ ਹੈ ਦੀ। ਨਾਰਥ-ਈਸਟ ਨਹੀਂ ਮਾਰਚ ਨੂੰ ਵੀ ਦੇਖ ਕੇ ਸਾਰੇ ਕਹਿੰਦੇ ਯਾਰ, ਉੱਥੇ ਦਾ ਕੀ ਬਣੂ। ਤਾਂ ਹੀ ਤੁਹਾਨੂੰ ਪਹਿਲਾਂ ਵੀ ਕਿਹਾ ਬਹੁਤ ਵਾਰ ਗੱਲਾਂ ਕਰਦੀਆਂ ਵੀ ਠੀਕ ਹੈ ਕੋਈ ਜਿੱਤ ਸਕਦਾ ਕੋਈ ਹਾਰ ਸਕਦਾ ਪ੍ਰੋਕਲੇਮ ਨਾ ਕਰੋ ਕਦੇ ਵੀ ਜ਼ਿੰਦਗੀ ਦੇ ਵਿੱਚ ਪਹਿਲਾ ਵਕਤ ਤੋਂ ਪਹਿਲਾ ਕਦੇ ਨਾ ਕਹੋ ਪਾਣੀ ਤੋਂ ਪਹਿਲਾਂ ਕਦੇ ਮੌਜੇ ਨਾਲ ਆਹੋ ਕਈ ਵਾਰ ਅੱਪਾ ਬਹੁਤ ਤੇਜ਼ੀ ਕਰ ਦਿੰਦੇ ਆ ਬਾਕੀ 11 ਮਾਰਚ ਨੂੰ ਹੁਣ ਤਾਂ ਉੱਥੇ ਕੁਝ ਨਹੀਂ ਹੋ ਸਕਦਾ ਪਈਆਂ ਮਸ਼ੀਨਾਂ ਜਿਹੜਾ ਕੋ ਨਿਕਲਣਾ ਉਹਦੇ ਵਿੱਚੋਂ ਨਿਕਲਿਆ ਹੋਣਾ ਕਵਰ ਸੰਧੂ ਉਹਨਾਂ ਦੇ ਬੇਟੇ ਦੀ ਮੌਤ ਹੋਈ ਹੈ ਉਸ ਖਬਰ ਕੱਲ ਜਿਹੜੀ ਸ਼ਾਮ ਨੂੰ ਜਦ ਆਈ ਤੇ ਜ਼ਿੰਦਗੀ ਦੀ ਦਾਸਤਾ ਕੱਲ੍ਹ ਨੂੰ ਸਵੇਰੇ ਸਰਕਾਰਾਂ ਦੀਆਂ ਗੱਲਾਂ, ਰਾਜਨੀਤੀਆਂ ਗੱਲਾਂ, ਰਮਾਣਾ ਉਹਨਾਂ ਨਾਲ ਲੱਗੇ ਹੋਏ ਸੀ ਕਰਨ। ਬੜਾ ਲੰਮਾ ਸਫਰਾ ਕਹਿੰਦੇ ਮੈਂ ਪਹਿਲਾਂ ਨਾ ਰਾਜਨੀਤੀ ਚ ਆ ਗਲਤੀ ਕੀਤੀ। ਵਕਤ ਕਿਸੇ ਤੇ ਨਾ ਆਵੇ ਪਰ ਮਾਲਕ ਨੂੰ ਪਤਾ ਹੈ। ਉਹ ਥਾਂਏ ਕਿਵੇਂ ਕਿਸੇ ਇਨਸਾਨ ਨੂੰ ਰੱਖਦਾ ਤੇ ਕਿੱਥੋਂ ਉਹ ਸਿੱਟ ਦਿੰਦਾ, ਡਿਸਮੈਂਟਲ ਕਰ ਦਿੰਦਾ ਸਾਰਾ ਕੁਝ। ਬਹੁਤ ਔਖੀਆਂ ਗੱਲਾਂ ਤੇ ਦਰਦ ਪੁੱਤਾਂ ਦੇ ਜਾਣ ਦਾ ਬਹੁਤ ਪੜਾਇਆ ਪੰਜਾਬ ਨੇ ਇਹ ਬਹੁਤ ਦਰਦ ਨੇੜਿਓਂ ਨੇ ਜਿਹੜੀਆਂ ਬੰਦ ਹੋ ਗਈਆਂ ਸਦਾਸ਼ੰਕਰ ਰੇ ਦੀਆਂ ਮਹਿਮਾਨ ਨਵਾਜ਼ੀਆਂ ਉਥੇ ਲੇਖਕ ਜਿਹੜੇ ਵੀ ਜਾਂਦੇ ਸੀ ਕਾਲੂ ਵਾਲੀਆ ਲੈ ਕੇ ਫੜ ਕੇ ਜਾਂਦਾ ਰਿਹਾ ਜਿਹੜਾ ਗੁਰੂਗ੍ਰੰਥ ਸਾਹਿਬ ਦਾ ਯੂਨੀਵਰਸਿਟੀ ਦਾ ਚਾਂਸਲਰ ਬਣਾਇਆ ਸੀ ਉਹ ਕੱਲੇ-ਕੱਲੇ ਬੰਦ ਨੂੰ ਟੁੱਕੜ-ਬੋਚ ਬੰਦੇ ਜਾ ਕੇ ਉੱਥੇ दारूਆ ਪੀ ਕੇ ਉਲਟੀਆਂ ਕਰਦੇ ਰਹੇ ਉਹਦੇ ਰੇਸ਼ਮੀ ਕਲੀਨਾ ਤੇ ਗਵਰਨਰ ਹਾਊਸ ਦੇ ਵਿੱਚ ਪਰ ਇਹਨਾਂ ਨੇ ਸੱਚ ਨਾ ਲਿਖਿਆ ਸੱਚ ਨਾ ਬੋਲਿਆ ਉਧਰੋਂ ਸਾਡਾ ਸ਼ਿਕਾਰ ਹੁੰਦਾ ਰਿਹਾ ਉਧਰੋਂ ਸ਼ਿਕਤਾਰ ਦੇ ਵਾਜ ਇਹਨਾਂ ਨੇ ਦਸਤੀਓਂ ਉਹਨਾਂ ਨੇ ਸਾਂਭ ਲਈ ਨਹੀਂ ਬੋਲਣ ਦਿੱਤੇ 1846 247 1550 ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਕਿਸੇ ਵਿਸ਼ੇ ਤੇ ਕਰ ਸਕਦੇ ਸਰਪ੍ਰਸਤ ਸਿੰਘ ਜੀ ਲਾਈਨ ਨੰਬਰ 2 ਵਾਇਕਰ ਜੀ ਦਾ ਖਾਤਸਾ ਵਾਇਕਰ ਜੀ ਦੀ ਫਤਿਹ ਜੀ ਹਾਂਜੀ ਸảnh ਜਿਹੜਾ ਦਿੱਲੀ ਤੇ ਜਿਹੜਾ ਰੋਲਾ ਪਿਆ ਹੈਗਾ ਦੇਖੋ ਕਿਸ ਤਰ੍ਹਾਂ ਉੱਥੇ ਕੋਈ ਜਿਹੜਾ ਉਸ ਦੇਸ਼ ਲਈ ਜਿਹੜਾ ਫੌਜੀ ਲੜਦਾ ਹੈ ਉਹਦੀ ਬੇਟੀ ਦੇ ਉੱਥੇ ਸ਼ਾਂਤੀ ਦੀ ਵੀ ਗੱਲ ਕਰਦੀ ਆ ਤਾਂ ਉਹਨੂੰ ਕਿਸ ਤਰ੍ਹਾਂ ਰੰਗਤ ਦੇ ਕੇ ਉਥੇ ਦਾ ਜੜਾ ਭਗਮੋਂ ਬਰਗੇੜ ਆ ਕਿਸ ਤਰ੍ਹਾਂ ਦੇ ਰਹੇ ਹੈ ਗਿਆ ਗੱਲ ਤਾਂ ਜਾਣ ਕੇ ਇਹ ਨਹੀਂ ਕਿ ਉਹ ਉਹਨੂੰ ਕੋਈ ਖਤਰਾ ਹੈਗਾ ਆ ਜਿਹੜੇ ਦੁਜਾ ਕਿਨਾਂ ਹੋਰ ਹੈਗੇ ਆ ਆਪਣੇ ਜਿਹੜੇ ਭਾਈਚਾਰੇ ਤੋਂ ਉਹ ਗੁਰਮੇਸ਼ਰ ਕੌਰ ਨਾਲ ਨਹੀਂ ਖੜੂਗੇ ਗੱਲ ਇਹ ਆਪੇ ਜਿਹੜਾ ਉੱਥੇ ਦਾ ਆ ਉਸ ਵੇਲੇ ਸ਼ਾਸਕ ਤੇ ਰਿਹਾ ਉਹ ਕਿਦਾ ਚੁੱਪੀ ਬੱਟ ਕੇ ਬੈਠਿਆ ਸਰੋਦੇ ਉੱਥੇ ਦੇ ਜਿਹੜੇ ਜਿਹੜੇ ਲੋਕ ਆ ਉਹ ਵੀ ਉਹ ਆ ਕਿੰਨੀ ਸ਼ਰਮ ਵਾਲੀ ਗੱਲ ਹੈਗੀ ਆ ਉਹ ਦੂਸਰੀ ਗੱਲ ਤੁਸੀਂ ਨਾਮਿਨੇਸ਼ਨ ਦੀ ਗੱਲ ਕੀਤੀ ਸੀਗੀ ਹੂੰ ਦੇਖੋ ਤੁਸੀਂ ਗੱਲ ਕੀਤੀ ਵੀ ਜਿਹੜਾ ਬਿਨਾ ਨਾਮਿਨੇਸ਼ਨ ਕਿਤੇ ਲਿਆ ਕੇ ਪੈਰਾਸ਼ੂਟ ਕਰ ਦਿੰਦੇ ਹੈਗੇ ਬਿਲਕੁਲ ਇਹੋ ਜ਼ਾਇਦ ਆ ਪਰ ਜੇ ਜਿਹੜੇ ਕੈਂਡੀਡੇਟ ਰਨ ਕਰਦੇ ਆ ਉਹ ਮੇਰਾ ਖਿਆਲ ਆ ਪਈ ਉਹ ਪੈਸੇ ਧਲੇ ਵਾਲੇ ਹੁੰਦੇ ਆ ਉਹ ਗਰੀਬ ਨਹੀਂ ਹੈਗੇ ਮੇਰਾ ਇੱਕ ਸੁਜੈਸ਼ਨ ਹੈ ਉਹਨਾਂ ਨੂੰ ਜਿਹੜੀ ਆ ਪਾਰਟੀ ਦੀ ਮੈਂਬਰਸ਼ਿਪ ਦੀਆਂ ਲਿਸਟਾਂ ਪੜੀਆਂ ਹੁੰਦੀਆਂ ਆਲਰੇਡੀ ਜੇ ਇਹੋ ਜਿਹਾ ਕੰਮ ਹੁੰਦਾ ਆ ਤਾਂ ਇੱਕ ਆਪਣੇ ਤੌਰ ਤੇ ਇੱਕ ਪਰਸਨਲ ਜੇ ਐਕਾਊਂਟ ਲੈ ਕੇ ਜਿਹੜੇ ਕੈਂਡੀਡੇਟ ਰਨ ਕਰਨਾ ਚਾਹੁੰਦੇ ਆ ਨਾਮਿਨੇਸ਼ਨ ਕੇ ਜੇ ਉਹ ਜਿੱਥੇ ਕਿਨਾਂ ਪਬਲਿਸਾਈਜ਼ ਕਰਕੇ ਉਹ ਆਪ ਨੋਮੀਨੇਸ਼ਨ ਰਨ ਕਰ ਲੈਣ ਤੇ ਆ ਅਸੀਂ ਜਿਹੜੇ ਕੈਂਡੀਡੇਟ ਸੀਗੇ ਅਸੀਂ ਆ ਤੁਹਾਨੂੰ ਦਿੱਤੀ ਸੀਗੀ ਅਸੀਂ ਤੁਹਾਡੇ ਤੋਂ ਇਜਾਜ਼ਤ ਲਈ ਹੈ ਤੁਹਾਡੇ ਨੁਮਾਇੰਦੇ ਬਣਨਾ ਸੀ ਪਰ ਪਾਰਟੀ ਨੇ ਤਾਂ ਕਿਚਾਈ ਕੀਤੀ ਆ ਪਰ ਅਸੀਂ ਤੁਹਾਨੂੰ ਚਾਂਸ ਦੇਣਾ ਚਾਹੁੰਦੇ ਆ ਅਸੀਂ ਖੜਾਗੇ ਜੇ ਕੱਲੋ ਪਾਰਟੀ ਸਾਨੂੰ ਪਾਰਟੀ ਦੇ ਵਿੱਚ ਰੱਖੂਗੀ ਅਸੀਂ ਰਹਾਂਗੇ ਵੀ ਪਰ ਅਸੀਂ ਇੱਕ ਤੁਹਾਨੂੰ ਮੌਕਾ ਦਿੰਨੇ ਆਂ ਵੀ ਸਾਡੇ ਵਿੱਚੋਂ ਨਾਮਿਨੇਟ ਕਰਕੇ ਜਿਹੜਾ ਪਾਰਟੀ ਨੇ ਲਿਆ ਕੇ ਖੜਾ ਕੀਤਾ ਆ ਉਹਦੇ ਖਿਲਾਫ ਸਾਨੂੰ ਦੱਜਾ ਜਿੰਨਾ ਚਾਹੋ ਅਸੀਂ ਵੀ ਉਥੇ ਵਾਲ ਐਲੈਕਸ਼ਨ ਵਿੱਚ ਇੱਕ ਤੀਜੀ ਧਿਰ ਬਣ ਕੇ ਖੜਾਂਗੇ ਕਿ ਤਾਂ ਕਿ ਜਿਹੜੀ ਲੋਕਾਂ ਦੀ ਰਿਪ੍ਰেজੈਂਟੇਸ਼ਨ ਰਿਪ੍ਰেজੈਂਟੇਸ਼ਨ ਹੋ ਸਕੇ ਨਾ ਕਿ ਜਿਹੜਾ ਉਥੋਂ ਆਟਵਾ ਤੋਂ ਹੁਕਮ ਆਇਆ ਹੈਗਾ ਆ ਉਹ ਬਜਾਇਆ ਜਾਵੇ ਜੇ ਇਹੋ ਜਿਹਾ ਕੋਈ ਉਪਰਾਲਾ ਹੋਵੇ ਤਾਂ ਮੇਰਾ ਖਿਆਲ ਮੁੜ ਕੇ ਪਾਰਟੀਆਂ ਇਹੋ ਜਿਹੀ ਜ਼ੁਰਤ ਨਹੀਂ ਕਰਨ ਜੀ ਵਾਇਗੁਰ ਜੀ ਖਾਸਾ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਗੁਰਚੰਦ ਸਿੰਘ ਕੁਲਾਰ ਜੀ ਇੰਗਲੈਂਡ ਤੋਂ ਅਰਸ਼ੀਕਾ ਗੇਲ ਸਾਹਿਬ ਸਸਿਕਾਲ ਬਾਈ ਜੀ ਜਿਹੜੀ ਜਿੰਨਾ ਚਿਰ ਅਲੱਗ-ਅਲੱਗ ਧੜੇ ਬਣਾ ਕੇ ਇਹਨਾਂ ਦਾ ਮੁਕਾਬਲਾ ਨੀ ਹੋਣਾ ਜੇ ਜਿੰਨਾ ਚਿਰ ਇੱਕ ਗੱਟ ਪਾਣੀ ਨਾ ਹੁੰਦੀ ਉਹਨਾਂ ਚਿਰ ਇਹ ਨਹੀਂ ਹਾਰਾ ਹੋਣੇ ਕਿਉਂਕਿ ਤੁਸੀਂ ਜਿੱਦਾਂ ਕਿਹਾ ਨਾ ਵੀ ਜਿਹੜੀ ਕਾਗਜ਼ ਤੇ ਰਿਆ ਉਹਨੂੰ ਹਰਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੂੰ ਤੇ ਜਿੱਦਾਂ ਇਹ ਭਾਈ ਵਿਡਾ ਵਾਲਾ ਜਾਂ ਇਹ ਭਾਈ ਅੰਦੀ ਸਿੰਘ ਜਾਂ ਹੋਰ ਜਿੰਨੇ ਵੀ ਸੀਗੇ ਜੇ ਇੱਕ ਜਾਣੇ ਹੋ ਜਾਂਦੇ ਜਾਂ ਸਾਨੂੰ ਵੀ ਇਹਨਾਂ ਨਾਲ ਜਾਂਦਾ ਤਾਂ ਹੋ ਸਕਦਾ ਸੀਗਾ ਅਦਰਵਾਇਜ਼ ਤਾਂ ਤੁਹਾਨੂੰ ਪਤਾ ਹੀ ਆ ਵੀ ਹੁਣ ਉੱਥੇ ਜਿਹੜੇ ਨਵੇਂ ਜਮਾਨੇ ਵਾਲੇ ਬਾਬੇ ਆ ਫਿਰ ਨਵੀਂ ਜਮਾਨੇ ਦੀ ਕਥਾ ਲਿਆ ਕਰਨਗੇ ਸਾਡੀ ਹੁਣ ਕੰਮ ਵਧੂਗਾ ਘਟੂਗਾ ਨਹੀਂ ਪਰ ਉਹ ਮੰਨਦੇ ਨਹੀਂ ਉਹ ਕਹਿੰਦੇ ਅਸੀਂ ਵਧੀਆ ਕਰ ਰਹੇ ਆ ਪਿਕੜ ਵੱਧ ਹੀ ਆ ਜੀ ਜਾਂ ਘੱਮ ਜੀ ਮੈਨੂੰ ਮੈਨੂੰ ਯਾਦ ਆ ਬੰਤਾ ਸਿੰਘ ਉਹਨਾਂ ਨੇ ਕੀਤੀ ਨਵਰਾਤਰੀਆਂ ਦੇ ਵਿੱਚ ਆ ਕਥਾ ਹਾਂਜੀ ਹਾਂਜੀ ਹਾਂਜੀ ਕਿਉਂਕਿ ਉਹ ਇਦਾਂ ਹੀ ਆਣਾ ਜੀ ਇਹ ਜਿਹੜੀ ਅੰਦਰੋਂ ਅਸਲੀਅਤ ਆ ਨਾ ਜਿਹੜੀ ਉਹ ਆ ਵਾਤ ਕੇ ਅਸਲੀਅਤ ਆ ਇਹ ਵੀ ਆ ਕਿਸੇ ਤਰ੍ਹਾਂ ਵੀ ਆ ਬਹਾਨੇ ਜਿੱਦਾਂ ਉਹਨਾਂ ਨੂੰ ਦੱਸਦੇ ਆ ਵੀ ਅਸੀਂ ਵੀ ਤੁਹਾਡੇ ਜਿਹਾ ਘਬਰਾਉਣਾ ਏ ਗੁਰੂ ਨੇ ਕਿਹੜਾ ਬੋਲਣਾ ਆ ਹੂੰ ਤਾਂ ਸ਼ਬਦ ਗੁਰੂ ਆ ਉਹਦੀ ਮਾਰ ਪਈ ਫਿਰ ਦੱਸਦੀ ਨਹੀਂ ਨਾ ਪਰ ਉਤੋਂ ਜਿੱਦਾਂ ਮਾਰੀ ਸਮਝ ਹੀ ਰਹੇ ਥੈਂਕ ਯੂ ਭਾਈ ਜੀ ਥੈਂਕ ਯੂ ਵਪਾਰਕ ਸੰਦੇਸ਼ ਇਸ ਜਿਹੜਾ ਦਾ ਪ੍ਰੋਗਰਾਮ ਆਸ ਹੈ ਕਿ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਅਖੀਰ ਦੇ ਵਿੱਚ ਮੁਹੰਮਦ ਸਰੀਕ ਦਾ ਇੱਕ ਗੀਤ ਤੁਹਾਡੇ ਲਈ ਛੱਡ ਕੇ ਚੱਲਿਆ ਤੇ ਕੱਲ ਨੂੰ 11 ਵਜੇ ਫੇਰ ਮੁਰਦਾਂ ਰਬਰਾਕਾ